ਹਾਰੇ ਜਲਬਣ ਵਾਲੇ ਮਹਿਲ ਹਰ ਕੀ ਹੈ ਹਾਰੇ ਜਲ ਸਭਤ ਸੂਰਤਾਂ ਇੱਕ ਹੈ ਜਿਹੜਾ ਇੱਕ ਆਇਆ ਨਾ ਸਭ ਉਹਦੇ ਵਿੱਚ ਪੂਰੇ ਉਹ ਜਲ ਬਣਨ ਤੇ ਪਰੇ ਹੋ ਜਾਂਦੇ ਇੱਕ ਹੋ ਗਿਆ ਜਦ ਫੇ ਜਲ ਬਣ ਜਲ ਮਾਣ ਜਿ ਕਾ ਦਾ ਜਦ ਇੱਕ ਦੇ ਵਿੱਚ ਨੁਕਸ ਪੈ ਜਾਂਦਾ ਨੁਕਸ ਨਾਕ ਸਮਝ ਜਾਂਦਾ ਗਾਗੀ ਹੋ ਜਾਂਦਾ ਮਾਨੋਦ ਕਾਬੂ ਜਲ ਬਸਦੀ ਹਿੰਦੋ ਜਿੰਨਾ ਚਿਰ ਮਨ ਵਸ ਵਿੱਚ ਹੈ ਕਹਿ ਜਾਂ ਮਨ ਬੇਕਾਬੂ ਹੋ ਗਿਆ ਫਿਰ ਇਕ ਨਹੀਂ ਜਦੋਂ ਮਨ ਢੋਲ ਜਾਂਦਾ ਕਿਤੇ ਹਿੰਲੇ ਗੱਲ ਦਾ ਕਹਤੇ ਡਿਸਟਰਬ ਹੋ ਜਾਂਦਾ ਫਿਰ ਕਦੇ ਜਾਂਦਾ ਅਡੋਲਤਾ ਦਾ ਤਬ ਹੋ ਜਾਂਦੀ ਜਿਨਾ ਜਰ ਅਡੋਲ ਹੈ ਉਹਨਾਂ ਜਰ ਜੋਤ ਜਿਨਾ ਜਰ ਅਡੋਲ ਹੈ ਉਹਨਾਂ ਜਰ ਡੋਲ ਗਿਆ ਕਰਕੇ ਡੋਲਣ ਤੇ ਆਖੋ ਪ੍ਰਭੂ ਕੇ ਜਦੋਂ ਸਰੀਰ ਛੱਡਿਆ ਜਾਂਦਾ ਜੇ ਉਦੋਂ ਡੋਲ ਜਵੇ ਤੁਹਾਡਾ ਜਨਮ ਹੋ ਜਾਂਦਾ ਬਸ ਇਹੀ ਗੱਲ ਕਿਉਂਕਿ ਡੋਲ ਗਿਆ ਉਸ ਵੇਲੇ ਜੇ ਉਸ ਵੇਲੇ ਕਰਾਇ ਜਵੇ ਕਿਹ ਜਾਣ ਬੁਰ ਬਿਰ ਉਹ ਉਸ ਵੜੇ ਕੇ ਹੈਡ ਰੋਲਣ ਤੇ ਰੱਖੋ ਪ੍ਰਭੂ ਜੇ ਪਹਿਲਾਂ ਵੀ ਡੋਲਦਾ ਰਹੇ ਤਾਂ ਉਸ ਵੜੇ ਵੀ ਡੋਲ ਜੂਗਾ ਡੋਲੇ ਨਾ ਢੋਲ ਤਰ ਹੈ ਡੋਲਿਆ ਹੋਇਆ ਦੋ ਜਗ੍ਹਾ ਹੈ ਅਢੋਲ ਇੱਕ ਜਗ੍ਹਾ ਹੈ ਹਰਿਆਣਾ ਹੈਗਾ ਕਿ ਅਢੋਲ ਹੈ ਔਰ ਲੋਣਾ ਦੇ ਜਨਰ ਕੋਲ ਬਹੀਨ ਫੇੜੀ ਜਲਦ ਵਰਦਾ ਕੋ ਰਕੋਡਿੰਗ ਨਹੀਂ ਹੋਈ ਹਾਂਜੀ ਹਰੀ ਜਨ ਮਾਰਨ ਬਹੀਨ ਹਾਂ ਜਲ ਮਾਰ ਬਹੀਨ ਹਰੀ 10 4 4 ਪਰ ਵੀਰ ਔਰ 10 4 4 ਪਰ ਵੀਰ ਔਰ 10 4 ਇਹ 18 ਜਿਹੜਾ ਕਹਿੰਦੇ ਨੇ ਜਦੋਂ ਇਹਨਾਂ ਨੇ ਬਾਟ ਪਾੜੀਏ ਉਹ 18 ਅਰਥਾ 18 ਵਿੱਦਿਆ ਬਣਾਈਆਂ ਜੀਨੂੰ ਇਹ ਵਿੱਦਿਆ ਕਹਿੰਦੇ ਨੇ ਗੁਰਬਾਣੀ ਤੋਂ ਵਿੱਦਿਆ ਬਣਦੀ ਹੈ ਜਦੋਂ ਗੁਰਬਾਣੀ ਨੂੰ ਉਹ ਵਿੱਦਿਆ ਹੈ ਇਹ ਵਿੱਦਿਆ ਅਰਥਨਿਕ ਵਿਦਿਆ ਤੇ ਇੱਥੋਂ ਜਿਹੜਾ ਨੇ ਸਾਰੇ ਅਰਥਾ ਦਾ ਨਾਟਕ ਕੀਤਾ ਹੈ ਇਹ ਬਣ ਜਾਣ ਕੇ ਜਦ ਵਿੱਦਿਆ ਨੂੰ ਵਿੱਦਿਆ ਬਣਦੀ ਹੋਣੀ ਬਾਣੀ ਇਹਨੇ ਕਿਹਾ 18 ਪ੍ਰਕਾਰ ਦੀ ਵਿੱਦਿਆ ਜਾਣਦਾ ਹੈ ਉਹਦਾ ਵੀ ਦੇ 18 ਪ੍ਰਕਾਰ ਦੀ ਸਪਰਤ ਸ਼ਾਸਤਰ ਵਿੱਚ ਰੱਖੇ ਨੇ ਇਹਦੇ ਉਹ ਤਾਂ ਪੁੰਨ ਪਾਪ ਦੀ ਵਿਚਾਰ ਹੈ ਉਹਦਾ ਅਸੀਂ ਪੜ੍ਹ ਨਹੀਂ ਆ ਨੇ ਨਾਲੇ 10 4 ਜੇ ਆਉਂਦਾ 18 ਆਉਂਦਾ 18 ਇਕੱਠਾ ਆਇਆ ਹੋਇਆ ਹੈ 'ਚ 10 4 4 ਦਾ 18 ਨਹੀਂ ਹੁੰਦਾ ਬਣਦਾ 10 1 4 1 4 1 ਆਇਆ 18 ਲਾਖ है ਆਇਆ ਹੋਇਆ 18 चार ਹੈਗਾ ਆਇਆ ਹੋਇਆ ਤਾਂ 4 4 ਫਿਰ ਕੱਦ ਲਿਖਿਆ 10 ਸੇ ਕੋ 4 ਕੋ 4 10 ਸੇ ਕੀ ਹੈ 10 ਸੇ ਤਦੌਰ ਦਸ ਜਿਹੜੇ ਮਾਨਵ ਮੁਖ ਨੇ ਉਹਨਾਂ ਦਾ 10ਵਾਂ ਦਵਾਰ ਤਿਰਕੁਟੀ ਆ ਜਿਹੜੇ ਗੁਰਮੁਖ ਨੇ ਉਹਨਾਂ ਦਾ 10ਵਾਂ ਦਵਾਰ ਹਿਰਦਾ ਹੈ ਇੱਥੋਂ ਆਕੇ ਸਾਰਾ ਹੀ ਫਰਕ ਪੈ ਗਿਆ ਜਿਨ੍ਹਾਂ ਦਾ 10ਵਾਂ ਦਵਾਰ ਤਿਰਕੁਟੀ ਆ ਉਹ ਵਿੱਦਿਆ ਨੂੰ ਮੰਨਦੇ ਨੇ ਵਿੱਦਿਆ ਬਲਕੇ ਵਿਦਿਆਰਬੁੱਧੀ ਜਿ ਵੀ ਉਹਨਾਂ ਨੂੰ ਫਰਕ ਦਾ ਪਤਾ ਉਹ ਵਿੱਦਿਆ ਨੂੰ ਤੀਜੀ ਅੱਖ ਬਲ ਨੇ ਗੁਰਮੁਖ ਵਿੱਦਿਆ ਨੂੰ ਅਵਿਦਿਆ ਬਲ ਨੇ ਤੀਜੀ ਅੱਖ ਬੁੱਧੀ ਨੂੰ ਗੋਵੇਖ ਬੁੱਧੀ ਨੂੰ ਬਲ ਦੇ तीजी अख विवेक बुद्धि नु बुद्धि बुद्धि भी तीजी आंख पर हालै बुद्धि तीजी आंख खुली नहीं हुई है एणु कि लगे आज सुतक लगया है बीमार है खराबी है इदेच ज्ञान अंजन पौगा ठीक हो जुगे ज्ञान अंजन कर दिया विनाश विनाश ਇਹ ਕਿ ਤੋ ਦਿਸਾਈ ਹੋਈ ਏ ਤੁਦ ਜਿਵੇਂ ਅੱਖੀਂ ਤੁਦ ਬੈ ਜਾਂਦੀ ਹੈ ਦਿਨਾਂ ਲਈ ਠੀਕ ਇਸ ਕਰਕੇ ਇਹਨੂੰ ਠੀਕ-ਠੀਕ ਵੀਦਾ ਨਹੀਂ ਹੈ ਜੋਤਨੀ ਇਹਨੂੰ ਦਿੰਦੀ ਜਾਂਦੀ ਜੱਤ ਹੀ ਅੜਕ ਜਾਂਦੀ ਹੈ ਸਰੀਰ ਤੇ ਅੜਕ ਜਾਂਦੀ ਅੰਦਰ ਨਹੀਂ ਜਾ ਸਕਦੀ ਕਹਾਂ ਜੋਤ ਨਹੀਂ ਦੇਖਦੀ ਗੁਰਬਾਣੀ ਕਹਿੰਦੀ ਆ ਜਾਣ ਜੋਤ ਨੂੰ ਪੁੱਛੋ ਜਾਂਦੀ ਕਮੀਰ ਵੀ ਕਹਿੰਦਾ ਵਾਰ-ਵਾਰ ਮੇਰੀ ਬੁੱਧ ਮਾਇਆ ਤੇ ਜਾ ਕੇ ਅੜ ਜਾਂਦੀ ਹੈ ਮੇਰੀ ਦੇਸੀ ਸਰੀਰ ਤੋਂ ਕਹਾਂ ਦੇਖਣਾ ਸੀ ਗਲਦਰ ਲਈ ਹੈ ਬਾਹਰ ਲਈ ਹੈੀ ਕੁਰਬਾਨੀ ਦੀ ਬਾਹਰ ਤਾਂ ਸਭ ਕੁਝ ਦੀਦ ਹੈ ਬਾਹਰ ਕੀ ਦੇਖਣਾ ਸੀ ਗੱਲ ਤਾਂ ਦੇਖਣ ਵਾਲੀ ਚੀਜ਼ ਤਾਂ ਅੰਦਰ ਹੈ ਜੋ ਜਾਣਣਾ ਤਾਂ ਅੰਦਰ ਹੈ ਉਹ ਤਾਂ ਆਤਮਾ ਹੈ ਆਤਮ ਗਿਆਨ ਹੈ 10 4 4 ਪ੍ਰਵੀਨ ਪ੍ਰਵੀਨ 10 ਹੋ ਗਏ ਦੁਆਰੇ 4 ਹੋ ਗਏ ਵੇਦ और चार ਹੋਗੇ ਯੁਗ ਚਾਰ ਯੁਗਾਂ ਦਾ ਨਹੀਂ ਪਤਾ ਚਾਰ ਯੁਗ ਗਲਤ ਬੰਦੀ ਬੈਠੇ ਰਿਹਾ ਤੁਹਾਨੂੰ ਇਹਨਾਂ ਦੀ ਵਿਦਿਆ ਬਲਾਂਗੇ ਚਾਰ ਯੁਗ ਇਹਨਾਂ ਵਾਲੇ ਚਾਰ ਜਿਹੜੇ ਯੁਗ ਰਹੇ ਆ ਇਹਨਾਂ ਵਾਲੇ ਹੀ ਨੇ ਨਾ ਇਸੇ ਕਰਕੇ ਗਿਆਨਾ ਗੁਪਤੇ ਬੂਝੇ ਯੁਗ ਚਤੂਹਾਰੇ ਯੁਗ ਦਾ ਬੂਝਣ ਨਾ ਤਾਂ ਜਿੱਥੇ ਵਰਤਦੇ ਨੇ ਜੋ ਉਸ ਜਗ੍ਹਾ ਦੇ ਨਾਲ ਨੂੰ ਪਤਾ 10000 ਦਾ ਪਤਾ ਹੈ ਉਧਰ ਮੁਝਾਰੇ ਉਹ ਤਾਂ ਸਾ ਆ ਗਿਆ ਜੇ 10 ਦਾ ਪਤਾ ਹੁੰਦਾ ਤਾਂ 1000 ਦਾ ਪਤਾ ਹੁੰਦਾ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਘਟ ਘਟ ਵਰਤਾਂ ਉਧਰ ਮੁਝਾਰੇ ਉਹ ਤਾਂ ਅੰਦਰ ਵਰਤਦੇ ਜੁਗਤ ਜੁਗ ਬਾਹਰ ਲਈ ਹੁੰਦੇ ਬਾਹਰ ਉਹੀ ਹਮੇ ਉਹੀ ਚੰਦ ਹੈ ਉਹੀ ਸੂਰਜ ਹੈ ਗੁਰਬਾਣੀ ਖੰਡਨ ਕਰਦੀ ਹੈ ਬਾਹਰ ਦੇ ਜੁਗਾਂ ਨੂੰ ਉਹੀ ਤਾਰੇ ਆਜੋ ਕਵੇਂ ਬਦਲ ਗਈ ਜੁਗਤਦਰ ਨੇ ਰਸਤਾ ਬਦਲ ਦਿਆ ਜੁਗ ਬਦਲਦਾ ਹੈ ਤਾਂ ਹੀ ਤਾਂ ਪੰਜਵੇਂ ਪਾਸ਼ਾ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਜੂ ਹੋਤਾ ورਨਾ ਸਜੁਗ ਸੀ ਅੰਦਰ ਕਲਜੂ ਸੀ ਨਹੀਂ ਤੇ ਬਾਹਰ ਵਾਲੇ ਜੇ ਬਾਹਰ ਜੁਗ ਕਲਜੂ ਗਏ ਤਾਂ ਅੰਦਰ ਉਹਨਾਂ ਦੇ ਕਲਜੂ ਫਿਰ ਤਾਂ ਕਲਜੂ ਹੁੰਦਾ ਫਿਰ ਫਿਰ ਫਿਰ ਤਾਂ ਸਾਰਾ ਕਲਜੂ ਹੁੰਦਾ ਇਹਨਾਂ ਨੂੰ ਕਲਯੁਗ ਸਜੁਗ ਦਾ ਧਿਆਨ ਲਈਏ ਜਿਹੜੇ ਇਹਦੇ ਵਿੱਚ ਕਲਪਨਾ ਉੱਤੇ ਕਲਜੂਗਾ ਜਿੱਤੇ ਸ਼ਬਦ ਪ੍ਰਗਟ ਹੈ ਉਹ ਸਜੁਗ ਹੈ ਜਿੱਤੇ ਸ਼ਬਦ ਪ੍ਰਗਟ ਹੈ ਉੱਤੇ ਸਜੁਗ ਹੈ ਜਿੱਤੇ ਸੱਚ ਪ੍ਰਗਟ ਹੈ ਸਜੁਗ ਹੈ ਜਿੱਤੇ ਕਰਜੋ ਕਿਦਾਂ ਦਾ ਕਰਜੋ ਹੁੰਦਾ ਤੇਰੀ ਕੁਟੀ ਚ ਵਾਇਾਨੀ ਪੋਖੰਦਰ ਹੁੰਦੀ ਆ ਜਰੂਰ ਪਰ ਕਰ ਤ੍ਰਿਕੁਟੀ ਜੋ ਜਬਤ ਪੈਦਾ ਹੁੰਦਾ ਜੋ ਅਸੀਂ ਕਲਪਨਾ ਕਰਦੇ ਹਾਂ ਉਹ ਦਿਮਾਗ ਚ ਕਰਦੇ ਹਾਂ ਸਾਰੇ ਉੱਥੇ ਪੈ ਹੁੰਦੀ ਹੈ ਦਿਲਾਰ ਦਿਮਾਗ ਦੇ ਨਾਲ ਪੈਦਾ ਹੁੰਦੀ ਹੈ ਕਲਪਨਾ ਸ਼ਾਹ ਦਿਮਾਗ ਤੋਂ ਪਰੇ ਦੀ ਗੱਲ ਹੈ ਉਹ ਤੁਰਕੀ ਵਾਲੀ ਆ ਪੇਲਦੀ ਹੈ ਉਹ ਸਾਡੇ ਵਾਸਤੇ ਪਰੇ ਹੈ ਸ਼ਬਦੋ ਉਹ ਤੁਰਕੀ ਬਾਣੀ ਆ ਹੀ ਲਿਖਿਆ ਤਾਂ ਉਹਦੀ ਹੈ ਉਹ ਤਾਂ ਅਸੀਂ ਪੈਦਾ ਕਰਦੇ ਆ ਉਹ ਆਪਣੇ ਆਪ ਆਉਂਦੀ ਹੈ 10 4 4 ਪ੍ਰਵੇਸ਼ 10 4 4 ਚਾਰੇ ਵੇਦ ਚਾਰੇ ਵੇਦ ਬਣੇ ਨੇ ਚਾਰ ਚਾਰੇ ਵੇਦ ਤੇ ਚਾਰੇ ਯੁਗ ਚਾਰਾਂ ਯੁਗਾਂ ਦਾ ਵਿਚਾਰ ਵੇਦ ਨੇ ਜਾਰੇ ਜੋਗ 4 ਵੇਦ ਲਿਖੇ ਤਾਹਨੇ ਰਤ ਜਤੇਗਾ ਜੇ ਉਮੀਦ ਨਾ ਰਤੇ ਤੇਰਾ ਜਤੇਗਾ ਸਜੋਗਰਾ ਸੰਤੋਕ ਕਾ ਚਾਰ ਜੋਗ ਚਾਰ ਵੇਦ ਜਿਹੜੇ ਨੇ ਨਾ ਅ ਦਸ ਦਵਾਰ ਇਹਨਾਂ ਦਾ ਗਿਆਨ ਸਹੀ ਸਹੀ ਹੁੰਦਾ ਜਿਹੜਾ ਹਰ ਉਹਨੂੰ ਅਰੀ ਜਨਮ ਵਰਨ ਬਹੀਨ 10 4 ਹਾ ਹਦਾਂ ਚਾਰ ਚਾਰ ਤੇ ਪ੍ਰਵੀਰੂਦ। ਹੁਣ ਅਕਲੰਕ ਰੂਪ ਅਪਾਰ ਆ ਕਲੰਕ। ਕਲੰਕ ਤੋਂ ਬੈ ਕਲੰਕਿਤ ਹੋ ਜਾਣਾ। ਅੱਕ ਨਹੀਂ ਪੜਨਾ ਇਹਨੂੰ। ਕਲੰਕ ਇਕੱਠਾ ਪੜਨਾ ਆੜਾ ਅੜਾ ਪੜਨਾ। ਉਹ ਰੂਪ ਅਪਾਰ। ਹਾਂ ਕਲੰਕ ਤੋਂ ਰਹਿਤ। ਉਹ ਰੂਪ ਅਪਾਰ ਅਪਾਰ। ਐਸਾ ਰੂਪ ਹੈ। जीरो ਕਲੰਕ ਲੱਗਦਾ ਏ ਜਿਹਨੂੰ ਪਰਮ ਜੀ ਦੇ ਨੇੜੇ ਆਉਂਦਾ ਹੀ ਨਹੀਂ ਕਲੰਕ ਪਰਮ ਹੈ ਹੁੰਦਾ ਹੋਰ ਕੁਝ ਨਹੀਂ ਹੁੰਦਾ ਕਲੰਕ ਕੀ ਹੈ ਪਰ ਜਿਹਦੇ ਅੰਦਰ ਪਰਮ ਨਹੀਂ ਕੋਈ ਪੈਦਾ ਕਰ ਸਕਦਾ ਪਰਮਾ ਪੈਦਾ ਕਿੱਥੇ ਕਰ ਹੁੰਦਾ ਹੈ ਜਿੱਥੇ ਪਹਿਲਾਂ ਪਰਮ ਹੋਵੇ ਜਿੱਥੇ ਪਰਮ ਪਹਿਲਾਂ ਹੋਵੇ ਉੱਥੇ ਪਰਮ ਹੋਰ ਪੈਦਾ ਕੀਤਾ ਜਾ ਸਕਦਾ ਹੈ ਜਿੱਥੇ ਪਰਮ ਹੋਵੇ ਜਿੱਥੇ ਪਰ ਹੋਵੇ ਪਹਿਲਾਂ ਉਹ ਵੀ ਜੇ ਇਦਾਂ ਦਾ ਪੈਦਾ ਕਰਨ ਵਾਲਾ ਤਗੜਾ ਜਿਆਦਾ ਗਿਆਨवान ਹੈ ਨਾ ਜਿਹਦੇ ਪੈਦਾ ਕਰਨਾ ਪਰ ਉਹਦੇ ਕੋਲ ਗਿਆਨ ਘੱਟ ਹੈ ਤਾਂ ਹੀ ਪੈਦਾ ਕਰ ਸਕਦਾ ਘੱਟ ਗਿਆਨ ਵਾਲਾ ਵੱਧ ਗਿਆਨ ਵਾਲੇ ਨੂੰ ਪਰ ਪੈਦਾ ਨਹੀਂ ਕਰ ਸਕਦਾ ਉਹਦੇ ਅੰਦਰ ਉਹਦੇ ਕੋਲੋ ਸ਼੍ਰੀ ਪਹਿਲਾਂ ਹੀ ਜਾਂਦਾ ਇਸ ਕਰਕੇ ਜਿਹੜੇ ਕੁਝ ਪੜ ਲੈਂਦੇ ਨੇ ਗਿਆਨ ਤਿੰਨਾ ਬੜਿਆ ਨਾ ਫਿਰ ਬਾਜਾਂ ਤੇ ਸਿਕਦਾਰਾ ਇੰਨਾ ਬੜਿਆ ਇਹਨਾਂ ਨੇ ਗਿਆਨ ਪੜ ਲਿਆ ਅਗਿਆਨੀ ਜਿਹੜੇ ਨਾ ਨਹੀਂ ਬੜਿਆ ਉਹਨਾਂ ਦੇ ਅੰਦਰ ਬੈਠਾ ਕਰ ਸਕਦੇ ਨਹੀਂ ਇਹਨਾਂ ਦੇ ਜਿਹੜੇ ਨੇ ਗਾਹਾਂ ਬੈਠੇ ਉਹਨਾਂ ਦੇ ਡੱਡੀ ਪਰ ਬੈਠਾ ਸਕਦੇ ਉਹਨਾਂ ਦੇ ਕਿ ਮੈਂ ਕਰਦਾਂਗੇ ਉਹ ਤਾਂ ਇਹਨਾਂ ਨੂੰ ਬਨਾਲ ਕੇ ਠੱਗ ਕਹਿ ਦਿੰਦੇ ਨੇ ਆਪ ਤੋਂ ਕਟ ਗਿਆਨ ਵਾਲੇ ਨੂੰ ਹੀ ਦੇਖੋ ਨਾ ਠੱਗੀ ਜੇ ਕੋਈ ਮਾਰਦਾ ਉਲਝਾੜਨਾ ਮਾਰਦਾ ਜਿਹੜਾ ਪਹਿਲਾ ਨਹੀਂ ਠੱਗਾ ਸੰਤ ਨੂੰ ਸੰਤ ਤੇ ਭਰੋਸਾ ਨਹੀਂ ਦੌਰੂ ਕੋਈ ਵੀ ਠੱਗਾ ਮੈਂ ਵੀ ਠੱਗਾ ਦੋੜ ਢੱਕਨੇ ਉਹਦਾ ਮਨ ਤੇ ਸੁਪਨਿਆਂ ਨਾਲ ਲੜੇ ਤਾਂ ਜ਼ਹਿਰ ਨੂੰ ਜੜੇ ਤੇ ਦੋ ਸੁਪਨ ਜਹਿਰ ਨੂੰ ਜਾਣੇ ਆ ਜੈ ਤਾਂ ਦੌਰੂ ਚੱਲਦੀ ਆ ਜਿਹੜਾ ਸਭੋ ਨਾ ਹੋਵੇ ਜੈ ਤਾਂ ਚੂਹੇ ਨੂੰ ਝੜੂ ਵਿਚਾਰੇ ਨੂੰ ਇਹਨਾਂ ਸੱਪ ਦੀ ਖੁਰਾਕ ਹੈ। ਬਾੜ ਸਬ ਪ੍ਰਭੂ ਸਾਖੀ ਨੂੰ ਮੀਂਹ ਜਿਵੇਂ ਲਿਆ ਖਈਏ ਰ ਉਹ ਤਾਂ ਬਿੱਲੀ ਵੀ ਖਾ ਜਾਂਦੀ ਹੈ ਸੱਪ ਨਾਲ ਰੱਖਣਾ ਹੀ ਜੀ ਜ਼ਰੂਰੀ। ਜਿਆਦਾ ਗਿਆਨਵਾਨ ਆਦਮੀ ਘੱਟ ਗਿਆਨਵਾਨ ਆਲਿਆਂ ਨੂੰ ਠੱਗ ਲੈਂਦੇ ਨੇ ਪਰਮ ਪਹਿਲਾ ਕਰਕੇ। ਜਿੱਥੇ ਪਰਮ ਦਾ ਨਾਮ ਨਿਸ਼ਾਨ ਲਾਇਓ ਨਹੀਂ ਉੱਥੇ ਪਰਮ ਪੈਦਾ ਨਹੀਂ ਕੀਤਾ ਜਾ ਸਕਦਾ। ਉਦੋਂ ਪਹਿਲਾ ਵਡਾ ਉਹ ਤੋਂ ਗਾਹ ਨਾ ਗਿਆ ਰਾਂ ਉਹ ਤੋਂ ਗਾਹ ਖੜਾ ਉੱਚਾ ਉਹ ਜਾਣਦਾ ਉਹਨਾਂ ਨੂੰ ਇਹ ਜਸ ਅਵਸਥਾ ਵਿਸਥਾ ਪਰਮ ਦਾ ਨਾਸ ਕਰੀਦਾ ਹੁੰਦਾ ਗੁਰ ਪ੍ਰਸਾਦ ਇਹੋ ਹੋ ਗਿਆ ਨੁੰਦਾ ਜੀ ਦੇ ਕਿਰਪਾ ਨਾਲ ਪਰਮ ਦਾ ਨਾਸ ਹੋ ਗਿਆ ਇਹਦਾ ਆਪਣਾ ਗੁਰਬਾਣੀ ਜਿਨ੍ਹਾਂ ਨੇ ਰਚੀ ਹੈ ਉਹਨਾਂ ਦੇ ਆਪਣੇ ਪਰਮ ਦਾ ਨਾਸ ਸੀ ਸਾਡੇ ਪਰਮ ਦਾ ਨਾਸ ਕਰਨ ਵਾਸਤੇ ਸਾਨੂੰ ਆ ਲਿਖ ਕੇ ਦੇ ਉਹਨਾਂ ਦੇ ਅੰਦਰ ਅਸੀਂ ਪਰਮਕਮਾ ਕਰ ਦਿੰਦੇ ਸਾਰੇ ਉਹਦਾ ਸਾਰੇ ਦੋਸਾਂ ਚ ਫਿਰ ਉਹਨਾਂ ਤੇ ਕਿਸੇ ਦਾ ਅਸਰ ਨਹੀਂ ਹੋਇਆ ਸੰਤ ਦੇ ਉੱਤੇ ਕਿਸੇ ਦਾ ਅਸਰ ਨਹੀਂ ਹੁੰਦਾ ਹੁੰਦਾ ਜਿਹੜਾ ਅਸਲੀ ਸੰਤ ਹੈ ਉਹਦੇ ਤੇ ਬਦੀ ਹੁੰਦਾ ਸੰਤ ਨੇ 6.53 ਕੋਟਕ ਮਿਲੇ ਸੰਤ ਇਹ ਕਹਿੰਦੇ ਸੰਤ ਦਾ ਅਸਰ ਹੋ ਜਾਂਦਾ ਸੰਗਤ ਦਾ ਅਸਰ ਵੀ ਉਹ ਤੇ ਹੁੰਦਾ ਜਿਹੜਾ ਸਾਡੇ ਨਾਲ ਕੱਟ ਗਿਆ ਨਾ ਨੋਵੇ ਬਦਲ ਤੇ ਨਹੀਂ ਹੁੰਦਾ ਹੁੰਦਾ ਬਦਾਂ ਦੇ ਕਮ ਹੋ ਜੂ ਬਦਾਂਲੇ ਦਾ ਘੱਟਾਲੇ ਦਾ ਅਸਰ ਹੋਊਗਾ ਜਿਆਦਾ ਆਲੇ ਜਿਆਦਾ ਆਲੇ ਦਾ ਜੇ ਅਸਰ ਇਹਦੀ ਕਬੂਲ ਕਰਦੇ ਜੇ ਨਾਨਕ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ ਜੇ ਕਬੀਰ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ ਤਾਂ ਕਬੀਰ ਨੇ ਕਿਹੜਾ ਕਿਸੇ ਦਾ ਕਰ ਲਿਆ ਕਬੀਰ ਨੇ ਕਿਹੜਾ ਕਿਸੇ ਦਾ ਕਰ ਲਿਆ ਨਾਨਕ ਨੇ ਕਿਹੜਾ ਕਿਸੇ ਦਾ ਕਰ ਲਿਆ ਭਗਤਾਂ ਨੇ ਕਿਹੜਾ ਕਿਸੇ ਦਾ ਕਰ ਲਿਆ ਉਹਨਾਂ ਨੇ ਨਹੀਂ ਕੀਤਾ ਨਾ ਕਰੋ ਇਹਦਾ ਮਤਲਬ ਇਹ ਨਹੀਂ ਵੀ ਜਿਆਦਾ ਆਦਮੀ ਹੋਣੇ ਕਿ ਪਾਸੇ ਤਾਂ ਇੱਕ ਆਦਮੀ ਦਾ ਅਸਰ ਹੋ ਬਿਲਕੁਲ ਨਹੀਂ ਹੁੰਦਾ ਹੁੰਦਾ ਤਾਂ ਬੁੱਢੇ ਪਰ ਆਦਮੀ ਵੀ ਇੱਕ ਪਾਸੇ ਖੜੇ ਆਪੋ ਜਿਹਾ ਉਹ ਵੀ ਉਹਨਾਂ ਦੀ ਗੱਲ ਨਹੀਂ ਬਲਦੇ ਸੰਸਾਰ ਦੇ ਵਿੱਚ ਵੀ چاہے ساری ਜ਼ਿੰਦਗੀ ਹਰੀ ਜਾਣ ਐਤਾ ਨਹੀਂ ਐਸਰ ਹੁੰਦਾ ਐਸਰ ਹੁੰਦਾ ਐਸਰ ਬੰਦੇ ਤੇ ਐਸਰ ਕਬੂਲੂ ਦਾ ਐਸਰ ਹੋ ਬਨਾ ਸੱਡੀ ਹੋ ਸਕਦਾ ਇੱਥੇ ਇਸ ਕਰਕੇ ਜਿੰਨਾ ਵਰਗੇ ਕਿਸੇ ਨੂੰ ਪੜਾਈ ਜਾਓ ਜਿੰਨਾ ਵਰਗੇ ਪ੍ਰਚਾਰ ਕਰਿਓ ਜਿੰਨਾ ਜਰੋਂ ਐਸਰ ਕਬੂਲ ਨਹੀਂ ਕਰਦਾ ਐਸਰ ਉਹਤੇ ਹਲੋ ਨਹੀਂ ਇਹੀ ਗੱਲ ਗਾਹਾਂ ਦੱਸੀ ਗਈ ਲੋਡ ਇਹ ਪਾਵਰ ਹਰੇ ਕੋਲ ਹੈ ਜਿਹੜਾ ਹਰ ਦੁਆ ਨਾ ਹਰ ਸਾਰੇ ਹਲ ਨਾ ਦੁਕਸਾਰ ਉਹ ਵੀ ਤਾਂ ਹਰੇ ਆ ਉਹ ਜਿਹਨੂੰ ਖਸ ਪਿਆ ਹੋਇਆ ਉਹ ਵੀ ਨਹੀਂ ਕਬੂਲ ਕਰਦਾ ਅਸਰ ਉਹ ਵੀ ਆਪਣੀ ਵਰਗੀ ਨਾਲ ਕਬੂਲ ਕਰਦਾ ਅਸਰ ਇਹ ਤਾਂ ਸਾਰੇ ਅਗਿਆਨੀ ਜਾਨਵਰ ਨਾ ਹੋ ਜਾਣ ਸਾਰੇ ਅਗਿਆਨੀ ਦੇ ਹੀ ਮੰਦੇ ਉਹਨੂੰ ਕਹਿੰਨ ਕਰਦੇ ਕਬੂਲ ਅਸਰ ਕਰਨਾ ਨਾ ਕਰਨਾ ਇਹਦੇ ਉੱਤੇ ਆਪਣੇ ਜੀਵ ਤੇ ਡਿਪੈਂਡ ਕਰਦਾ ਇੰਡੀਪੈਂਡੈਂਟ ਹੈ ਕੋਈ ਇਹ ਤੇ ਅਸਰ ਨਹੀਂ ਪਾ ਸਕਦਾ ਸਿਰਫ ਉਹ ਪਾ ਸਕਦੀ ਤੁਰਕੀ ਬਣੀ ਹੋਰ ਕੋਈ ਨਹੀਂ ਪਾ ਸਕਦਾ ਉਹ ਪਾ ਸਕਦੀ ਹੈ ਕਿ ਕੋ ਬੁੱਧੀ ਤੇ ਉੱਪਰ ਹੈ ਸਾਡੀ ਤੋਂ ਉਹ ਸਾਡੇ ਉਹਨੂੰ ਮੰਨਣਾ ਨਾ ਮੰਨਣਾ ਸਾਡੇ ਵਾਸਤੇ ਗੱਲ ਨਹੀਂ ਹੈ ਇਹਨੂੰ ਮੰਨਣਾ ਨਾ ਮੰਨਣਾ ਇਹ ਕੁਰਬਾਨੀ ਨੂੰ ਮੰਨਣਾ ਨਾ ਮੰਨਣਾ ਸਾਡੇ ਵਾਸਤੇ ਗੱਲ ਹੈ ਸੰਸਾਰ ਵਿੱਚ ਆਦਮੀ ਦੀ ਗੱਲ ਬੰਨਣਾ ਨਾ ਨਾ ਸਾਡੇ ਵਾਸਤੇ ਗੱਲ ਹੈ ਉਹ ਜਵਾਨੀ ਨੂੰ ਬੰਨਣਾ ਨਾ ਬੰਨਣਾ ਸਾਡੇ ਵਾਸਤੇ ਗੱਲ ਨਹੀਂ ਹੈ ਉਹ ਤਾਂ ਜਾਣਾ ਕਰਕੇ ਦਿਖਾ ਲ ਦਿੰਦੀ ਹੈ ਐਸਾ ਸਤਗੁਰ ਜੇਬ ਲੈ ਕੱਢ ਰਤਨ ਅਰੇ ਪ੍ਰਗਿਆਸ ਅਰੇ ਪ੍ਰਗਿਆਸ ਉਹ ਤਾਂ ਪ੍ਰਗਿਆਸ ਕਰ ਉਹ ਗੱਲ ਹੋਰ ਇਹ ਗੱਲ ਗੁਰਬਾਣੀ ਦੀ ਸਾਡੀ ਹੋਰ ਅਸੀਂ ਨੇ ਕਿਤੇ ਪ੍ਰਭਾਵ ਕਰ ਸਕਦੇ ਲੋ ਪ੍ਰਚਾਰ ਹੋ ਰਿਹਾ ਸੀ ਗੁਰੂ ਘਰ ਦਾ ਬੰਨਣਾ ਆਪਣਾ ਲੋਕਾਂ ਦੀ ਬਰਤੀਸ ਹਾਂ ਇਹ ਜੀ ਦੇ ਚੰਦੇ ਬਾਗ ਸੀ ਉਹ ਬੋਲਿਆ ਇਹਦੇ ਬਾਗ ਵੜੇ ਸੀ ਨਾ ਨਹੀਂ ਬਣਿਆ ਇਹ ਕਹਿ ਸਕਦੇ ਹਾਂ ਅਸੀਂ ਚੰਦੇ ਬਾਗ ਵਾਲਿਆਂ ਨੇ ਬੋਲਿਆ ਮੜੇ ਬਾਗੜੇ ਰਹਿ ਕੇ ਉਹ ਕਲੰਕ ਰੂਪ ਅਪਾਰ ਅਕਲੰਕ ਰੂਪ ਆਪਾਰ ਅਕਲੰਕ ਰੂਪ ਹੈ ਉਹਦਾ ਹਰ ਦਾ ਰੂਪ ਅਕਲੰਕ ਹੋ ਜਾਂਦਾ ਉਹਦੇ ਤੇ ਨਾ ਸਰਬ ਦਾ ਕਿਸੇ ਦਾ ਫਿਰ ਅਣਛੇਤ ਬਾਹਰ ਰੂਪ ਹੈ ਉਹਦਾ ਐਸਾ ਰੂਪ ਕੋ ਕੋ ਪੀ ਜਾ ਫਿਰ ਉਹ ਅਪਾਰ ਹੈ ਅਣਛੇਜ ਤੇਜ ਉਦਾਰ ਅਣਛੇਜ ਤੇਜ ਤੇਜ ਕਿੰਨਾ ਦਾ ਅਣਛੇਜ ਤੇਜ ਤੇਜ ਕੀ ਹੈ ਉਦਾਰ ਤੇ ਜਿਹੜੇ ਉਹਦੀ ਜੋ ਤਾਂ ਹੈ ਉਹ ਦੇਖੋ ਜਿਹੜਾ ਗਿਆਨ ਉਹ ਕਟਾਇਆ ਨਹੀਂ ਜਾ ਸਕਦਾ ਛਿੱਜ ਕਰਨਾ ਕਟਾ ਦੇਣਾ ਕੋਈ ਹੋਰ ਵੱਡਾ ਗਿਆਨ ਮੂਰੇ ਰੱਖ ਦੇਣਾ ਨਾ ਜਿਵੇਂ ਕੋਈ ਦੀਵਾ ਜਲਦਾ ਉਹਦੇ ਅੱਗੇ ਹੋਰ ਕੋਈ ਵੱਡਾ ਦੀਵਾ ਰੱਖ ਉਹ ਦੀਵੇ ਦਾ ਤੇਜ ਉਹ ਨਹੀਂ ਹੋਵੇ ਭਾਵੇਂ ਉਹ ਘਟ ਜਾਂਦਾ ਛਿੱਜ ਜਾਂਦਾ ਛੋਟਾ ਬਲਬ ਜਗਦਾ ਉਹਦੇ ਕੋਲ ਵੱਡਾ ਬਲਬ ਜਾਲ ਦਈਏ ਨਾ ਉਹ ਲੱਗਦਾ ਬੁੱਧ ਬਲਗਦਾ ਸਾਨੂੰ ਲੱਗਣ ਲੱਗਦਾ ਇਹ ਐਡਾ ਤੇਜ ਹੈ ਕਿ ਇਹ ਦੇ ਮੁਕਾਬਲੇ ਜੇ ਤੋਂ ਵੱਡਾ ਕੋਈ ਹੈ ਉਹ ਨਹੀਂ ਬਲਵ ਐ ਕਹ ਲੋ ਕਰੋੜਾਂ ਸੂਰਜ ਵੀ ਚਾਲਦੀਏ ਤਾਂ ਵੀ ਕੋਈ ਨਹੀਂ ਫਰਕ ਪੈਂਦਾ ਕੋ ਕੋ ਤਾਂ ਗਿਆਨ ਐਡਾ ਵੱਡਾ ਵੱਡਾ ਗਿਆਨ ਹੋਰ ਹੈ ਨਹੀਂ ਇਹ ਵੱਡੀ ਜੋਤ ਇਹ ਜ਼ਿਆਦਾ ਚੱਲਣ ਵਾਲਾ ਕਰਨ ਵਾਲਾ ਕੋਈ ਨਹੀਂ ਹੈ ਸੰਸਾਰ 'ਚ ਉਦਾਰ ਹੈ ਇਸ ਕਰਕੇ ਕੋਈ ਲੈ ਜਾਓ ਜਿੰਨਾ ਵਧੀ ਲੈ ਜਾਓ ਫਰੀ ਲੈ ਜਾਓ ਕੋਈ ਕੀਮਤ ਨਹੀਂ ਇਹ ਉਦਾਰਤਾ ਹੈ बिकਦਾ ਨਹੀਂ ਹੈ ਗਿਆਨ ਸੰਸਾਰ ਚ ਲੈਣ ਵਾਲਾ ਹੀ ਕੋਈ ਨਹੀਂ ਹੈ ਲੈਣ ਵਾਲੇ ਨੂੰ ਲੱਭਣਾ ਪੈਂਦਾ ਲੈਣ ਵਾਲੇ ਨੂੰ ਲੱਭਣਾ ਪੈਂਦਾ ਜਿੰਨਾ ਜਰ ਤਸਕਰ ਹੈ ਉਹਨਾਂ ਤੇ ਤਸਕਰ ਉਹ ਨਾਮ ਨਹੀਂ ਲੈਂਦਾ ਹੁੰਦਾ ਤੋ ਤਸਕਰ नाम ਨਾਮ ले ਲੈਵੇ ਜਿਹੜੇ ਨਾਮ ਨਹੀਂ ਲੈਂਦੇ ਨਾ ਉਹ ਸਾਰੀ ਤਸਕਰ ਕੁਰਬਾਨੀ ਤਾਂ ਇਹ ਕਹਿੰਦੀ ਤਸਕਰ ਖੰਡ ਨੇ ਚੋਲ ਨੂੰ ਘਟੀਆਂ ਮਾਲ ਵੇਚਣ ਵਾਲੇ ਨੇ ਸੱਚ ਦੀ ਜਗਾ ਝੂਠ ਵੇਚਣ ਵਾਲੇ ਦੇ ਦੋ ਝੂਠ ਨੂੰ ਸੱਚ ਕਹਿ ਕੇ ਵੇਚਣ ਵਾਲੇ ਪ੍ਰਚਾਰਕ ਕਾ ਨਾਮ ਨਹੀਂ ਲੈਣਗੇ ਕਦੇ ਔਰ ਉਹਨਾਂ ਨੇ ਵੇਚਣਾ ਕਿਉਂਕਿ ਇਹਨੂੰ ਵੇਚ ਨਹੀਂ ਸਕਦੇ ਤਾਂ ਨਹੀਂ ਲੈਂਦੇ ਜਿਨ੍ਹਾਂ ਲੋਕਾਂ ਨੇ ਤਰਬ ਨੂੰ ਤਾਂ ਦਾਅ ਬਣਾਇਆ ਹੋਇਆ ਹੈ ਕਹਿੰਦਾ ਮਤਲਬ ਉਹ ਨਾਮ ਨਹੀਂ ਲੈਂਦੇ ਉਹਨਾਂ ਦੇ ਮਤਲਬ ਦੀ ਚੀਜ਼ ਨਹੀਂ ਹੈ ਕਿਉਂਕਿ ਤੱਦਾ ਨਹੀਂ ਰਹਿਣਾ ਤਾਂ ਫਿਰ ਇੱਥੇ ਸਭ ਕੁਝ ਕੋਲੋਂ ਦੇਣ ਨੂੰ ਹੈ ਲੈਣ ਨੂੰ ਕੁਝ ਨਹੀਂ ਲੈਣ ਨੂੰ ਫਿਰ ਕੀ ਹੈ ਯਾਦ ਆ ਬਸ ਸਭ જગ ਤੇਰਾ ਹੋਇਆ ਹੈ ਜੇ ਤੂੰ ਮੇਰਾ ਹੋਇਆ ਹੈ ਤੂੰ ਸਮਝ ਕਿ ਤੇਰਾ ਹੋਇਆ ਇਹ ਤਾਂ ਫਿਰ ਸਮਝਾ ਕਿ ਤੇਰਾ ਹੋਇਆ ਸਾਰਾ ਕੁਝ ਹੀ ਮਿਲ ਜਾਂਦਾ ਪਰ ਪਹਿਲਾ ਕੋਲ ਕੱਖ ਨਹੀਂ ਰੰਦ ਪਰਾ ਕੋਲ ਕੱਖ ਹੀ ਰੰਦ ਜਿੰਨਾ ਜੇ ਰਹਿੰਦਾ ਉਹਨਾਂ ਜਿਹੜੇ ਮਿਲਦਾ ਨਹੀਂ ਉਹ ਇਹ ਬੰਦੇ ਦੀ ਗੱਲ ਕਿਉਂਕਿ ਪਹਿਲੀ ਸ਼ਰਤ ਹੈ ਤਨਮਨ ਤੁਹਾਨੂੰ ਸਭ ਸੁਭ ਕੁੁਰ ਕੋ ਹੋ ਕਬ ਮਨੇ ਆ ਇਹ ਗੱਲ ਉਹਨਾਂ ਨੂੰ ਕਬੂਲ ਨਹੀਂ ਗਾਂਧੀ ਗੱਲ ਦਾ ਉਹ ਭਰੋਸਾ ਨਹੀਂ ਕਰਦੇ ਪਹਿਲਾਂ ਤਾਂ ਦੇਣਾ ਬਹੁਤ ਨੋ ਕੁਛ ਮਿਰੁਤਾ ਬਾਜ ਪਾ ਇਹ ਨਹੀਂ ਉਹ ਭਰੋਸਾ ਕਰਦੇ ਕਿਸੇ ਤੇ ਉਹ ਰੇ ਕੀ ਕਰਦੇ ਇਸ ਗੱਲ ਤੇ ਉਹ ਤਸਕਰ ਨੇ ਜਿਹੜੇ ਆਪਨੇ ਉਹ ਜਆ ਬਾਲਦੇ ਨੇ ਸਭ ਨੂੰ ਉਹਨਾਂ ਨੂੰ ਗੁਰੂ ਵੀ ਇਹ ਜਿਹਾ ਹੀ ਲੱਗਦਾ ਹੈ ਜਿਹੜੇ ਉਹ ਆਪਨੇ ਜਿਹੜੇ ਆਪ ਗੱਲਾਂ ਕਰਦੇ ਨੇ ਨਾ ਲੋਕਾਂ ਨਾਲ ਉਹ ਕਹਿੰਦੇ ਗੁਰੂ ਨੇ ਵੀ ਇਹ ਜਿਹਾ ਹੀ ਕੀਤੀ ਹੋਣੀ ਹੈ ਨਾ ਖਬਰਾਂ ਨਾ ਕੀ ਪਤਾ ਇਹਦਾ ਲੈ ਕੇ ਭਰੋਸਾ ਨਹੀਂ ਕਰਦੇ ਬਾਣੀ ਤੇ ਸਿੱਖ ਪ੍ਰਚਾਰਕ ਵੀ ਨਹੀਂ ਕਰਦੇ ਦੁਆ ਨਾਲ ਦਾ ਦੁਆ ਨਾਲ ਦਾ ਮਤਲਬ ਵੀ ਨਹੀਂ ਕਰਦਾ ਜਿਹੜਾ ਆਪਣੇ ਪਿਓ ਤੇ ਆਪੇ ਨਹੀਂ ਭਰੋਸਾ ਕਰਦਾ ਦੁਆ ਦਾ ਦੁਹੇ ਦੇ ਪਿਓ ਤੇ ਕਰੇ ਜਾਂ ਨਾ ਕਰੇ ਜਿਹੜਾ ਆਪੇ ਨਹੀਂ ਕਰਦਾ ਭਰੋਸਾ ਤੋਂ ਜ਼ੁਰਤਾ ਉਹਦਾ ਦੁਆ ਦਾ ਦੁਹੇ ਤੇ ਕਿਉਂ ਕਰੂ ਇਸਲਾਮ ਤੇ ਅਸੀਂ ਕਰੀਏ ਨਾ ਕਰੀਏ ਸਾਡੀ ਮਰਜ਼ੀ ਹੈ ਜਿ ਸਾਹਿਬ ਅਤੇ ਨੂੰ ਮੱਤਿਆਦਿਕ ਰਹੀਏ ਸਾਡੀ ਮਰਜ਼ੀ ਹੈ ਪਰ ਸਿੱਖੋ ਕੇ ਸਿੱਖੀ ਤੇ ਵੀ ਭਰੋਸਾ ਨਾ ਕਰੀਏ ਇਹ ਸਾਡੀ ਮਰਜ਼ੀ ਨਹੀਂ ਹੈ ਜੇ ਇਹ ਸਾਡੀ ਮਰਜ਼ੀ ਆ ਫਿਰ ਅਸੀਂ ਸਿੱਖੀ ਤੋਂ ਖਾਰਜ ਵੀ ਹੋ ਨਾਲੇ ਵੀ ਹੈ ਜੇ ਬਾਪ ਤੇ ਭਰੋਸਾ ਜੀ ਤਾਂ ਬਾਪ ਬਾਬੇ ਪਰ ਕੱਢ ਦਿੰਦਾ ਘਾਗਿਆਂ ਚੋ ਉਹ ਵੀ ਕਾਹ ਦੀ ਗੱਲ ਦਿੰਦਾ ਵੀ ਮੇਰਾ ਹੈ ਜੀ ਯਵੇਂ ਨਾਇਕ ਹੋਈ ਨਿਸ਼ਤਰੀ ਇਹ ਗੱਲ ਨਾਲ ਦੀ ਨਾਲ ਇਹ ਵੀ ਦੇਖਣੀ ਚਾਹੀਦੀ ਵੀ ਜੇ ਤੁਸੀਂ ਜਿਆਦਾ ਚਲਾਕ ਬਣਦੇ ਹੋ ਤਾਂ ਘਟ ਘਟ ਕੇ ਜਾਣਦਾ ਘਟ ਘਟ ਕੇ ਉਹ ਵੀ ਜਾਣਦਾ ਜਿਆਦਾ ਚਲਾਕੀ ਜਿਹੜੀ ਉਹ ਤੁਹਾਨੂੰ ਲੈ ਕੇ ਡੁੱਬ ਜੂਗੀ ਜਿਹੜੇ ਜਿਆਦਾ ਚਲਾਕ ਨੇ ਡੁੱਬ ਜਾਣਗੇ ਆਣ ਰੂਪ ਦਰੰਤ ਆਣ ਰੂਪ ਦਰੰਤ ਦੇ ਕੋ ਦੂਰੀਆਂ ਤੇ ਬਿਲਾਲ ਦੀਆਂ ਖਤਮ ਕਰਨ ਵਾਲਾ ਸਭ ਦੀ ਦੂਰੀਆਂ ਨੇ ਜੜੀ ਉਹਦਾ ਅੰਤ ਕਰਨ ਵਾਲਾ ਇੱਕ ਕਰਨ ਵਾਲਾ ਸਾਰਿਆਂ ਨੂੰ ਇਹ ਜਿਹੜਾ ਹਰ ਹੁੰਦਾ ਨਾ ਸਾਰਿਆਂ ਨੂੰ ਇੱਕ ਕਰਦਾ ਹੈ ਕਹਿੰਦਾ ਇੱਕ ਪਿਤਾ ਇੱਕ ਸਕੇ ਹਮਾਰਕ ਇਹ ਹੋਰੇ ਅੰਤ ਕਰੀ ਜਾਂਦਾ ਕੀ ਤਰ੍ਹਾਂ ਵਿਚਾਰੇ ਗੁਰਮੱਤਾ ਗਿਆਨ ਹੋਵੇ ਤਾਂ ਅਰਥ ਕਰੇ ਪੰਡਤ ਰੋਗ ਰਹੇ ਹੈ ਖਾਦਰ ਬੜੇ ਹੋਏ ਨੇ ਇਹਨਾਂ ਨੂੰ ਕੀ ਪਤਾ ਵੀ ਗੁਰਮਤ ਕੀ ਕਹਦੀ ਹੈ ਹਰ ਕੀ ਕਰਦਾ ਹੈ ਇਹਨੂੰ ਕੀ ਪਤਾ ਹੈ ਇਹ ਹਰ ਜੋ ਕ੍ਰਿਸ਼ਨ ਕਰਦਾ ਉਹ ਸਮਝਦੇ ਨੇ ਕ੍ਰਿਸ਼ਨ ਉਹਦਾ ਮਾਲ ਦਾ ਠੱਗੀਆ ਲਖਣਾ ਉਹ ਜਰਾ ਜਾਣਦਾ ਹੈ ਨੇ ਦੱਸਦਾ ਵੀ ਤੂੰ ਭਾਈ ਸਾਰੇ ਕੱਪੜੇ ਲਾ ਕੇ ਆਪਣੀ ਮਾਂ ਦੇ ਸਾਹਮਣੇ ਖੜਾ ਹੋ ਜਾ ਫਿਰ ਤੂੰ ਮਰਦਾ ਨਹੀਂ ਠੱਗੀ ਮਾਰ ਕੇ ਉਹ ਪੋਤੇ ਲਖਦੇ ਅੜਦਾਲੇ ਉਹ ਵਰਵਾਣਾ ਦੋ ਸੀ ਇਹਨਾਂ ਦੇ ਬਿਸ਼ਨੂ ਆਹਰ ਉਹਦਾ ਮਾਲ ਦਾ ਠੱਗੀਆ ਰਾਖਸ਼ ਦੇਵਤਿਆਂ ਨੂੰ ਉਹ ਸਾਰਾ ਸਬੂਧਾ ਡੜਕ ਲਿਆ ਠੱਗੀ ਮਾਰੀ ਦਿੱਤਾ ਉਹਨਾਂ ਨੂੰ ਕੋ ਸੁਭਰੀ ਇਹ ਸਾਡੇ ਆਲਾ ਹਾ ਠੱਗ ਨਹੀਂ ਹੈ ਉਹ ਹੈ ਤਾਂ ਸਹੀ ਪਰ ਹੋਰ ਕਿਸੂ ਦਾ ਜਗ ਕੋ ਠਗੌਰੀ ਲਾਈਏ ਸਭ ਸਾਨੂੰ ਮੋਹ ਦੇ ਦਿੱਤਾ ਐਨੀ ਹੋਈ ਗੱਲ ਇਹ ਤੋਂ ਜ਼ਿਆਦਾ ਨਹੀਂ ਪਰ ਛੜਾ ਵੀ ਰਿਹਾ ਹੁਣ ਇਹ ਲੈ ਆਯਾ ਤੇ ਛੜਾ ਵੀ ਰਿਹਾ ਜੇ ਬੋਣਾ ਹੁੰਦਾ ਸੰਸਾਰ ਨਹੀਂ ਸੀ ਪੈਦਾ ਹੁੰਦਾ ਹਟ ਠੱਗ ਜਾ ਕੋਠੋਰੀ ਲਾਈ ਹੈ ਨਾ ਪਰ ਉਹ ਇਹ ਜਾ ਠੱਗ ਨਹੀਂ ਹੈ ਆਪਣੀ ਡੱਕ ਨੂੰ 10 ਦਾ ਵੀ ਮੈਂ ਠੱਗਿਓ ਲਾਈ ਸੀ ਛੱਡ ਦੋ ਹੁਣ ਇਹਨੂੰ ਬਸ ਬੰਦ ਕਰ ਦੋ 10 ਵੀ ਨੰਦਾ ਹੈ ਵੀ ਇਹ ਤਾਂ ਹੋਈ ਕਿ ਹਾਜ਼ੀ ਮਜ਼ਾਕ ਕੀਤਾ ਸੀ ਤੁਹਾਨੂੰ ਇਹ ਸੱਚ ਨਹੀਂ ਹੈਗਾ ਛੱਡ ਦੋ ਇਹਨੂੰ ਝੂਠੀ ਦੇਖੀ ਪ੍ਰੀਤ ਜਗਤ ਵਿੱਚ ਇਹ ਝੂਠੀ ਐ ਛੱਡ ਦੋ ਇਹਨੂੰ ਝੂਠੀ ਫੜੀਦਾ ਹੁੰਦਾ ਪਰ ਫੇਰ ਨਹੀਂ ਛੱਡਦੇ ਨਾ ਛੱਡੀਏ ਸਾਡਾ ਕਸੂਰ ਹੈ ਉਹਨੇ ਆਪਣੀ ਦਸਤੀ ਝੂਠੀ ਐ ਹਾਂਜੀ ਆਣ ਭੇਜੇ ਰੂਪ ਦਰੰਤ ਆਣ ਭੇਜਿਆ ਫਿਰ ਵਿੱਜਣਾ ਨਹੀਂ ਕਿ ਸੜੂ ਵਿੱਜਣਾ ਮਤਲਬ ਐ ਕੋਈ ਉਹਨੂੰ ਚੰਗਾ ਕੋਈ ਮਾੜਾ ਹੋਵੇ ਇਹ ਗੱਲ ਹੈ ਕਿਸੇ ਨਾਲ ਕੋਈ ਚੰਗਾ ਲੱਗਦਾ ਹੋਵੇ ਕੋਈ ਮਾੜਾ ਲੱਗਦਾ ਹੋਵੇ ਇਹ ਗੱਲ ਨਹੀਂ ਸਾਡਾ ਸੁਆਜਾ 88 ਪਿਆ ਹੋਵੇ। ਕਿਸੇ ਨਾਲ ਉਹਨੂੰ ਮੋਹ ਨਹੀਂ ਲੱਗਦਾ। ਵਕਾਰਾਂ ਜਿਹਨੇ ਪੈਦਾ ਹੋ। ਕੋਈ ਕਹੇ ਕਿਸੇ ਨਾਲ ਜਿਆਦਾ ਚੰਗਾ ਸੰਬੰਧ ਹੋਵੇ ਮੋਹ ਹੁੰਦਾ। ਜੇ ਆਪਾਂ ਕਿਸੇ ਨੂੰ ਚੰਗਾ ਸਮਝਦੇ ਆ ਕਿਸੇ ਨੂੰ ਨਹੀਂ ਚੰਗਾ ਸਮਝਦੇ ਦਰਸਲ ਮੋਹ ਹੈ। ਮੋਹ ਦਾ ਹੀ ਦੂਜਾ ਰੂਪ ਹੈ। ਅਸੀਂ ਇਹਨੂੰ ਪ੍ਰੇਮ ਕਹਿੰਦੇ ਆ ਨਾ ਪ੍ਰੇਮ ਨਹੀਂ ਹੈ। ਪ੍ਰੇਮ ਹੁੰਦਾ ਇੱਕੋ ਜਿਹਾ ਸਮਝਣਾ ਸਭ ਨੂੰ। ਮੋਹ ਹੁੰਦਾ ਘੱਟ ਵੱਧ ਸਮਝੋ ਕਿਸੇ ਤੇ ਉਹ ਔਗਣਾਂ ਔਗਲ ਨੂੰ ਲੱਗਦਾ ਨਹੀਂ ਦੇ ਵਿੱਚ ਇਸੇ ਕਰਕੇ ਤਾਂ ਸਾਰੇ ਵੱਡਾ ਉਹ ਵੱਡਾ ਵਡੇਰਾ ਹੈ ਮਾਨ ਨਾ ਵੱਡਾ ਵਡੇਰਾ ਵੱਡਾ ਵਡੇਰਾ ਕੌਣ ਹੁੰਦਾ ਜਿਹੜਾ ਸਭ ਤੋਂ ਪਹਿਲਾਂ ਪੈਦਾ ਹੋਇਆ ਹੋਵੇ ਇਹਦਾ ਹੁੰਦਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਦਾ ਪੈਦਾ ਹੋਇਆ ਹੋਇਆ ਵਕਤ ਬਾਖੀ ਬਾਦ ਪੈਦਾ ਹੋਏ ਨੇ ਉਹ ਜਗਤ ਦੇ ਵਕਤ ਨੇ ਇਹ ਜਗਤ ਦੀ ਭਗਤੀ ਨਹੀਂ ਹੈ ਇੱਕ ਜਗਤ ਦੀ ਭਗਤੀ ਹੈ ਜਗਤ ਦੇ ਲੋਕਾਂ ਨੇ ਬਣਾਈ ਹੋਈ ਭਗਤੀ ਹੈ ਜਗਤ ਦੀ ਭਗਤੀ ਕੀ ਹੈ ਜਿਹੜੇ ਸੰਸਾਰ ਦੇ ਲੋਕ ਸੰਸਾਰੀ ਬੰਦਿਆਂ ਨੇ ਭਗਤੀ ਬਣਾਈ ਉਹ ਜਗਤ ਭਗਤੀ ਹੈ ਆਦਮੀ ਨੇ ਪੈਦਾ ਹੋ ਕੇ ਭਗਤੀ ਬਣਾਈਏ ਇਹ ਭਗਤੀ ਉਹਨਾਂ ਬਣਾਈਏ ਜਿਹੜਾ ਨਾ ਪੈਦਾ ਹੋਇਆ ਨਾ ਉਹਨੇ ਪੈਦਾ ਹੁੰਦਾ ਨਾ ਹੁਣ ਪੈਦਾ ਹੋਇਆ ਹੋਇਆ ਹੈ ਨਾ ਪਹਿਲਾਂ ਪੈਦਾ ਕਦੇ ਹੋਇਆ ਨਾ ਉਹਨੇ ਪੈਦਾ ਹੋਣਾ ਇਹ ਉਹਦੀ ਭਗਤੀ ਬਣਾਈ ਹੋਈ ਹੈ ਆਦਮੀ ਨੇ ਤਾਂ ਇਹ ਤਾਂ ਹੁਕਮ ਦਾ ਹੁਕਮਤਾ ਜਦੋਂ ਸਤਜਾਰ ਪੈਦਾ ਹੋਇਆ ਉਹ ਤਾਂ ਪਹਿਲਾਂ ਪ੍ਰਗਟ ਹੋਇਆ ਜਗਰਤਾ ਨੇ ਪੈਦਾ ਕੀਤਾ ਬਾਕੀ ਬੱਤਾ ਸਾਰੀਆਂ ਬਾਅਦ ਚ ਬਣ ਜੇ ਆਦਮੀ ਦੀ ਆਪਣੀ ਜੋ ਜੋ ਬੱਤਾ ਇਹ ਪਰਮੇਸ਼ਰ ਦੀ ਬੱਤਾ ਹੈ ਵੱਦਿਆਂ ਦੀ ਬੱਤ ਜਿਹੜੀ ਹੈ ਇਹ ਤਾਂ ਛੋਟੀ ਹੈ ਗੁਰਮਤ ਸਾਰੀਆਂ ਬੱਤਾਂ ਨੂੰ ਸੇਧ ਦੇ ਰਹੀ ਹੈ ਕਹਿਣਾ ਮਤਲਬ ਇਹ ਜਿੰਨੀਆਂ ਵੀ ਸੰਸਾਰ ਦੀਆਂ ਬੱਤਾਂ ਨੇ ਸਾਰੀਆਂ ਨੂੰ ਸੇਧ ਦੇ ਰਹੀ ਹੈ ਗੁਰਮਤ ਸਿਆਣਾ ਬੰਦਾ ਸੇਧੇ ਹੁੰਦਾ ਨਾ ਸਿਆਣਾ ਹੋਈ ਉਹ ਦੈੜਾ ਸੇਧ ਦਿੰਦਾ ਜੋਸ ਤਿਲਕ ਪੂਪ੍ਰਿਤ ਭਾ ਸ੍ਰਿਸ਼ਟੀ ਇਸੇ ਨਾਲ ਸ਼ੁਰੂ ਹੋਈ ਹੈ ਇਸੇ ਨੇ 84 ਲੱਖ ਪੌੜੀ ਚੜਾਈ ਐ ਇੱਕ ਪੌੜੀ ਰਹਿੰਦੀ ਹੁਣ ਉਹ ਵੀ ਇਸੇ ਮਤਲਬ ਨੇ ਚੜਾਉਣੀ ਆ ਹਾਂ ਜਸ ਤਿਲਕ ਭੂਮ ਪ੍ਰਿਤ ਭਾਨ ਜਸ ਜਿਹਦਾ ਜਸ ਜੇ ਕਿਸੇ ਤਿਲਕ ਦਾ ਮਤਲਬ ਤਿਲਕਦਾਰ ਤਿਲਕ ਕਰਦਾ ਲਾਉਣ ਵਾਲਾ ਟਿੱਕਾ ਤਿਲਕ ਦਾ ਬੰਦਾ ਦਿਲ ਜਨਨ ਤਿਲਕ ਜਸ ਤਿਲਕ ਆ ਤਿਲ ਜਨਨ ਜਸ ਜੇ ਹੁਦਾਰਾ ਪੂ ਹਿਰਦੇ ਦੇ ਵਿੱਚ ਕਿਸੇ ਦੇ ਪੈਜ ਟਿਕ ਜਵੇ ਕਿਣ ਕਾ ਇੱਕ ਜਿਸ ਜੀਵ ਬਸਾਵਾ ਤਾਂ ਕਿ ਮਹਿਮਾ ਗੜੀ ਨਾ ਆਵੇ ਉਹਦਨ ਤੇਲ ਜਨਾ ਵਜਾਸ ਕਿਸੇ ਦੇ ਹਿਰਦੇ ਚ ਟਿਕ ਜਵੇ ਨਾ ਹਉਲਾ ਹਰ ਜਸ ਜੇ ਤੇਲ ਦੇ ਨਾ ਟਿਕ ਕਿਸੇ ਦੇ ਹਿਰਦੇ ਚ ਪੂ ਹਿਰਦਿਆਂ ਪੂਰਤ ਭਾਨ ਸਮਝੋ ਸੂਰਜ ਚੜ ਜਾਂਦਾ ਕਬੀਰ ਨੀ ਕਹਨ ਉਹਦੇ ਪਾਣ ਜਬ ਚੀਨਾ ਉਹ ਕਬੀਰ万 ਭਿਆ ਬਰਗਾਸਾ ਉਹਦੇ ਪਾਨ ਭਾ ਨੇ ਵੀ ਲੱਭ ਉਹਦੇ ਪਾਣ ਜਬ ਚੀਲੋ ਸੂਰਜ ਚੜ ਜਾਂਦਾ ਹੇਦੇ ਦੇ ਵਿੱਚ ਸੂਰਜ ਸੂਰਜ ਤੋਂ ਵੱਡਾ ਕਹਿੰਦਾ ਗਿਆ ਰੋਸ਼ਨੀ ਹੈ ਨਹੀਂ ਤੋਂ ਸੂਰਜ ਚੜ ਜਾਂਦਾ ਉਹਦੇ ਹੇਦੇ ਸੂਰਜ ਹੋ ਜਾਂਦਾ 10 4 4 ਨਿਧਾਨ ਬਸ ਉਹਨੂੰ 4 4 ਜਿਹੜੇ 10 ਉੱਪਰ ਨੇ ਲੱਜੜੇ 14 ਜਿਹੜੇ ਦੱਸੇ ਸਾਰਾ ਗਿਆਨ ਹੋ ਜਾਂਦਾ ਉਹਨੂੰ 18 4 ਲੋਕਾਂ ਦਾ ਗਿਆਨ ਹੋ ਜਾਂਦਾ ਸੱਚਖਣ ਦਾ ਤੇ ਲੋਕ ਇੱਥੇ ਦਾ ਤਿੰਨ ਲੋਕ ਦਾ ਗਿਆਨ ਆ ਗੁਰਬਾਣੀ ਦਾ ਚੌਥਾ ਲੋ ਸੱਚ ਬਿਲਕੁਲ ਹੈ ਉਹ 4ਰੇ ਇਹ ਹੋ ਗਏ 4ਰੇ ਜੋ ਚਾਰੇ ਵੇਦ ਹੋਗੇ ਨਾ ਤਾਂ ਚਾਰੇ ਜੋਗ ਹੋਗੇ ਫੇਰ ਜਾਰ ਜੋਗ ਦੀ ਸਮਝ ਆਉਦੀ ਐ ਫੇਰ ਬਰਮ ਹੋ ਗਿਆ ਨਾ ਫੇਰ ਉਹ ਚਾਰ ਪਦਾਰਥ ਵੀ ਫੇਰੇ ਪਤਾ ਲੱਗਦਾ ਫੇਰ ਸੋਧ ਕਰਦਾ ਉਹ ਜ਼ਵਸਤਾ ਚ ਸਾਰੀ ਵਿਧਿਆ ਵੀ ਸੋਧੀ ਹੋਈ ਐ ਵਿਧਿਆ ਵੀ ਸੋਧਣੀ ਪੈਂਦੀ ਐ ਵਿਦੇਸ਼ ਸੋਧੀ ਐ ਨਾ ਇਹ ਹੋਰ ਕੀ ਕੀਤਾ ਦਾ ਚਾਰ ਚਾਰ ਦੋਨੇ 18 ਬਣਾਤੇ ਖਾਣਾ ਉਹੀ ਲਿਖ ਦਿੰਦਾ ਲਿਖਾਰੀ 18 ਲਿਖ ਦਦਾ ਤੂੰ ਜਿਆਦਾ ਸਾਨ ਵੀ 18 ਲਿਖਦਾ ਜਦੋਂ ਬੱਤ ਮਾਰੀ ਗਈ ਸਮਝ ਨਹੀਂ ਆਈ 10 4 4 ਦੇ ਇਕੱਠੇ ਕਰਕੇ 18 ਬਣਾਤੇ ਤੂੰ ਸਮਝੇ ਨਹੀਂ ਆਈ ਗੱਲ ਕੀ ਹੈ ਕਿਉਂਕਿ ਸਮਝ ਤਾਂ ਤਾਂ ਨਹੀਂ ਗੁਰਮਤ ਦਾ ਗਿਆਨ ਹੁੰਦਾ ਗੁਰਮਤ ਦਾ ਗਿਆਨ ਤੈਹੀਂ ਨਹੀਂ ਉਹਨਾਂ ਕੋਲ ਗੁਰਮਤ ਦੇ ਜਾੜਵੇਦ ਕੀ ਉਧਰ ਪ੍ਰੋਬਲਮ ਕੀ ਆ ਲੋਕਾਂ ਨੂੰ ਉਹੀ ਗੱਲ ਇੱਥੇ ਤੇਹੀ ਹੋਈ 10 ਚਾਰ ਚਾਰ ਨਿਦਾਨ ਨਿਦਾਨ ਉਹਦਾ ਰਿਜ਼ਲਟ ਹੈ ਉਹਨੂੰ ਸਮਝ ਆ ਜਾਂਦੀ ਫੈਸਲਾ ਕਰ ਲੈਣਾ ਗਲਤ ਰੂਪ અપਾਰ ਸਭ ਲੋਕ ਸੋਕ ਵਿਦਾਨ ਅਕਲਮ ਗਰੂਪ ਵਪਾਰ ਇਹ ਜਿਹੜਾ ਹੈਗਾ ਇਹ ਵੀ ਅਗਲਾ ਗਰੂਪ ਵਪਾਰ ਹੋ ਗਿਆ ਦੇਖੋ ਪਹਿਲਾਂ ਤਾਂ ਹਰ ਹੈ ਪਹਿਲਾਂ ਤਾਂ ਹਰ ਦੀ ਗੱਲ ਹੈ ਇਹ ਹਰ ਜਾਣਾ ਹਰ ਦੂਜਾ ਦੂਜਾ ਹਰ ਜਾਣਾ ਚਾਹੀਏ ਜੈਸਾ ਹਰੀ ਉਹ ਵੀ ਅਗਲਾ ਗਰੂਪ ਵਪਾਰ ਹੋ ਗਿਆ ਜਿਹਦੇ ਕਿਣਕਾਏ ਕਰਦੇ ਛਿਟਿਆ ਉਹ ਹਰ ਦਾ ਰੂਪ ਹਰ ਵਰਗਾ ਹੀ ਹੋ ਗਿਆ ਕਦ ਪਹਿਦਰ ਨੇ ਜਾਣੋ ਮਾਨਸ ਦੇਹਾ ਹਰ ਕਾ ਸੇਵਕ ਸੋਹਰ ਜੀ ਹਾਂ ਪਹਿਦਰ ਨੇ ਜਾਣੋ ਮਾਨਸ ਦੇਹਾ ਕੋਈ ਗੱਲ ਇਹ ਹੋ ਗਿਆ ਅਗਲੇ ਗਰੂ ਬਾਬਾਰ ਹੋ ਗਿਆ ਵੀ ਸਭ ਲੋਕ ਸ਼ੋਕ ਬਿਦਾਰ ਹਾਂ ਇਹ ਲੋਕਾਂ ਦੇ ਜਿਹੜੇ ਹੋਰ ਨੇ ਨਾ ਉਹਨਾਂ ਦੇ ਸ਼ੋਕ ਨੂੰ ਉਹਨਾਂ ਦੇ ਜਿਹੜੇ ਚਿੰਤਾਵਾਂ ਨੂੰ ਦੂਰ ਕਰਦਾ ਗੁਰਬਾਣੀ ਨਾਲ ਉਪਦੇਸ਼ ਨਾਲ ਲੋਕਾਂ ਦੀਆਂ ਚਿੰਤਾਵਾਂ ਜਿਹੜੀਆਂ ਉਹਨਾਂ ਨੂੰ ਪਾਣਾ ਬਨੜ ਪਾਣਾ ਬਨ ਨੂੰ ਮਨ ਦਾ ਉਪਦੇਸ਼ ਕਰੂਗਾ ਪਾਣਾ ਬਨੜ ਵਾਲੇ ਦੇ ਚਿੰਤਾ ਨਹੀਂ ਹੁੰਦੀ ਪਾਣਾ ਬਨੜ ਵਾਲੇ ਨੂੰ ਚਿੰਤਾ ਨਹੀਂ ਰਹਿੰਦੀ ਹੁੰਦੀ ਕੋਈ ਪਾਣਾ ਬਨੜ ਦੀ ਗੱਲ ਕਰਦੀ ਹੈ ਗੁਰਬਾਣੀ ਪਾਣਾ ਬਨੜ ਦੀ ਗੱਲ ਕਰਨ ਤੇ ਗੁਰਮਖ ਆਪੇ ਖਤਮ ਹੋ ਗਈ ਲੋਕ ਸ਼ੋਕ ਬਿਜ਼ਾਰ ਕਲ ਲੋਕਾਂ ਦੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਕੰਮ ਹੁੰਦਾ ਹੋਰ ਕੁਛ ਨਹੀਂ ਇਹ ਜਨੂਵਤ ਮਾਰੇ ਲੇਖੇ ਦਾ ਮਤਲਬ ਇਹੀ ਹੈ ਕਿ ਲੋਕਾਂ ਦੀਆਂ ਲੋਕਸੋਕ ਬਦਾਰ ਲੋਕਸੋਕ ਜਿਹੜਾ ਸਿੱਧਾ ਹਰਦੀ ਕਰ ਸਕਦਾ ਦੇਖੋ ਇੱਥੇ ਕੁਝ ਗੱਲ ਹੋ ਰਹਾ ਉੱਪਰਲੀ ਪੰਕਤੀ ਚ ਗੱਲ ਹੋਰ ਸੀ ਇਹ ਲੋਕਸੋਕ ਬਦਾਰ ਕਰਨ ਵਾਲਾ ਜਨੂਵਲ ਧਾਰੀ ਹੈ ਦੇ ਧਾਰੀ ਹੈ ਹਰਦੀ ਇਹ ਕੰਮ ਕਰਦਾ ਹਰੇ ਤੋਂ ਕਰਾ ਰਿਹਾ ਹੁਣ ਕਬੂ ਉੱਤੇ ਲੋਕਜੋਗ ਬਾਜ਼ਾਰ ਨਹੀਂ ਆਇਆ ਹੋਇਆ। ਅਕਲਾਂ ਗਰੂਪ ਆਪਾਰ ਆਇਆ ਹੋਇਆ ਨੂੰ। ਪਰ ਲੋਕਜੋਗ ਬਾਜ਼ਾਰ ਨਹੀਂ ਆਇਆ ਕਿਉਂਕਿ ਲੋਕਜੋਗ ਬਾਜ਼ਾਰ ਨਹੀਂ ਹੋ ਸਕਦਾ। ਲੋਕਜੋਗ ਬਾਜ਼ਾਰ ਕਰਨ ਵਾਸਤੇ ਆਦੂ ਦਾ ਜਲ ਬਚਾਈਦਾ। ਬੋਲੂਗਾ ਤਾਂ ਹੀ ਹੋਊਗਾ ਨਾ। ਭਾਵੇਂ ਹਰਦਾ ਬੁਲਾਇਆ ਬੋਲਦਾ ਉਹ। ਪਰ ਉਹਦੇ ਥਰੂ ਹੀ ਹੋਊਗਾ। ਹਰ ਜੀਹਾ ਹੋ ਗਿਆ ਨਾ ਹਰ ਕਾ ਸੇਵ ਪਿੱਛੇ ਹਰੇ ਬੋਲਦਾ ਉਹਦੇ। ਪਰ ਬੋਲੂ ਦਾ ਸਰੀਰ ਵਾਲਾ ਹੀ ਉਹ ਇਸ ਕਰਕੇ ਉਹ ਸੇਵਕ ਕਿਹਾ ਹੈ ਰੂ ਸਰੀਰ ਕਰਕੇ ਕਾਲ ਕਰਮ ਬਹੀਨ ਕਲ ਕਾਲ ਦੇਖੋ ਕਾਲਾ ਦਾ ਕਾਲ ਦਾ ਗਾਲ ਹੈ ਕਲ ਕਾਲ ਪਾਪ ਦਾ ਗਾਲ ਦਾ ਅਰਥ ਪਾਪੀ ਹੁੰਦਾ ਕਾਲ ਦਾ ਕਾਲ ਵੀ ਹੁੰਦਾ ਕਲ ਦਾ ਕਲਪਨਾ ਵੀ ਤਿੰਨ ਅਰਥ ਨੇ ਕਲ ਦਾ ਅਰਥ ਪਾਪ ਵੀ ਹੈ ਕਲ ਦਾ ਅਰਥ ਕਾਲ ਵੀ ਹੈ ਕਲ ਦਾ ਅਰਥ ਕਲਪਨਾ ਵੀ ਹੈ ਤਿੰਨਾਂ ਦਾ ਕੋਈ ਅਰਥ ਹੈ ਅਰਥ ਵੀ ਕੋਈ ਹੈ ਕਲਪਨਾ ਵੀ ਕਾਲ ਹੈ ਕਾਲ ਵੀ ਕਾਲ ਹੈ ਸਮਝਿਆ ਨਹੀਂ ਕਲਪਨਾ ਪਾਪ ਵੀ ਹੈ ਹੁਕਮ ਦਾ ਵਿਰੋਧ ਕਰਨਾ ਇਹ ਤਿੰਨਾਂ ਦਾ ਕਾਲ ਕਰਦਾ ਨਾਮ ਤਿੰਨਾਂ ਦਾ ਹੀ ਕਾਲ ਕਰਦਾ ਫਿਰ ਕਲਪਨਾ ਦਾ ਕਾਲ ਹੈ ਕਾਲ ਦਾ ਵੀ ਕਾਲ ਹੈ ਤੇ ਜਿਹੜਾ ਅਸੀਂ ਵਿਰੋਧ ਕਰਦੇ ਆ ਨਾਮ ਦਾ ਵੀ ਕਾਲ ਹੈ ਪਾਪ ਦਾ ਵੀ ਕਾਲ ਹੈ ਕਰਮ ਬਹੀਨ ਇਹ ਕੰਮ ਕਰਦਾ ਹੋਇਆ ਵੀ ਕਰਮ ਬਹੀਨ ਕਲਪਨਾ ਦਾ ਨਾਸ ਕਰਦਾ ਹੋਇਆ ਵੀ ਆਪ ਕਰਮ ਬਹੀਨ ਕਰਮ ਆਪ ਨਹੀਂ ਨਾ ਕਰਦਾ ਕਰਮ ਉਹਦੇ ਪ੍ਰਥਾਇ ਕਰਨ ਵਾਲਾ ਹੋਰ ਹੈ ਆਪ ਨਹੀਂ ਕਰਦਾ ਹਲ ਨਹੀਂ ਕਰ ਰਿਹਾ ਕਰਮ ਗੱਲ ਹਰ ਤੋਂ ਜਲੀ ਹੋਈ ਹੈ ਆਪ ਗਰਮਬੀਨ ਆਪਣਾ ਸੇਵਕ ਤੇ ਕਰਮ ਕਰਵਾ ਰਿਹਾ ਕਰਮ ਕਰਤ ਹੋਏ ਨੇ ਕਮੀ ਸੇਵਕ ਜਿਹੜਾ ਦੇ ਕੰਮੀ ਕੰਮ ਕਰਦਾ ਉਹਨੇ ਪਰਥਾਏ ਕਰਦਾ ਨਾ ਕਾਮਨਾ ਉੱਪਰ ਲੈਦੀ ਹੈ ਉਹ ਕਰਦਾ ਨਹੀਂ ਕੁਝ ਕਾਮਨਾ ਹੁੰਦੀ ਹੈ ਇਹ ਕਰਦਾ ਕਾਮਨਾ ਇਹਦੀ ਹੈ ਦੀ ਹਰ ਸੇਵ ਕਰ ਹਰ ਦੋਏ ਕੰਮ ਕਰ ਰਹੇ ਨੇ ਲੜਕੇ ਇੱਕ ਕੋਈ ਕੰਮ ਦੋ ਕਰ ਰਹੇ ਨੇ ਕੰਮ ਹੋਦਾ ਉਹ ਕਰ ਨਹੀਂ ਰਿਹਾ ਜਿਹੜਾ ਕਰ ਰਿਹਾ ਉਹਦੀ ਇੱਛਾ ਕੋਈ ਨਹੀਂ ਜਿਹਦੀ ਇੱਛਾ ਉਹ ਕਰ ਨਹੀਂ ਰਿਹਾ ਆ ਗੱਲ ਜਿੰਦਾ ਲੋੜ ਹੈ ਕੰਮ ਦੀ ਉਹ ਤਾਂ ਕਰ ਨਹੀਂ ਰਿਹਾ ਜਿਹੜਾ ਕਰ ਰਿਹਾ ਲੋੜ ਉਹਦੀ ਹੈ ਜੀ ਲੋੜ ਪਰਮੇਸ਼ਰ ਦੀ ਇਸ ਕਰਕੇ ਜਨਮ ਤੇ ਮਾਰੇ ਲੇਖੇ ਕੇ ਉੜਾਗੇ ਨਾ ਸਮਝ ਕਭ ਤਾਂ ਕਰ ਰਿਹਾ ਫਰੂਦ ਖਾਤਰ ਕਰ ਰਿਹਾ ਨਾ ਇਹ ਤਾਂ ਲਾਲਾ ਹੋਣਾ ਕਰਮ ਕਰਤੋ ਹੋਇਆ। ਗੱਡੀ ਬਗਲ ਗਦੀ ਹੈ ਨਾ। ਹੈਪੀ ਉਹ ਤਾਂ ਧਾਲ ਰੋਟੀ ਦੇ ਕੰਮ ਕਰ ਰਿਹਾ ਆਪਣਾ। ਕਹਿੰਦਾ ਕੀ ਲਏਗਾ ਤਨਖਾਹ ਕੇ ਕਹਿੰਦੇ ਹੈ ਕਹਿੰਦਾ ਕਿੱਥੇ ਬੋਲਦੀ ਹੈ ਦਸਮਦੀ ਬਾਣੀ। ਲੱਗਦਾ ਨੇ ਅਖਰ ਸੋਕੇ ਸੋਕੇ ਤੁਹਾਨੂੰ। ਸੋਕੇ ਸੋਕੇ ਲੱਗਦੀ ਉਤਤੋਈ। ਐਦਾਂ ਹੈ ਕਰਮ ਕਰਤੋ ਕੰਮ। ਹਾਂ। ਇੱਕ ਇੱਕ ਭਗਤੀ ਅਨੌਰਵ ਦੀ ਚਲੀ ਜਾਊਗੀ ਸਭ ਕਰਮੋਂ ਧਰਮ ਪਰਬੀਨ ਸਭ ਕਰਮ ਸਾਰੇ ਕਰਮ ਧਰਮਾਂ ਚ ਪਰਬੀਰ ਉਦਾਂ ਉਹ ਕਿਸ ਜਾਣਦਾ ਸਾਰੇ ਜਿਹੜੇ ਕਰਮ ਨੇ ਦੁਨੀਆਂ ਦੇ ਉਹ ਪਰਬੀਰ ਐ ਸਾਰਿਆਂ 'ਚ ਸੁਧਾਰ ਕਰ ਲੈਂਦਾ ਜਿੱਥੇ ਵਿਗਾੜ ਹੋਇਆ ਹੈ ਜਦਾ ਹਰ ਗੱਲ ਉਸਨੂੰ ਚਲਾ ਲੈਂਦਾ ਜਿਹੜੀ ਗੱਡੀ ਖਰਾਬ ਹੋ ਜਾ ਉਸਨੂੰ ਠੀਕ ਕਰਕੇ ਚਲਾ ਲੈਂਦਾ ਜਿਹੜਾ ਪੁਰਜਾ ਬਦਲ ਨਾਲ ਬਦਲ ਲੈਂਦਾ ਜੇ ਖਰਾਬੀ ਕਰਤੀ ਹੋ ਗਈ ਉਹ ਠੀਕ ਕਰ ਲੈਣਾ ਜਿੱਥੇ ਨੁਕਸਾਨ ਕਰ ਲਿਆ ਗਲਤੀ ਨਾਲ ਉਹਨਾਂ ਤੇ ਹੋ ਗਿਆ ਕਿਸੇ ਲਖਨ ਗੁਰਬਾਣੀ ਸਾਰਿਆਂ ਚ ਸੋਧ ਕਰੇ ਰਹੀ ਹੈ ਨਾ ਸਾਰਿਆਂ ਬੱਤਾ ਜਲਾ ਕੇ ਫਿਰ ਰਾਤ ਬਣ ਹੁੰਦਾ ਸਭ ਕਰਮਤ ਪਰਵੀਰ ਦਾ ਮਤਲਬ ਇਹ ਹੈ ਸਾਰੇ ਆਦੇ ਰੁਖ ਦਾ ਪਤਾ ਹੈ ਰੁਖ ਕੱਢਣ ਦਾ ਵੀ ਪਤਾ ਹੈ ਜੇ ਬਿਮਾਰੀਆਂ ਦਾ ਪਤਾ ਬਿਮਾਰੀਆਂ ਦੇ ਇਲਾਜ ਦਾ ਵੀ ਪਤਾ ਹੈ ਇਹਨੂੰ ਕਹਿੰਦੇ ਨੇ ਕਰਮ ਧਰਮ ਪ੍ਰਵੀਰ ਸਾਰੇ ਕਰਮ ਧਰਮ ਨੇ ਜਿਹੜੇ ਕਰਮ ਧਰਮ ਲੱਗਿਆ ਨਾਲ ਇਹਨੂੰ ਦੇ ਜਿਹੜੇ ਸੰਸਾਰ ਦੇ ਧਰਮ ਨੇ ਉਹਦੇ ਨਾਲ ਕਰਮ ਧਰਮ ਲੱਗਦੇ ਕਰਮ ਪਹਿਲਾਂ ਧਰਮ ਬਾਅਦ ਸਾਡੇ ਧਰਮ ਕਰਮ ਲੱਗਦਾ ਸਾਡੇ ਵਾਲੇ ਜਿਹੜਾ ਹੈ ਨਾ ਇਹ ਧਰਮ ਪਹਿਲਾ ਕਰਮ ਬਾਤ ਹੈ ਕਰਮ ਤਾਂ ਕਰਮ ਕਰਦੋਏ ਨਾ ਕਾਬੀ ਤਾਂ ਹੀ ਜਦੋਂ ਕਰਮ ਜਾਂ ਕੰਮ ਲੱਗਿਆ ਫਿਰ ਇੱਛਾ ਕੋਈ ਨਹੀਂ ਉਹ ਕਰਨ ਦੇ ਵਿੱਚ ਇੱਛਾ ਹੈ ਉਹ ਜਿਹੜੇ ਕਰਦੇ ਨੇ ਉਹ ਜੀ ਇੱਛਾ ਹੈ ਜਿਹੜੇ ਧਰਮ ਕਰਮ ਨੂੰ ਜੀ ਇੱਛਾ ਹੈ ਕਰਮ ਤੋਂ ਹੀ ਧਰਮ ਬਣਦੇ ਨੇ ਉਹ ਤਰੀਕਾ ਬਦਲਦਾ ਕਰਮ ਚੋਂ ਧਰਮ ਨਹੀਂ ਬਣਿਆ ਧਰਮ ਪਹਿਲਾਂ ਹਰੰ ਬਾਤ ਜਿਹੜਾ ਕਰਮ ਹੈ ਕਰਮ ਤਾਂ ਫਿਰ ਹੋਰ ਗੱਲ ਲੱਗ ਗਿਆ ਧਰ ਸਮਝਦਾ ਹੈ ਨਹੀਂ ਕਰਮ ਕਿਹੜਾ ਕਰੂਗਾ ਬੇਸਮਝੀ ਦਾ ਕਰਮ ਜਿਹੜਾ ਪਹਿਲਾਂ ਕਰਮ ਕਰਨ ਲੱਗੇ ਬੇਸਮਝੀ ਦਾ ਕਰਮ ਬਾਝ ਕਰਨਾ ਪਹਿਲਾਂ ਸਮਝਣਾ ਕਰਨਾ ਕੀ ਹੈ ਕਿਉਂ ਕਰਨਾ ਕੀ ਕਰਨਾ ਕਿਉਂ ਕਰਨਾ ਜਾਂ ਇਹਦਾ ਪਤਾ ਹੀ ਨਹੀਂ ਲੜ ਕੇ ਮੈਨਾਂ ਚੜਦੀ ਅਨਖੰਡ ਅਤਲ ਪ੍ਰਤਾਪ ਅਨਖੰਡ ਅਤਲ ਪ੍ਰਤਾਪ ਪ੍ਰਤਾਪ ਕਹੇਜੇ ਅਨਖੰਡ ਖੰਡਾ ਨਹੀਂ ਕੀਤਾ ਜਾ ਸਕਦਾ ਕੋਈ ਐਡਾ ਇਹ ਜਆ ਬੱਦਾ ਨਹੀਂ ਆਇਆ ਜਿਹੜਾ ਉਹਦੇ ਸਾਹਮਣੇ ਆ ਜਾਵੇ ਜਿਹਦੇ ਸਾਹਮਣੇ ਦੀ ਜੋਤ ਫਿੱਕੀ ਪੈ ਜਾਵੇ ਉਹ ਤਾਂ ਵੱਡੀ ਕੋਈ ਚੀਜ਼ ਨਹੀਂ ਸੀ ਕੋਈ ਵੱਡਾ ਸ਼ਕਤੀਸ਼ਾਲੀ ਨਹੀਂ ਆਇਆ ਜਿਹਦੇ ਸਾਹਮਣੇ ਦੀ ਜੋਤ ਫਿੱਕੀ ਪੈ ਜਾਵੇ ਅਨਖੰਡ ਤੇਜ ਪ੍ਰਤਾ ਅਨਖੰਡ ਅਤੁੱਲ ਪ੍ਰਤਾਪ ਅਤੁੱਲ ਪ੍ਰਤਾਪ ਹੈ ਪ੍ਰਤਾਪ ਪ੍ਰਤਾਪ ਐਨ ਪ੍ਰਤਾਪ ਅਡੋਲਦਾ ਹੀ ਹੁੰਦੀ ਔਰ ਕੁਝ ਜਿਹਾ ਤੋਵੇਂ ਸੇ ਅਡੋਲ ਤਾਂ ਟੀ ਵੱਡੀ ਐ ਅਡੋਲਦਾ ਹੀ ਨਹੀਂ ਕੋਈ ਅਜਵੇ ਸਾਹਮਣੇ ਸਾਹਮਣੇ ਆਉਣ ਤੇ ਡੋਲ ਚੱਲਦੇ ਇਹ ਕਮਿਸਰ ਬੈਠਾ ਹੁੰਦਾ ਡੀਸੀ ਹੋਵੇ ਚਾਹੇ ਬੈਠਾ ਤੁਸੀਂ ਉਹਦੀ ਹਾਲੂ ਉੱਥੇ ਬੈਠੇ ਉੱਥੇ ਆ ਜੇ ਨਾ ਪ੍ਰਾਈਮ ਮਿਨਿਸਟਰ ਦੇਖੋਗੇ ਮੈਂ ਭੱਜਿਆ ਫਿਰਦਾ ਫੇਰ ਲੋਕਾਂ ਨੇ ਬਨੇ ਬੈਠਾ ਹੁੰਦਾਂ ਨਾ ਚਿਹਰਾ ਜਿਹਾ ਫੱਕ ਹੋ ਜਾਂਦਾ ਸੋਨੇ ਦਾ ਬੇਬੀ ਬਾਹਰ ਪ੍ਰਾਈਮ ਮਿੰਿਸਟਰ ਆ ਗਿਆ ਪੰਜਾ ਫਰਦ ਕਿਤੇ ਕਿਤੇ ਗਲਤੀ ਤਾਂ ਨਾ ਪਤਾ ਆ ਗਿਆ ਉਹ ਉਹ ਸਭ ਉਹ ਬੋਲ ਜਾਂਦਾ ਆਹ ਪ੍ਰਤਾਪ ਖੰਡਿਤ ਹੋ ਗਿਆ ਸਾਰਾ ਹੋ ਗਿਆ ਨਾ ਕਰਨ ਤਾਂ ਸਹੀ ਹੈ ਪ੍ਰਤਾਪ ਖੰਡਿਤ ਹੋ ਗਿਆ ਸਾਰਾ ਬੋਲੀयां ਬਦਲ ਜਾਂਦੀ ਹੈ ਪਬਲਿਕ ਨੂੰ ਸਾਮਣੇ ਜੋ ਸਾਹਮਣੇ ਬੈਠਾ ਹੋਵੇ ਵੱਡਾ ਆਪਰ ਛੋਟੇ ਹਸਲਦੀ ਬੋਲੀ ਬਦਲ ਜਾਂਦੀ ਹੈ ਜੇ ਕੋ ਵੱਡਾ ਨਾ ਹੋਵੇ ਫਿਰ ਉਹਦੀ ਬੋਲੀ ਹੋਰ ਹੁੰਦੀ ਹੈ ਸਪਾਈ ਦੀ ਵੀ ਬੋਲੀ ਹੋਰ ਹੁੰਦੀ ਹੈ ਆਪਣੇ ਵੱਡੇ ਦੇ ਸਾਹਮਣੇ ਬੋਲੀ ਬਦਲ ਜਾਂਦੀ ਹੈ ਅਖੰਡ ਤੁਲ ਪਰਤਾ ਆ ਕਾਂਡਾ ਤੋਲ ਪਰਤਾ ਕੋਈ ਵੱਡਾ ਹੋਵੇ ਤਾਂ ਬੋਲੀ ਬਦਲੇ ਉਹਦੀ ਬੋਲੀ ਬਦਲਦੀ ਹੋਈ ਨਹੀਂ ਉਹੋ ਜਿਹੀ ਰਹਿੰਦੀ ਹੈ ਉਹ ਵੱਡਾ ਨਹੀਂ ਨਾ ਕੋਈ ਹੈ ਸਭ ਥਾਪਿਓ ਜਿਹੇ ਥਾਪ ਸਭ ਥਾਪਿਓ ਜਿਹੇ ਥਾਪ ਕਿ ਸਾਰੇ ਜਿੰਨੇ ਅਡੋਲਤਾ ਜਿਹਨੂੰ ਜਿਹਨੂੰ ਬਖਸ਼ੀ ਹੈ ਇਹਨੇ ਅਡੋਲਤਾ ਬਖਸ਼ੀ ਹੈ ਸਾਰੇ ਨੂੰ ਇਹਦਾ ਅਡੋਲਤਾ ਮਿਲਿਓਏ ਤਾਂ ਇਹਨੂੰ ਗਾਉਂ ਡਲਾ ਦੂ ਡੋਲੂ ਤਾਂ ਹੋ ਸੱਜ ਖੰਡ ਦੀ ਜਿਹੜੀ ਸੂਚੀ ਅਡੋਲਤਾ ਉਹਦੇ ਨਾਲ ਮੁਕਾਬਲਾ ਅਡੋਲਤਾ ਇੱਥੇ ਮਿਲਦੀ ਹੈ ਲੋਕਾਂ ਨੂੰ ਤੇ ਗੁਰਮਖਰੂ ਜਣੀ ਢੋਲ ਤਾਂ ਮਿਲਿਆ ਸੱਚਖੰਡ ਦੀ ਢੋਲ ਤਾਂ ਸੰਸਾਰ ਦੇ ਉਹਨੂੰ ਡਲਾ ਨਹੀਂ ਸਕਦਾ ਸੰਸਾਰ ਉਹਨੂੰ ਕਦੇ ਡਲਾ ਦੂ ਢੋਲ ਤਾਂ ਨਹੀਂ ਡੋਲਦੀ ਢੋਲੀ ਵੀ ਆ ਦੇਖ ਲੇ ਤੇ ਬਹੁਤ ਕਰ ਕੇ ਤਨ ਨੂੰ ਕਰਾ ਕੇ ਦੇਖ ਲਿਆ ਤੇ ਕਰਦਾ ਰਹਿੰਦਾ ਸਾਰ ਹੁੰਦੇ ਰਹਿੰਦੇ ਨੇ ਫਿਰ ਪੈਦਾ ਹੋ ਜਾਂਦੇ ਨੇ ਤਜਰਬਾ ਕਰਨ ਨਾਲ ਫਿਰ ਪੈਦਾ ਹੋ ਜਾਂਦੇ ਨੇ ਫਿਰ ਦੇਖ ਦੇਣਾ ਵੀ ਗੱਲ ਸੱਚੀ ਹੈ ਪਿੱਛੇ ਇਹ ਜਾਂ ਫਿਰ ਹੁੰਦਾ ਹੀ ਰਹਿੰਦਾ ਤਜਰਬੇ ਹੁੰਦੇ ਰਹਿੰਦੇ ਹੁੰਦੇ ਪਰਖਣ ਦੇ ਅਨਖੇਦ ਭੇਦ ਅਸ਼ੇਦ ਅਨਖੇਦ ਹੈ ਖੇਦ ਹੁੰਦਾ ਚਿੰਤਾ ਖੇਦ ਮੈਨੂੰ ਅਫਸੋਸ ਹੈ ਕਿਸੇ ਗੱਲ ਦਾ ਖੇਦ ਹੁੰਦਾ ਹੈ ਵਿਅਕਤੀ ਕਰੀ ਤਾਂ ਗਲਤੀ ਹੋਗੀ ਕੋਈ ਗਲਤੀ ਹੋ ਜयो ਤਾਂ ਅਫਸੋਸ ਹੁੰਦਾ ਨਾ ਯੋ ਤਾਂ ਕੋਈ ਗਲਤੀ ਹੁੰਦੀ ਨੇ ਅਫਸੋਸ ਖਦਾ ਹੁਣ। ਇਹ ਤਾਂ ਇਸ ਗੱਲ ਦਾ ਖੇਤ ਹੁੰਦਾ ਗਲਤੀ ਦਾ। ਇਹ ਖੇਤ ਹੁੰਦਾ ਕਿਸੇ ਕਵੀ ਦਾ। ਅਛੇ ਦਾ ਭੇਦ ਹੈ। ਕਿਸੇ ਗੱਲ ਚੋ ਜੀ ਨੁਕਸ ਕੋਈ ਕੱਢੇ ਨਹੀਂ ਸਕਦਾ। ਨੁਕਸ ਹੈ ਉਹ ਨਹੀਂ। ਕੋਈ ਉਹਦੇ ਚ ਨੁਕਸ ਹੈ ਉਹ ਨਹੀਂ। ਛੇਰ ਹੈ ਉਹ ਨਹੀਂ ਛੇਦ ਨੁਕਸ ਹੁੰਦਾ। ਜਿਹੜਾ ਛੇਦ ਹੈ ਲਫਜ਼ ਮੁਖਸ ਹੈ ਉਹਦਾ ਬੇੜਾ ਜਿਹੜਾ ਸੀ ਸਾਰੇ ਛੇਦ ਹੋਏ ਹੋਏ ਸੀ ਜਦ ਦੇਖਿਆ ਬੇੜਾ ਜਰਜਰਾ ਉਤਰ ਪੜਿਓ ਫਰਕ ਇਹ ਛੇਦ ਹੋਏ ਨਹੀਂ ਸਕਦਾ ਨਾ ਛੇਦ ਹੈ ਨਾ ਛੇਦ ਹੋ ਸਕਦਾ ਜਿੰਨੇ ਕੋਈ ਵਰਜੀ ਤਰਖਾਂ ਦੇ ਤੀਰ ਮਾਰ ਲਵੇ ਤੀਰੇ ਤੇ ਅਸਰੇ ਨਹੀਂ ਕਰਦੇ ਤਰਖ ਝੂਠੇ ਹੋਣਗੇ ਅਛੇਦ ਹੈ ਅਪੇਹਦ ਹੈ ਅਨਖੇਦ ਪੇਦ ਅਛੇਦ ਅਨਖੇ ਤਾਂ ਹੋ ਪੇਦਾ ਛੇਦ ਕਰਕੇ ਪੇਦਿਆ ਨਹੀਂ ਜਾ ਸਕਦਾ ਪੇਦਿਆ ਸੜਨਾ ਲੈਣਾ ਕਿਸੇ चीज ਨੂੰ ਜਿਵੇਂ ਆਪਕ ਕਿਲੇ ਦੀ ਦਵਾਰ ਪਾੜ ਲਈ ਉਹ ਪੇਦ ਖੈਦਰ ਪੇਦ ਲੈ ਉਹ ਸੱਤ ਦਾ ਪੇਦ ਕੀ ਲੈਣਾ ਤੂੰ ਜੇ ਸੱਜ ਦਾ ਕਿਸੇ ਨੂੰ ਪੇਦ ਪਾਉਣਾ ਹੋਵੇ ਕੀ ਪਾਉ ਸਮੁੰਦਰ ਦਾ ਪੇਦ ਪਾਉਣਾ ਉਹ ਨਾ ਸਮੁੰਦਰ ਜਿੱਦੋਂ ਬੁਕੇ ਰਹਿ ਜਾਂਦਾ ਕਹਿਣੇ ਵਾਲੇ ਤੇਰੇ ਰਹਿ ਸਮਾਏ ਨਾ ਤਾਂ ਇਹਦਾ ਕੁਝ ਲਕੋਇਆ ਹੋਇਆ ਹੈ ਪੇ ਤਾਂ ਚੀਜ਼ ਦਾ ਜੇ ਝੂਠ ਹੋਵੇ ਕੋਈ ਲੁਕੋਈ ਹੋਈ ਚੀਜ਼ ਹੋਵੇ ਤਾਂ ਹੋਵੇ ਸੱਚ ਨੂੰ ਲੋਕਾਂ ਲਕੋੜ ਦੀ ਲੋੜ ਏ ਨਾ ਤਾਂ ਉਹਦਾ ਕੋਈ ਭੇਦ ਦਾ ਖਤਰਾ ਮੇਰੇ ਕੋਲ ਭੇਦ ਨਾ ਪਾ ਲਵੇ ਨਾ ਭੇਦ ਵੱਲੋਂ ਖਤਰਾ ਹੈ ਨਾ ਛੇ ਦੋ ਖਤਰਾ ਵੀ ਮੇਰਾ ਕੋਈ ਨੁਕਸ ਪੜ ਲੂ ਇਹ ਸੰਤਾਂ ਨੂੰ ਖਤਰੇ ਹੁੰਦੇ ਨੇ ਦੋ ਝੂਠੀਆਂ ਮਤਾਂ ਨੇ ਰਹੀ ਦੋ ਖਤਰੇ ਨੇ ਇਹਨਾ ਕਰਕੇ ਲੋਕਾਂ ਨਾਲ ਗੱਲ ਨਹੀਂ ਫालतू ਕਰਦੇ ਹੋ ਇਹਨਾਂ ਲੋਕਾਂ ਕਰਕੇ ਆਪਣੇ ਮਿਲਦੇ ਨਹੀਂ ਹਰੇਖ ਨੂੰ ਜਣੇ ਖਣੇ ਨੂੰ ਪੂਰੇ ਰੱਖਿਆ ਨਾ ਬੰਦੇ ਉਹਨਾਂ ਦੇ ਅਛੇਦਰ ਭੇਦ ਦੀ ਹਲੂ ਕੋਈ ਭੇਦ ਨਾ ਖੁੱਲ ਜਵੇ ਇਸ ਗੱਲ ਦਾ ਬੜਾ ਉਹਨੂੰ ਚਿੰਤਾ ਰਹਿੰਦੀ ਹਰ ਵਕਤ ਕੋਈ ਛੇਦ ਨਾ ਹੋ ਜਵੇ ਛੇਦ ਵੀ ਭੇਤੀਓ ਕਰ ਦਿੰਦੇ ਨੇ ਲੜ ਭੇਤੀਓ ਹੁੰਦੇ ਨੇ ਉਹ ਛੇਦ ਕਰ ਦਿੰਦੇ ਨੇ ਵਿੱਚ ਉਹਨਾਂ ਦੇ ਸਾਹਮਣੇ ਜੇ ਕੋਈ ਗਲਤ ਹੋਵੇ ਲਭ ਲੈਦੇ ਨੇ ਉਹ ਵਿੱਚ ਜਿਹੇ ਕਰ ਦੁੱਤੇ ਹਾਂਜੀ ਮੁਖਚਾਰ ਗਾਵਤ ਵੇਦ ਇਸੇ ਕਰਕੇ ਤਾਂ ਜਿਹੜਾ ਬ੍ਰਹਮਣ ਚਾਰ ਮੁਖ ਬ੍ਰਹਮਾ ਨੂੰ ਕਹਿੰਦੇ ਨੇ ਬ੍ਰਹਮਾ ਦੇ ਚਾਰੇ ਮੁਹ ਜਗਾ ਨੇ ਚਾਰ ਪ੍ਰਕਾਰ ਦਾ ਧਿਆਨ ਨਿਕਲਦਾ ਇਹ ਕਹਿੰਦੇ ਨੇ ਚਲੋ ਜੋਮਨ ਜੀ ਕਹੀ ਜਾਂ ਲੋ ਮੁਖਚਾਰ ਬ੍ਰਹਮਾ ਨੂੰ ਕਹਿੰਦੇ ਨੇ ਅਸਲ 'ਚ ਉਹਨਾਂ ਦਾ ਤਾਂ ਬ੍ਰਹਮਾਚਾਰ ਮੁਖਾੜਾ ਹੋ ਸਾਡੇ ਤਾਂ ਕਬੂ ਵਾਲਾ ਜਿਨਾ ਉਹ ਤਾਂ ਚਾਰ ਬੋ ਉਹਨਾਂ ਦੇ ਐਡਵਾਰਟ ਗੱਲ ਨਿਕਲੂ ਚਾਰ ਪ੍ਰਕਾਰ ਦੀ ਉਹਦਾ ਦੋ ਮਾਰ ਨਹੀਂ ਹੁੰਦੇ ਕਹਿੰਦੇ ਦੋ ਬੂਹੇ ਐ ਬੂਹੇ ਕੁਝ ਹੋਰ ਕਹਿੰਦਾ ਉਹ ਕਹਿੰਦੇ ਦੋ ਉਹਨਾਂ ਦਾ ਤਾਂ ਚਾਰ ਬੂਹੇ ਐ ਜੇ ਬ੍ਰਹਮਾ ਸਾਡੇ ਨਹੀਂ ਪੁੱਤਾ ਸਾਡਾ ਤਾਂ ਸਾਡਾ ਚਾਰ ਬੋਖੀ ਕੀ ਮਤਲਬ ਸਾਡਾ ਸਿਰਫ ਬੂਹੇ ਬੂਹੇ ਦਾ ਕੁਝ ਹੋਰ ਹੈ ਨਹੀਂ ਗੁਰਮੁਖੀ ਆ ਗੁਰਮੁਖੀ ਆ ਉਹਦਾ ਸਾਰਾ ਬੂਹਾ ਕਬਗਰਦਾ ਹੋਰ ਉਹਦਾ ਕੁਝ ਕੰਮੇ ਨਹੀਂ ਕਰਦਾ ਹੱਥ ਉਹਦੇ ਨਹੀਂ ਪੈਰ ਉਹਦੇ ਨਹੀਂ ਸਿਰ ਉਹਦੇ ਨਹੀਂ ਲੱਤਾਂ ਉਹਦੇ ਨਹੀਂ ਕੁਝ ਵੀ ਨਹੀਂ ਉਹਦਾ ਕੱਲਾ ਬੂਹੂ ਕਬਗਰਦਾ ਉਹ ਬੂਹ ਤਾਂ ਕੀ ਕੰਮ ਕਰਦਾ ਬਲਾਇਆ ਬੋਲਦਾ ਕੋਈ ਨਹੀਂ ਕੁਝ ਕਰਦਾ ਉਹ ਸਰਬੂ ਅਚਰਣ ਜਿਹੜਾ ਹੈ ਅਚਰਣ ਦਾ ਕਾਬੂ ਅਚਰਣ ਕਾਬੂ ਦਾ ਕਾਬੂ ਸਰਬੂ ਤੋਂ ਲੈਂਦਾ ਹੋਰ ਕਿਸੇ ਜੀਤ ਤੋਂ ਕਾਬੂ ਨਹੀਂ ਲੈਂਦਾ ਉਹ ਪਰਮੇਸ਼ਰ ਦਾ ਕਾਬੂ ਦਾ ਮੂਹ ਹੈ ਹੋਰ ਕੁਝ ਵੀ ਕਾਬੂ ਦਾ ਨਹੀਂ ਪਰਮੇਸ਼ਰ ਦੇ ਉਹਦੀ ਅੱਖਾਂ ਉਹਦੀਆਂ ਕਾਬੂ ਦੀਆਂ ਨਹੀਂ ਸਰ ਪਰਮੇਸ਼ਰ ਦੇ ਨਾ ਉਹਨੇ ਅੱਖਾਂ ਤੋਂ ਕੁਝ ਲੈਣਾ ਲੈ ਲੈ ਰੱਗੂ ਲੈਣਾ ਸੀ ਅੱਖਾਂ ਤੋਂ ਉਹਨੇ ਸਰੀਰ ਤੋਂ ਕੁਝ ਵੀ ਨਹੀਂ ਲੈਣਾ ਸਰਬੂ ਤੇ ਸਵਾ ਤੂੰ ਬੋਲਣਾ ਵਾਣੇ ਲੋਕਾਂ ਨੂੰ ਬੋਲਣਾ ਵਾਸਤੇ ਉਹ ਚਾਹੀਦਾ ਕਰਨਾ ਕੁਝ ਨਹੀਂ ਕਰਨ ਵਾਸਤੇ ਨਹੀਂ ਚਾਹੀਦਾ ਕੁਝ ਨਹੀਂ ਹੋਣੇ ਹੋਰ ਉਹਦਾ ਕੰਮ ਉਹ ਉਹ ਇੱਕ ਪਰਮੈਸ਼ਨ ਨੂੰ ਚਾਹੀਦਾ ਬੋਲਣ ਵਾਸਤੇ ਇਸ ਕਰਕੇ ਉਹਨਾਂ ਨੂੰ ਗੁਰੂ ਹੈ ਗੁਰੂ ਭੁਖ ਭੁਖ ਕੱਲਾ ਦੀ ਗੱਲ ਹੈ ਇਸ ਕਰਕੇ ਭੁਖ ਝਾਰ ਹੈ ਅਚਾਰਣ ਕੱਲਾ ਭੁੱਖ ਦਾ ਹੀ ਉਹਦਾ ਭੁੱਖੇ ਕੰਮ ਦਾ ਕੰਮ ਕਰਦਾ ਉਹਦਾ ਹੋਰ ਕੁਝ ਕੰਮ ਨਹੀਂ ਕਰਦਾ ਗਾਵਤ ਵੇਦ ਉਹ ਵੇਦ ਗਾਉਂਦਾ ਗੁਰਮੁਖ ਵੇਦ ਆਹ ਗੁਰਮੁਖ ਦਾ ਅਚਾਰਣ ਕੀਤਾ ਨਾ ਜੋ ਗੁਰਬਾਣੀ ਹੈ ਕੀ ਹੈ ਭੁੱਖ ਤਾਂ ਬਕੀ ਹੋਈ ਹੈ ਨਾ ਬਾ ਬਕ ਤਾਂ ਬੋਲੀ ਹੋਈ ਹੈ ਨਾ ਹੈ ਬੱਕਰ ਵੈਣਾ ਬਕਰ ਵੈਣਾ ਵਾ ਬਕਰ ਵੈਣਾ ਹੀ ਕਰਦਾ ਬੋਲਦਾ ਹੀ ਹੈ ਹੋਰ ਕੁਝ ਵੀ ਕਰਦਾ ਜੋ ਬੁਲਾਉਂਦਾ ਤਾਂ ਬੋਲਦਾ ਜੋ ਬੁਲਾਵੋ ਤੋ ਨਾਨਕ ਦਾਸ ਬੋਲਾ ਬਸ ਬੋਲ ਬਸ ਆਹੀ ਕੰਮ ਹੈ ਹੋਰ ਕੋਈ ਕੰਮ ਨਹੀਂ ਮਾ ਬੋਲਣਾ ਵੀ ਤੇ ਬਸ ਨਹੀਂ ਜਿਵੇਂ ਬੁਲਾਉਂਦਾ ਹੋਵੇ ਬੋਲਦਾ ਮੁਕਤਿਆਰ ਦਾ ਮਤਲਬ ਅਸੀਂ ਇਹ ਲਵੋਗੇ ਸਿਰਫ ਸਾਡੇ ਕੋਲ ਕਰਨ ਕਰਾਉਣ ਵਾਲਾ ਜੋ ਹੈ ਨਾ ਅਚਾਰਲ ਭੁਖ ਭੁਖ ਦਾ ਹੀ ਕੰਮੇ ਬਾਕੀ ਕੰਮੇ ਕਿ ਸਾਰੇ ਸਰੀਰ ਨੂੰ ਕਬਰ ਹੈਗਾ ਸਾਰੇ ਸਰੀਰ ਤੇ ਉਹਨਾਂ ਕੁਝ ਨਹੀਂ ਲੈਣਾ ਉਹਦੀ ਲੋੜ ਜ਼ਰੂਰ ਹੈ ਬੋਲਣ ਬਾਅਦ ਜਹਨੀ ਤੋ ਨਿਕਮ ਕਹੰਤ ਜਿਹੜੇ ਨਿਗਵਣੇ ਦੇਖੋ ਮੈਂ ਤਾਂ ਵੈਦਾਂ ਨੂੰ ਕਹਿੰਦੇ ਨੇ ਗਰੰਥਾਂ ਨੂੰ ਗ੍ਰੰਥ ਲਿਉ ਦੇ ਜਿਹਦੇ ਅੰਦਰ ਕੰਮ ਖਤਮ ਹੋ ਗਿਆ ਨਾ ਨੇਗਮ ਰੁਗਾ ਜਦੜ ਜਿੱਦਾਂ ਦੇ ਵਾਸੀ ਸਾਰੇ ਬੇਗੰਪੁਰ ਦੇ ਜਿਹਨੇ ਬੇਗੰਪੁਰੇ ਦੇ ਵਾਸੀ ਨੇ ਕਭ ਨਿਕਮ ਕਭ ਤੋ ਰਹਤ ਨਹੀਂ ਕਭ ਨਹੀਂ ਹੈ ਕਭ ਜਿਸ ਨੂੰ ਜਹ ਨੇਤ ਨਗਮ ਕਹੰਤ ਉਹਨੂੰ ਜਿਹੜੇ ਨਗਮ ਨੇ ਗੁਰਮੁਖ ਘਰ ਦੇ ਉਹ ਘੈਰ ਦੇ ਨੇਤਬੇਅਤ ਪਿਆਤ ਦੋਏ ਰਿਕ ਹੈ ਦੇ ਸਾਰਿਆਂ ਦੀ ਠਿਕਾ ਹੈਗਾ ਇਹ ਗੁਰਮੁਖ ਘਰ ਕੈਦਰ ਨੇ ਨੇਤ ਦੇ ਗੁਰਮੁਖ ਹੰਦ ਜਿਹੜੇ ਲੋਕ ਤਾਂ ਕੁਝ ਕਹਿ ਦਿੰਦੇ ਨੇ ਕੋ ਬੁਕਰ ਜਾਂ ਜਿਹ ਕਹਿੰਦੇ ਵੀ ਨਾ ਅੰਦਰੋਂ ਨਹੀਂ ਕਹਿੰਦੇ ਹਣ ਉਹ ਸੁਣੀ ਸੁਣਾਈ ਕਹਿ ਵੀ ਦਿੰਦੇ ਨੇ ਬੁਕਰ ਵੀ ਜਾਂਦੇ ਨੇ ਬੰਦੇ ਕੁਝ ਹੋਰ ਨੇ ਕਹਿੰਦੇ ਕੁਝ ਹੋਰ ਦੇ ਦੂਜੇ ਲੋਕ ਕਹਿਣਾ ਹੁੰਦਾ ਇਹ ਅੰਦਰੋਂ ਕਹੇ ਮੁਖਚਾਰ ਬਖਤ ਬੇਅੰਤ ਮੁਖਚਾਰ ਬਖਤ ਬੇਅੰਤ ਜਿਹੜੇ ਇਹ ਗੁਰਮੁਖ ਨੇ ਉਹ ਵੀ ਬੇਅੰਤ ਕਹਿੰਦੇ ਨੇ ਮੁਖਚਾਰ ਹੋ ਆ ਗਿਆ ਮੁਖਚਾਰ ਗੁਰਮੁਖ ਹੈ ਓਏ ਉਹਨੂੰ ਬ੍ਰਹਮਾ ਕਹਿੰਦੇ ਨੇ ਅਸੀਂ ਉਹਨੂੰ ਗੁਰਮੁਖ ਕਹਿੰਦੇ ਇਹ ਬ੍ਰਹਮਾ ਕਹਿੰਦਾ ਨਹੀਂ ਕੋਈ ਗੱਲ ਹੈ ਇਹ ਬ੍ਰਹਮਾ ਹੀ ਹੁੰਦਾ ਪ੍ਰਭੂਖ ਬਈ ਜਿਹੜਾ ਗੁਰਬਾਣੀ ਦਾ ਉਚਾਰਨ ਕਰੇ ਵੇਦਾਂ ਦਾ ਉਚਾਰਨ ਕਰੇ ਉਹਨੂੰ ਬ੍ਰਹਮਾ ਕਹਿੰਦੇ ਸੀ ਅਸੀਂ ਉਹਨੂੰ ਗੁਰਮੁਖ ਕਹਿੰਦੇ ਗਲਤ ਹੈ ਕੋਈ ਹੈ ਅਣ ਭੇਜ ਅਤੁੱਲ ਪ੍ਰਤਾਪ ਉਹ ਵੀ ਅਣ ਭੇਜਦਾ ਜਿਹੜਾ ਨਿਗਮ ਉਹ ਵੀ ਭਾਇ ਜ ਨਹੀਂ ਭੇਜਦਾ ਹੁਣ ਭਾਇ ਜ ਨਹੀਂ ਭੇਜਦਾ ਕਿਸੇ ਬੋਝ ਜ ਨਹੀਂ ਭੇਜਦਾ ਆਪਣਾ ਭਰਾ ਵੀ ਕੋਈ ਨਹੀਂ ਹੁੰਦਾ ਇਵਰੀ ਆਗਾ ਵੀ ਭਰੇ ਮੁੰਡਿਆਂ ਨੇ ਮੈਂ ਮੁੰਡਿਆਂ ਨੂੰ ਦੇ ਜਾਂ ਵਰਾਈ ਤੀ ਅਣਪਿਜ ਪਿਜ ਦਾ ਜੀ ਉਹ ਮਾਇਆ ਤਾਂ ਉੱਪਰ ਉੱਠ ਗਿਆ ਅਣਪਿਜ ਅਣਪਿਜਾ ਉਤਲ ਪ੍ਰਤਾਪ ਉਤਲ ਪ੍ਰਤਾਪ ਪਿਜਿਆ ਹੋਇਆ ਨਾ ਹੋ ਸੱਚ ਜਿਹੜਾ ਨਾਮ ਨਾਲ ਪਿਜਿਆ ਹੋਰ ਕਿਸੇ ਚੀਜ਼ ਨਾਲ ਪਿਜ ਨਹੀਂ ਸਕਦਾ ਪਿਜਜ ਹੋ ਗਿਆ ਮਾਇਆ ਦਾ ਨਾਮ ਨਾਲ ਨਾਮ ਨਾਲ ਜੋ ਪਿਜ ਗਿਆ ਹੋਰ ਕਿਸੇ ਚੀਜ਼ ਤੇ ਪਿਜ ਕਦੇ ਨਾ ਹੋਵੇ ਨਾ ਲੱਗੇ ਦਾਗਾ ਜੇ ਬੈੜਾ ਕਦੇ ਨਾ ਹੋਵੇ ਕਿਹਾ ਹੈ ਹੈ ਦਾਗ ਨਹੀਂ ਲੱਗਦਾ ਅਨਖੰਡ ਅਮਿਤ ਅਥਾਪ ਅਨਖੰਡ ਉਹਨਾਂ ਟੁਕੜਾ ਨਹੀਂ ਕੀਤਾ ਜਾ ਸਕਦਾ ਦੇਖੋ ਅਨਖੰਡ ਹੈ ਟੁਕੜਾ ਨਹੀਂ ਕੀਤਾ ਜਾ ਸਕਦਾ ਇੱਕ ਦਾ ਕਦੇ ਵੀ ਆਗਰ ਵੀ ਦਾੜ ਪੈਦਾ ਹੋਈ ਇੱਕ ਵਾਰ ਜਦੋਂ ਅਨਖੁਲਦਾ ਸਾਜਖੰਡ ਦੇ ਵੀ ਤਾਂ ਸਾਰੇ ਅਨਖਡੇ ਸੀ ਸੰਸਾਰGamma ਪੈਦਾ ਹੋਏ ਕਿਸੇ ਨੇ ਨਹੀਂ ਕੀਤਾ ਦਾੜ ਇਹਨੂੰ ਕੋਈ ਨਹੀਂ ਇਹ ਟੁਕੜਾ ਇਹਦਾ ਕਰ ਸਕਦਾ ਤੋੜ ਕੇ ਅਨਖੰਡ ਹੈ ਫਿਰ ਖੰਡਣ ਕੇਵੇਂ ਹੋ ਗਿਆ ਸਵਾਲ ਤਾਂ ਇਹ ਖੰਡਣਾ ਹੋਇਆ ਸਾਇਬੰਗ ਵਾਲੀ ਸ਼ਕਤੀ ਇਹਦੇ ਕੋਲ ਸਾਇਬੰਗ ਇਹਦੇ ਕੋਲ ਸ਼ਕਤੀ ਹੈ ਕਿ ਸਾਇਬੰਗ ਸੱਤ ਸ਼ਕਤੀਆਂ ਇਹਦੇ ਕੋਲ ਨਹੀਂ ਆਣਾ ਇਸ ਵਕਤ ਇੱਕ ਸ਼ਕਤੀ ਹੈ ਜਦੋਂ ਉਹ ਸ਼ਕਤੀ ਦਾ ਇਸਤੇਮਾਲ ਕਰ ਲੈਂਦਾ ਨਾ ਸਾਇਬੰਗ ਵਾਲੀ ਦਾ ਉਦੋਂ ਇਹ ਨੂੰ ਘਰ ਬਚਾਉਣਾ ਪੈ ਜਾਂਦਾ ਬਸ ਇਹ ਉਹ ਤਲਵਾਰ ਹੈ ਤੇ ਕੋਈ ਜਿਹੜੀ ਇਹਦੇ ਹੀ ਗੱਲ ਤੇ ਚਲਦੀ ਹੈ ਹੋਰ ਕਿਸੇ ਤੇ ਨਹੀਂ ਚਲਦੀ ਉਹ ਤਲਵਾਰ ਐਸੀ ਸ਼ਕਤੀ ਹੈ ਤੇ ਕੋਈ ਸਾਇਪੰਗ ਦੀ ਦਰ ਕੋਲ ਉਹ ਸਾਇਪੰਗ ਵਾਲੀ ਸ਼ਕਤੀ ਇਹਦੇ ਹੀ ਪੈਰ ਤੇ ਵੱਜਦਾ ਘਾੜਾ ਦੂਆ ਤਾਂ ਨੂੰ ਸਮਝਾ ਕੇ ਹਟਾਉਂਦੇ ਹੀ ਨਾ ਵੀ ਕੋਹਾੜਾ ਨਾ ਚਲਾ ਇਹ ਬੰਦ ਕਰ ਦੇ ਇੱਕ ਹੋ ਜਾਓ ਫਿਰ ਜਗ ਬਠੀਕ ਹੋ ਜਵੇ ਹੋਰ ਤਾਂ ਉਹ ਵਿਦੇਸ਼ਗਰ ਨਾਲੇ ਰਹਿਣੂ ਇਹ ਸਵਾਏ ਪੰਗ ਦੀ ਸ਼ਕਤੀ ਇਹਦੇ ਕੋਲ ਹੈ ਜਦ ਵਰਜੀ ਇਹ ਸਵਾਏ ਪੰਗ ਹੋ ਜਾਂਦਾ ਨਹੀਂ ਅਰਖੰਡਾ ਦੂਆ ਨਹੀਂ ਨੂੰ ਤੋੜ ਸਕਦਾ ਕੋਈ ਅਰ ਜੋੜ ਵੀ ਨਹੀਂ ਸਕਦਾ ਦੂਆ ਕੋਈ ਇਹ ਵੀ ਗੱਲ ਹੈ ਜੇ ਜੋੜਨਾ ਨਾ ਚਾਹਦਾ ਹੋਵੇ ਕੋਈ ਜੋੜ ਵੀ ਨਹੀਂ ਸਕਦਾ ਨਾ ਇਹਨੂੰ ਤੋੜ ਸਕਦਾ ਨਾ ਕੋਈ ਜੋੜ ਸਕਦਾ ਦੁਆ ਸਲਾਹ ਦੇ ਸਕਦਾ ਹੈ ਤੋੜ ਜੋੜ ਦੀ ਜੇ ਦੋ ਭਾਈ ਲੜਦੇ ਨੇ ਜੇ ਨਾ ਮੰਨਣ ਨੂੰ ਤਿਆਰ ਹੁਣ ਦੋਏ ਲੜਾਈ ਨੂੰ ਕੌਣ ਹਟਾ ਦੂ ਕ੍ਰਿਸ਼ਨ ਹਟਾ ਨਹੀਂ ਸਕਿਆ ਲੜਾਈ ਇਹ ਗੱਲ ਸੀ ਕ੍ਰਿਸ਼ਨ ਕਹਿੰਦਾ ਹੱਦ ਘਟ ਕ੍ਰਿਸ਼ਨ ਦੇਖੋ ਭਗਵਾਨ ਕਹਿੰਦਾ ਨਿਕ੍ਰਿਸ਼ਨ ਉਹ ਕਹਿੰਦਾ ਹੁਣ ਆ ਰਿਹਾ ਹੁੰਦੀ ਬੱਡਣੀ ਭਾਵੀ ਹੈ ਇਹ ਨਹੀਂ ਬਣ ਸਕਦੀ ਜੇ ਨਾ ਉਹਨਾਂ ਤਾਂ ਸਮਝੋ ਹੋਣ ਹਾਰ ਹੈ ਹੁਕਮ ਉਹ ਕੋ ਪਰਮੇਸ਼ਰ ਦਾ ਨਹੀਂ ਆਏਗਾ ਆਪਣਾ ਹੁਕਮ ਅੱਜ ਕਹਿੰਦੇ ਪਾਣਾ ਪਾਣਾ ਇਹਦਾ ਆਪਣਾ ਪਾਣਾ ਦੋ ਪ੍ਰਕਾਰ ਦੇ ਨੇ ਇਹਦਾ ਆਪਣਾ ਪਾਣਾ ਹੈ ਜਿਹੜਾ ਉਹ ਜੇ ਛੱਡ ਦੇਵੇ ਤਾਂ ਕਰਕੇ ਪਾਣ ਨੂੰ ਬੰਦਾ ਜੇ ਨਾ ਆਪਣਾ ਪਾਣਾ ਤਿਆਗਦਾ ਨਹੀਂ ਕਰਕੇ ਪਾਣ ਦੇ ਵਿੱਚ ਆ ਨਹੀਂ ਸਕਦਾ ਇਹ ਪੁਆਇੰਟ ਬਹੁਤ بڑا ਹੈ ਇਹ ਪੁਆਇੰਟ ਡਿਸਕਸੇ ਨਹੀਂ ਹੋਇਆ ਹੋਇਆ ਇਸੇ ਤਰ੍ਹਾਂ ਕੇ ਪਾਣਾ ਨਹੀਂ ਸੋ ਵਿਚਾਰਿਆ ਲੋਕਾਂ ਨੇ ਲੋਕ ਕੋਈ ਪਾਣਾ ਸਭ ਦੇ ਨੇ ਅਸਲ ਦੇ ਵਿੱਚ ਜਿਆਦਾ ੜ ਕਹਦੇ ਆਪਣੇ ਪਾਣ ਦੇ ਆਪਣੇ ਪਾਣੇ ਚੱਲੇ ਭਾਈ ਵਿਚੜ ਝੋਟਾ ਖਾਏ ਗੁਰਕੇ ਪਾਣੇ ਚੱਲੇ ਇਸ ਨੂੰ ਕਹੇ ਤੂੰ ਚੱਲ ਜੇ ਚੱਲ ਤੈਨੂੰ ਕੋਈ ਚਲਾ ਨਹੀਂ ਸਕਦਾ ਤੂੰ ਆਪਣੀ ਮਰਜ਼ੀ ਨਾਲ ਇੱਧਰ ਚੱਲੇਗਾ ਮਰਜ਼ੀ ਨਾਲ ਇੱਧਰ ਚੱਲੇਗਾ ਕੋਈ ਕਿਸੇ ਦਾ ਦਬਾ ਨਹੀਂ ਇਹਦੇ ਤੇ ਹੈ ਕੋਈ ਸੱਚਖੰਡ ਸਾਰੇ ਬਰਾਬਰ ਨੇ ਸੱਚਖੰਡ ਨੇ ਕੋਈ ਬڑا ਛੋਟਾ ਨਹੀਂ ਹੁੰਦਾ ਇ ਕਰਕੇ ਕੋਈ ਗੁਰੂ ਸੱਚਖੰਡ ਜ ਨਹੀਂ ਹੁੰਦਾ ਗੁਰੂ ਆ ਤਾਂ ਫਿਰ ਕੀ ਗੁਰੂ ਆ ਉਹ ਜਿਹੜਾ ਇੱਥੇ ਗੁਰੂਆਂ ਸੱਚਖੰਡ ਜੀ ਵੀ ਗੁਰੂ ਆ ਜਾਂਦੇ ਜਿਹੜਾ ਇੱਥੇ ਭਗਤਾਂ ਸੱਚਖੰਡ ਜੀ ਵੀ ਜਾ ਕੇ ਭਗਤ ਹੈ ਜੇ ਬਰਾਾਸ ਭਗਤ ਹੈ ਸੱਚਖੰਡ ਜਾ ਕੇ ਭਗਤ ਹੈ ਇਹ ਨਾਨਾ ਗੁਰੂ ਆ ਸੱਚਖੰਡ ਦੇ ਗੁਰੂ ਆ ਫੇ ਗੁਰੂ ਕੀ ਦਾ ਉੱਥੇ ਸੱਚਖੰਡ ਜਾ ਕੇ ਕੀ ਦਾ ਗੁਰੂ ਆ ਤੁਸੀਂ ਉੱਥੇ ਉੱਥੇ ਤਾਂ ਬਰਾਬਰ ਨੇ ਸਾਰੇ ਇਹ ਤਾਂ ਉੱਥੇ ਸਾਰੇ ਗੁਰੂ ਨੇ ਇਹ ਸਾਰੇ ਭਗਤ ਨੇ ਇਹ ਸਾਰੇ ਦਾਸ ਨੇ ਸਾਰੇ ਬਰਾਬਰ ਨੇ ਉੱਥੇ ਕੋਈ ਵੱਡਾ ਛੋਟਾ ਨਹੀਂ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਦੀ ਗੁਰਬਾਣੀ ਦਾ ਇਹਨਾਂ ਨੇ ਧਿਆਨ ਨਹੀਂ ਕੀਤਾ ਉਹਨਾਂ ਦਾ ਰੌਲਾ ਰੌਲਾ ਉਹਨਾਂ ਦਾ ਪਾਇਆ ਸਮਝ ਕਿਸੇ ਨੂੰ ਨਹੀਂ ਉਹਨਾਂ ਚੋਂ ਉਹਨਾਂ ਨੂੰ ਸਮਝਾ ਦਈਏ ਕੋਈ ਅਸੀਂ ਬੜੇ ਆ ਰਵਦਾਸ ਬੜਾ ਤਾਂ ਅਸੀਂ ਬੜੇ ਆ ਉਹ ਕਹਿੰਦਾ ਨਾਨਕ ਬੜਾ ਤਾਂ ਅਸੀਂ ਬੜੇ ਉਹ ਰਵਦਾਸ ਆ ਨਾਨਕ ਜੇ ਫਰਦ ਸਮਝੀ ਬੈਠੇ ਨੇ ਬੇਈਮਾਨ ਉਹਨਾਂ ਨੂੰ ਇਹ ਨਹੀਂ ਬਤਾ ਵੀ ਇਹ ਨਾਲੇ ਫਰਕ ਤੁਸੀਂ ਕਿਵੇਂ ਪਾ ਦੋਗੇ ਫਰਕ ਤਾਂ ਇਹਨਾਂ ਦੇ ਆਪਣਾ ਟਿਕਟ ਪਾਈ ਬੈਠੇ ਨੇ ਵਖਤਾ ਚ ਫਰਕ ਉਹ ਉਹ ਦਾ ਦੁਨੀਆ ਦਾ ਫਰਕ ਕੱਢਣ ਵਾਲੇ ਨੇ ਤੁਸੀਂ ਉਹਨਾਂ 'ਚ ਫਰਕ ਪਾਈ ਜਾਂਦੇ ਹੋ ਇਹ ਮੂਰਖ ਨੇ ਸਾਰੇ ਕਿ ਜੈਨੂ ਮੇਰਾ ਜੋ ਗੁਰਬਾਨੀ ਦੀ ਸੁਝਦੀ ਲੜੇ ਇਹਨਾਂ ਨੇ ਸਮਝ ਤੇ ਲੈਣਾ ਕੀ ਹੈ ਇਹਦਾ ਆਦਾ ਰੋਟੀਆਂ ਸੇਕਦੇ ਨੇ ਸਿਆਸਤ ਦੀ ਇਹ ਕੱਭ ਜਾ ਗੋਲਖਤੇ ਇਹ ਚੌਧਰ ਦੀ ਗੱਲ ਐ ਸੁਦਸਾਲ ਦੀ ਹੋਰ ਇਹਦਾ ਕੋਈ ਮਤਲਬ ਨਹੀਂ ਨਾ ਇਹਨਾਂ ਰਬ ਦਾਸ ਤੇ ਕੁਝ ਲੈਣਾ ਨਾ ਉਹਨਾਂ ਨੇ ਰੋਣ ਤੇ ਕੁਝ ਲੈਣਾ ਉਹ ਲੈਣਾ ਹੋਵੇ ਗੁਰਬਾਨੀ ਤੋਂ ਲੈਣਾ ਕੁਝ ਜੇ ਕਿਸੇ ਨੇ ਨਾਨਕ ਤੋਂ ਲੈਣਾ ਕੁਝ ਪੁਰਬਾਨੀ ਹੈਗੀ ਹੈ ਜਾਂ ਰਬਦਾਸ ਦੀ ਉਹ ਤਾਂ ਵੀ ਉਹੀ ਕੁਝ ਬਲੂ ਜੋ ਨਾਨਕ ਦੀ ਬਾਣੀ ਤੋਂ ਬਲੂ ਫਰਕ ਕੋਈ ਨਹੀਂ ਹੈ ਨੀਂਹਾਂ ਦੇ ਅੰਦਰ ਫਰਕ ਆ ਉਹਨਾਂ ਦੇ ਆਪਣੇ ਅੰਦਰੇ ਫਰਕ ਅਸਲ 'ਚ ਸੱਚ ਦੇ ਉਹ ਸੱਚ ਉਹ ਤਸਕਰ ਦੇ ਨਾਮ ਤਾਂ ਲੈਣਾ ਨਹੀਂ ਉਹਨਾਂ ਨੇ ਨਾਮ ਹੈ ਉਹਦੇ ਰਿਆ ਨਾਮ ਉਹਦੇ ਉਹਨਾਂ ਕੋਲ ਹੈ ਨਾਮ ਉਹ ਰਬਦਾਸ ਦੇ ਘਰ ਕੁਝ ਹੈ ਨਾਮ ਤੇ ਬਨਾਨਾ ਨਾਨਕ ਦੇ ਘਰ ਕੁਝ ਹੈ ਨਾਮ ਤੇ ਉਹਨਾਂ ਨੂੰ ਨਾ ਉਹ ਜਹੀਦਾ ਨਹੀਂ ਬਸ ਕਹ ਲੈ ਜਿਹਨਾਂ ਨੂੰ ਨਾ ਉਹ ਜਹੀਦਾ ਉਹਨਾਂ ਨਾਲ ਬਤ ਮੈਂ ਨਾ ਉਹ ਬਿਲਾਦ ਕੁਝ ਹੋਰ ਦਿੰਦਾ ਨਾ ਨੂੰ ਕੁਝ ਹੋਰ ਦਿੰਦਾ ਮਾਇਆ ਕਹਿੰਦੇ ਮਾਇਆ ਕਹਿੰਦੇ ਵਾਹਨੇ ਪ੍ਰਾਣੀ ਚੂਠ ਗੋਰੀ ਪਾਈ ਝਗੜਾ ਇਸ ਗੱਲ ਦਾ ਜਿਹਰਾਂ ਨੂੰ ਕੋ ਦਿਨ ਉਹਨਾਂ ਨਾਲ ਕਹ ਝਗੜਾ ਉਹਨਾਂ ਨੇ ਕੁਝ ਜਿਨ੍ਹਾਂ ਨੂੰ ਕਦੀ ਨਾ ਉਹਨਾਂ ਨੂੰ ਕੁਝ ਬਣਨਾ ਗੁਰਬਾਨ ਚ ਦੁਆ ਨੂੰ ਬਣਨਾ ਵੀ ਖਰੀਆ ਦੁਆ ਨਾ ਹੈ ਇੱਲਈ ਝਗੜਿਆ ਫਿਚਿਓ ਅਨਖੰਡ ਅਮਿੱਤ ਅਥਾਪ ਅਨਖੰਡ ਅਮਿੱਤ ਅਥਾਪ ਅਥਾਪ ਹੈ ਉਹ ਥਾਪਿਆ ਨਹੀਂ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਰਜਲ ਸੋਏ ਅਥਾਪੇ ਕੋਈ ਨਹੀਂ ਥਾਪਦਾ ਇਹ ਆਪਣੇ ਆਪ ਨੂੰ ਆਪੇ ਥਾਪ ਲੈ। ਚਾਹੇ ਦਾ ਮਨ ਡੇਗ ਜਵੇ ਮੰਨ ਜਵੇ ਗੁਰ ਕੇ ਪਾਲਾ ਮੰਨ ਜਵੇ ਦਾ ਡੇਗ ਜਵੇ। ਨਾ ਬੰਨੇ ਤਾਂ ਨਹੀਂ ਡੇਗਦਾ। ਨਾ ਕੋਈ ਨਹੀਂ ਥਾਪ ਸਕਦਾ ਇਹਨੂੰ। ਥਾਪ ਸਕਦਾ ਨਾ ਇਹਨੂੰ ਖੰਡਣ ਕਰ ਸਕਦਾ ਕੋਈ ਦਾਤ ਆਏ ਦੇ ਦੋ ਕਰ ਸਕਦਾ ਨਾ ਇਹਨੂੰ ਇਕੱਠਾ ਇੱਕ ਕਰ ਸਕਦਾ ਅਨਖੰਡ ਹੈ ਅਮਿਤ ਅਥਾਪ ਅਨਖੰਡ ਹੈ ਜਾਇ ਅਮਿਤ ਅਨਖੰਡ ਹੈ ਕੋਈ ਸ਼ਕਤੀ ਉਹ ਨਾ ਇਹਨੂੰ ਤੋੜ ਦਵੇ ਸੰਸਾਰ ਚ ਸੱਚ ਵੀ ਕੋਈ ਸ਼ਕਤੀ ਨਹੀਂ ਜਿਹੜੀ ਇਹਨੂੰ ਖੰਡਣ ਕਰ ਲਵੇ ਇੱਕ ਨੂੰ ਇੱਕ ਨੂੰ ਜੇ ਕੋਈ ਸ਼ਕਤੀ ਇਹਨੂੰ ਦੋ ਟੁਕੜੇ ਨਹੀਂ ਕਰ ਸਕਦੀ ਇਤੋ ਵੱਡੀ ਕੋਈ कोई नहीं, था, नहीं, नहीं, शक्ति ਨਹੀਂ ਇੱਕ ਤਾਂ ਵੱਡੀ ਕੋਈ ਸ਼ਕਤੀ ਹੋਈ ਦੀ एक ਕੋਹਣਾ ਚਾਹੇ ਤਾਂ ਉਹ ਰੋਕ ਨਹੀਂ ਸਕਦਾ ਰੁਕਣਾ ਕਿਨੇ ਰੋਕਣ ਵਾਲਾ ਤਾਂ ਉਹ ਤਾਂ ਕਹਿੰਦੇ ਨੇ ਇੱਕ ਹੋ ਰੁਕਣਾ ਹੋਰ ਕਿਨੇ ਵਾਹ ਸ਼ਕਤੀ ਦਾ ਕਹਿੰਦੀ ਹੈ ਇੱਕ ਹੋ ਉਹ ਤਾਂ ਸੋਨਾ ਕਰਾਉਣ ਵਾਲੇ ਨੇ ਬਾਕੀ ਦੇ ਸਾਰੇ ਜਿਹੜੀ ਸ਼ਕਤੀ ਹੈ ਮਹਾਂ ਸ਼ਕਤੀ ਹੈ ਉਹਨਾਂ ਨੇ ਲੋਕਾਂ ਦੇ ਲੋ ਉਹਦਾ ਹੱਕ ਜਿਹਨੇ ਸੁਲਾ ਦੇ ਰੁਕਦਾ ਤਾਂ ਆਪੇ ਹੀ ਹੈ ਇਹਦੇ ਆਪਣੇ ਮਨਚੇ ਮੈਲ ਹੈ ਜਿਹਨਾਂ ਦੇ ਮਨ ਦੇ ਵਿੱਚ ਮੈਲ ਹੈ ਉਹਨਾਂ ਨੂੰ ਰਵਿਦਾਤ ਕੁਝ ਹੋਰ ਲੱਗਦਾ ਹੈ ਨਾ ਕੁਝ ਹੋਰ ਲੱਗਦਾ ਹੈ ਮਨਚੇ ਹੋ ਮੈਲ ਬੰਦੀ ਮੈਲ ਦੋ ਲੱਗਦੇ ਨਹੀਂ ਜਦ ਤਨ ਹਟ ਗਈ ਉਦਨ ਆਪ ਇੱਕ ਹੋ ਗਿਆ ਜਿਹੜਾ ਉਹਨੂੰ ਇੱਕ ਲੱਗੂਗਾ ਜਿਹੜਾ ਦੋ ਨੇ ਨਾ ਮੈਲ ਉਨੂੰ ਸਾਰੇ ਦਰ ਦੋ ਦਿੰਦੇ ਨੇ ਅੱਡ ਅੱਡ ਮੈੜਾ ਨਮੰਦ ਵਿੱਚ ਉਹਨੂੰ ਮੈੜਾ ਉਹਨੂੰ ਮੈੜਾ ਸਭ ਕੁਝ ਮੈੜਾ ਅ ਸਭ ਕੁਝ ਮੈੜਾ ਹੀ ਦਿੰਦਾ ਫਿਰ ਜਮਨ ਮੈੜਾ ਜਹਿਕੀਨ ਜਗਤ ਪਸਾਰ ਜੇ ਕੀਨ ਜਗਤ ਪਸਾਰ ਜੀ ਜਗਤ ਦਾ ਪਸਾਰਾ ਕੀਤਾ ਕਿਨਾ ਕੀਤਾ ਜਗਤ ਦਾ ਪਸਾਰਾ ਉਹ ਨੇ ਕੀਤਾ ਯਾ ਇਹ ਕਦੇ ਕੀਤਾ ਇੱਕੇ ਦੋ ਥਾਂ ਕੇ ਹੋਇਆ ਹੋਇਆ ਹੁਕਮ ਨਾ ਹੋਇਆ ਹੈ ਰਚਿਓ ਵਿਚਾਰ ਵਿਚਾਰ ਰਚਨਾ ਰਚੀ ਹੈ ਵਿਚਾਰ ਕੇ ਕੇ ਹੋਰ ਵਿਚਾਰ ਕੇ ਕੋ ਇਲਾਜ ਕਰਨ ਵਾਸਤੇ ਕੁੜੇ ਦਾ ਕੀ ਕਰੀਏ ਰੂਪ ਰੂਪ ਰੂਪ ਜਿਹੜੇ ਵਿਚਾਰ ਵਿਚਾਰ ਕੇ ਦਿੱਤੇ ਹੋਏ ਨੇ ਪਹਿਲਾਂ ਕਿੱਥੋਂ ਪਾਣੀ ਜਲ ਚ ਜੀ ਪਹਿਰਾ ਹੋਏ ਅਗਲਾ ਰੂਪ ਫੇਸ ਮਾਰਨੇ ਦੂਹਾਰੂ ਸਾਰੇ ਵਿਚਾਰ ਕੇ ਰੂਪ ਇਸੇ ਕਰਕੇ ਕਬੀਰ ਕੀ ਕਹਿੰਦਾ ਨਾ ਕਛ ਪੋਜ ਮਾਟੀ ਕੇ ਭਾਂਡੇ ਨਾ ਕਛ ਪੋਜ ਹਮਾਰੇ ਇਹ ਤਾਂ ਬਹੁਤ ਵਿਚਾਰ ਵਿਚਾਰ ਕੇ ਰੂਪ ਦਿੱਤੇ ਨੇ ਤੁਹਾਨੂੰ ਤੁਸੀਂ ਕਿਉਂ ਇਹਨਾਂ ਨੂੰ ਇਹਦੇ ਵਿੱਚ ਦਖਲ ਦਿੱਲਿਓ ਜਿਹੜੇ ਰੂਪ ਦੇ ਵਿੱਚ ਦਖਲ ਲੰਦੇ ਨੇ ਮੂਰਖ ਨੇ ਉਹ ਤਾਂ ਵਿਚਾਰ ਵਿਚਾਰ ਕੇ ਤਾਂ ਤੁਹਾਡੇ ਰੂਪ ਬਣੇ ਹੋਏ ਨੇ ਜੇ ਪਰ ਇਹ ਆਪਣੀ ਅਕਲ ਤੇ ਜਿਆਦਾ ਭਰੋਸਾ ਕਰਦਾ ਨੂੰ ਆਪਣੀ ਅਕਲ ਚੰਗੀ ਲੱਗਦੀ ਹੈ ਜਿੰਨਾ ਜਿਹਨਾਂ ਨੂੰ ਆਪਣੀ ਅਕਲ ਚੰਗੀ ਲੱਗਦੀ ਹੈ ਉਹਨੇ ਜਿਹੜੇ ਮੂਰਖ ਹੈ ਬਾਜ ਜਦੋਂ ਨੂੰ ਆਪਣੀ ਅਕਲ ਦੇ ਨੁਕਸ ਲੱਭਣ ਲੱਗੇ ਨਾ ਉਹਦੇ ਨੇ ਸਾਰੇ ਨੁਕਸ ਦੂਰ ਹੋ ਜਾਂਦੇ ਜਿਹੜੇ ਨੂੰ ਜਿੰਨਾ ਜਿਹੜੇ ਨੂੰ ਆਪਣੀ ਅਕਲ ਚ ਕੋਈ ਨੁਕਸ ਨਹੀਂ ਲੱਗਦਾ ਏ ਮੂਰਖ ਦਾ ਮੂਰਖ ਰਹੂਗਾ ਸਾਰੇ ਨੁਕਸ ਤੇ ਅਕਲ ਚ ਰਹਿ ਜਾਣਗੇ ਉਹ ਤਾਂ ਨਹੀਂ ਨਾ ਮੇਰੀ ਅਕਲ ਜੂਰ ਰੁਕਸ ਪਰ ਜਦਨ ਇਹਨੂੰ ਰੁਕਸ ਅੰਦਰ ਨੂੰ ਝਾਕਿਆ ਆਪਣੇ ਝਾਕਣ ਲੱਗਿਆ ਆਪਣੇ ਘਰਵਾਂ ਚ ਦੇਖਣ ਲੱਗਿਆ ਉਦੋਂ ਸਾਰੇ ਰੁਕਸ ਦੂਰ ਵੀ ਕਰ ਲੂਗਾ ਫਿਰ ਇਹ ਰੁਕਸ ਵੀ ਦੇਖਣ ਦੂਰ ਵੀ ਕਰ ਲੂਗਾ ਜੁਨਾ ਜੇ ਮੰਨਦਾ ਨਹੀਂ ਅੰਦਰ ਝਾਕਦਾ ਹੀ ਨਹੀਂ ਮੇਰੇ ਸਭ ਕੁਝ ਠੀਕ ਹੈ ਉਹਨਾਂ ਜੇ ਦੂਰ ਕਿਉਂ ਕਰੂਗਾ ਉਰਤ ਜਦਕਰ ਉਡਣਾ ਜਦਦਨ ਇਹਨੂੰ ਪਤਾ ਲੱਗੂ ਹੈਗਾ ਨੁਕਸਾਨ ਜਨਾ ਜਿਹੜਾ ਆਪਣੀ ਅਕਲ ਨੂੰ ਬੜੀ ਵੱੰਦਾ ਹੈ ਉਹਨਾਂ ਚਾਰੇ ਮੂਰਖਾ ਜਦਦਨ ਇਹਨੇ ਆਪਣੀ ਅਕਲ ਨੂੰ ਛੋਟੀ ਮੰਨ ਲਿਆ ਮੇਰੀ ਮਤ ਥੋੜੀ ਥੋੜੀ ਰਾਮ ਤੂੰ ਸਬਰਤ ਵੱਡਾ ਉਦਣੇ ਸਮਝੋ ਫਿਰ ਇਥੇ ਸਿਆਣਾ ਕੋਈ ਨਹੀਂ ਹੁਣ ਫਿਰ ਇਹ ਤਾਂ ਸਿਆਣਾ ਕੋਈ ਨਹੀਂ ਫਿਰ ਬਵੇਕੀ ਹੈ ਇਹ ਉਦਣੇ 10 4 4 ਪਰਵੀਰ ਹੋਊਗਾ ਜਿੱਦਣ ਇਹ ਮੰਨ ਲਿਆ ਕਿ ਬਹਿਰੀ ਵਾ ਤਾਂ ਥੋੜੀ ਰਾਮ ਫਿਰ ਇਹ 10 4 4 ਪਰਵੀਰ ਹੋ ਜਾਣਾ ਇਹ ਰਾਤੁਰ ਪਹਿਣਾ ਰੋਜ਼ ਨਾ 6 ਵਾਰ ਦੇ ਜਾਣਾ ਅੱਗੇ ਅੱਗੇ ਵਧਦੇ ਨਹੀਂ ਦੋਦ ਨੂੰ ਪਿੱਠ ਖੜੀ ਕਰ ਪੂਰਾ ਸਭ ਕੋ ਪੂਰਾ ਆਪੋ ਹੋਵੇ ਕੱਟਣ ਕੋ ਆਖਾ ਜਿਹੜੇ ਸਾਰੇ ਆਪਣੇ ਆਪ ਚ ਪੂਰੇ ਨੇ ਕੋਈ ਘਟ ਕਹਿੰਦਾ ਨਹੀਂ ਆਪਣੇ ਆਪ ਨੂੰ ਡਿਵੈਲਪਮੈਂਟ ਦੀ ਕੀ ਲੋੜ ਹੈ ਉਹਨੂੰ ਕਿਉਂ ਡਿਵੈਲਪਮੈਂਟ ਕਰੂਗਾ ਉਹ ਤਾਂ ਪੂਰਾ ਪਹਿਲਾਂ ਰੂਪ ਅਨੰਤ ਨੇ ਕੀ ਇੱਕਦਈ ਰੂਪ ਨੇ ਸਾਰੇ ਹਰ ਆਪੇ ਹੀ ਇੱਕ ਰੰਗ ਹੈ ਆਪੇ ਬੋਰ ਹੈ ਚਾਹੇ ਕਿੰਨੇ ਨੁਕਸਨ ਹੈ ਚਾਹੇ ਨੁਕਸ ਘਟਨਾ ਹੈ ਚਾਹੇ ਵਧਨਾ ਹੈ ਇੱਕਦਈ ਰੂਪ अनंत रूप अखंड पर सारे ये अखंड ने रूप फिर भी अपनी मर्जी ਨਾਲ ਤਾਂ ਆਪਣੇ ਮਰਜ਼ੀ ਨਾਲ ਆਪਣਾ ਰੂਪ ਠੀਕ ਕਰਨਾ ਕਰ ਕੋਈ ਵੀ ਨਹੀਂ ਸਕਦਾ ਜੋ ਮਰਜ਼ੀ ਉਪਦੇਸ਼ ਕਰੀ ਜਾਵੇ सारे रूप अखंड रे अलਾਜ ਕਿਸੇ ਦਾ ਵੀ ਨਹੀਂ ਕਿਸੇ ਕੋਲ ਹੈ ਦੁਆ ਤਾਂ ਦੱਸੇ ਸਕਦਾ ਰ ਚਾਹ ਕਿੰਨਾ ਇਹ ਖਲੜਾ ਹੈ ਕਿੰਨਾ ਇਹ ਮੂਰਖ ਹੈ ਤੈਨੂੰ ਕਹਿਆ ਨਾ ਕੋਈ ਬੂਰਖ ਨਾ ਕੋਈ ਸਿਆਣਾ ਉਸ ਤੱਕ ਕੋਈ ਸਿਆਣਾ ਨਾ ਕੋਈ ਬੂਰਖ ਸਭ ਕੋ ਵਰਤੈ ਤੇਰਾ ਇਹਨੂੰ ਕਹਿਆ ਜੀਵ ਨੂੰ ਤੇਰਾ ਹੀ ਬਾਣਾ ਵਰਤਦਾ ਹੈ ਤੂੰ ਆਪਣੇ ਬਾਣੇ ਨਾਲੇ ਬੂਰਖਾ ਆਪਣੇ ਬਾਣੇ ਨਾਲੇ ਸਿਆਣਾ ਔਰ ਪਰਮੇਸ਼ਰ ਦਾ ਬਾਣਾ ਕੋਈ ਨਹੀਂ ਹੈ ਚ ਅਖੜ ਰੂਪ ਹੈ ਉਹ ਇਹਦਾ ਤੇਰਾ ਹੀ ਬਾਣਾ ਵਰਤਦਾ ਬੂਰਖ ਸਿਆਣਾ ਕੌਣਾ ਤੂੰ ਜਾਣ ਕੇ ਆਪਣੇ ਬੂਰਖਾ ਤੂੰ ਜਾਣ ਕੇ ਸਿਆਣਾ ਬਣੇਗਾ ਆਪਣੀ ਮਰਜੀ ਨਾਲ ਮੂਰਖ ਆਪਣੀ ਮਰਜੀ ਦਾ ਸਾਨਾ ਬਣ ਸਕਦਾ ਹੈ ਪਰਮੇਸ਼ਾ ਦਾ ਪਾਣਾ ਬਿਲਕੁਲ ਨਹੀਂ ਇਹਦੇ ਅਰਥ ਜੇ ਪਰਮੇਸ਼ਾ ਦਾ ਪਾਣਾ ਹੋਵੇ ਫਿਰ ਤਾਂ ਸਾਡਾ ਕਸੂਰ ਹੈ ਕੋਈ ਨਹੀਂ ਫਿਰ ਦੋਦਾ ਦਾ ਪਾਣਾ ਵਰਤਦਾ ਉਹਨੇ ਮੂਰਖ ਬਣਾਇਆ ਲੈ ਉਹ ਤਾਂ ਕਸੂਰਵਾਰ ਹੋਗਾ ਸਾਡਾ ਤਾਂ ਕੋਈ ਕਸੂਰ ਹੈ ਨਹੀਂ ਫਿਰ ਫਿਰ ਉੱਪਰ ਫੁਕਾਰੀ ਕਿਵੇਂ ਹੋਇਆ ਉੱਪਰ ਫੁਕਾਰੀ ਕਿਵੇਂ ਹੋਇਆ ਇਹਨੂੰ ਕਹਿੰਦਾ ਆਪਕੋ ਵਰਤਦਾ ਤੇਰਾ ਪਾਣਾ ਮੈਂ ਵਾਣੂ ਗਿਆ ਤੇਰਾ ਤੇ ਧੂਆ ਕੀ ਕਰੇ ਉਹ ਬਾਣੀ ਪ੍ਰੋਫੈਸਰ ਵੱਲੋਂ ਬੋਲੀ ਗਈ ਹੈ ਬਾਣੀ ਤਾਂ ਪ੍ਰੋਫੈਸਰ ਵੱਲੋਂ ਬੋਲੀ ਗਈ ਹੈ ਸਭ ਕੁ ਵਰਤੇ ਤੇਰਾ ਬਾਣਾ ਉਹਨੇ ਕਿਹਾ ਇਹ ਬੋਲਦਾ ਕੌਣਾ ਤੇਰਾ ਬਾਣਾ ਵਰਤੇ ਅਜਿਹਾ ਕੋਈ ਰੁਕਸਾ ਨਾ ਮੰਦੇ ਨਾ ਕਿ ਤੂੰ ਬਰੂ ਅਜ਼ੀਦਾ ਮੂਰਖ ਸਿਆਣਾ ਮੰਨਦੇ ਆ ਪਰਮੇਸ਼ਰ ਕਹਿੰਦਾ ਨਾ ਕੋਈ ਮੂਰਖ ਨਾ ਕੋਈ ਸਿਆਣਾ ਸਕੂ ਵਰਤੇ ਤੇਰਾ ਬਾਣਾ ਓਏ ਤੇਰਾ ਹੀ ਬਾਣਾ ਵਰਦਾ ਤੈਨੂੰ ਮੂਰਖ ਤੂੰ ਤਾਂ ਹੈ ਤੂੰ ਗੁਰਮਤ ਨਹੀਂ ਬੰਦਾ ਭਾਈ ਮੂਰਖ ਸਿਆਣੇ ਦੀ ਗੱਲ ਨਹੀਂ ਬੰਦਾ ਮੂਰਖ ਜੇਦਣ ਬੰਨ ਲੱਗਦਾ ਸਿਆਣਾ ਹੋ ਜਾਏਗਾ ਤੇਰੀ ਇਛਾ ਹੀ ਹੈ ਇਹ ਤਾਂ ਅਰਥ ਲਾਇ ਹੋਇਆ ਹੈ ਇਹ ਉਲਟਾ ਅਰਥ ਲਾ ਕੇ ਤਾਂ ਸੰਤੂਡੂ ਦੇ ਉਲੂ ਰਹਿ ਗਏ ਕੋਰਾਗੇ ਬੂਰਖ ਬੂਰਖ ਤਾਂ ਰਹੇਗੇ ਪਰਮੇਸ਼ਰ ਦਾ ਪਾਣਾ ਬਣ ਲਿਆ ਆਪਣਾ ਪਾਣਾ ਜੇ ਬਲ ਲੰਦੇ ਸਾਨੇ ਹੋ ਜਾਂਦੇ ਜੇ ਇਸ ਫਕਤੀ ਦੇ ਅਰਥ ਅਸੀਂ ਠੀਕ ਕਰ ਲੰਦੇ ਵੀ ਇਹ ਸਾਡਾ ਪਾਣਾ ਬੂਰਖ ਸਾਨੇ ਹੁੰਦਾ ਤਾਂ ਅਸੀਂ ਦੁਰਸਤ ਹੋ ਜਾਂਦੇ ਇਹਦੇ ਅਰਥ ਉਲਟਾ ਕੇ ਪਾਈ ਜਾ ਕਰੂਗਾ ਹੋ ਜਾਂਗੇ ਚਲ ਆਪਣਾ ਬੰਦ ਕਰਕੇ ਬਹਿ ਗਏ अपनी ਐਫਰਟ ਛੱਡ ਦਿੱਤੀ। ਪਰਣਾ ਦਰੁਸਤ ਹੋਣ ਵਾਲੀ ਐਫਰਟ ਛੱਡ ਦਿੱਤੀ। ਆ भी ਦੀ ਵੀ ਛੜਾ ਦਿੱਤੀ। ਕੋਈ ਨਹੀਂ ਜਬ ਤੁਸੀਂ जाओ, ਨੇ ਪੜੀ ਜਾਓ ਜਾ ਕੋ ਕਰੂਗਾ ਹੋ ਜਾ ਠੀਕ। ਲੈ। ਸਾਰਿਆਂ ਦਾ ਜੀਵਨ ਖਰਾਬ ਕਰਤਾ। ਕੀ ਕਈਆ ਨੂੰ ਕੀ ਕਈਏ ਮਹਾਮੂਰਖ ਜੀ ਇਲਤਾਂ ਹੀ ਖੜਾ ਤੇਖੀ ਵਾਲਾ ਨੇ ਕੀ ਇਹਦਾ ਲੋਹਾ ਪੁੱਠੀ ਚੱਲ ਗਈ ਤਲਵਾਰ ਜਾਂ ਪੁੱਠੇ ਅਰਥ ਕਰ ਲੈਣ ਨੇ ਵੱਡ ਕੇ ਰੱਖ ਦਿੰਦੀ ਹੈ ਅਕਲ ਦਾ ਨਾਸ ਕਰਕੇ ਰੱਖਤਾ ਉਹਨਾਂ ਦੀ ਅਕਲ ਦਾ ਨਾਸ ਹੋ ਗਿਆ ਇੰਨੀ ਗੱਲ ਨੇ ਅਕਲ ਦਾ ਨਾਸ ਕਰਤਾ ਅਰਥ ਪੁੱਠੇ ਲੈ ਤਲਵਾਰ ਪੁੱਠੀ ਚੱਲ ਗਈ ਆਪਣੇ ਦਲ ਨੂੰ ਚੱਲ ਗਈ ਆਪਣੇ ਦਲ ਨੂੰ ਵੀ ਚੱਲ ਜਾਂਦੀ ਹੈ ਤਲਵਾਰ ਕਦੋਂ ਤੱਕ ਕੀ ਬਾਲੋ ਨਿੱਕੀ ਗੱਲ ਬਾਲੋ ਨਿੱਕੀ ਸੀ ਸਭ ਨੂੰ ਵਰਤੇ ਤੇਰਾ ਪਾਲਾ ਤੇਰਾ ਇਹਨੂੰ ਕਿਹਾ ਸੀ ਪਰਮੇਸ਼ਰ ਦਾ ਅਰਥ ਲਾ ਰਿਆ ਤਲਵਾਰ ਪੁੱਠੀ ਚੱਲ ਗਈ ਪੁੱਠੀ ਚੱਲ ਕੇ ਸਭ ਕਤਲ ਕਰਕੇ ਰੱਖ ਦਿੱਤਾ ਰਾਹ ਬੰਦ ਹੋ ਗਿਆ ਸਿੱਖੀ ਦਾ ਸਿੱਖੀ ਦਾ ਰਾਹ ਬੰਦ ਹੋ ਗਿਆ じゃ ਘਰੂ ਹੋ ਜਾਗੇ ਵੈਰੇ RAMLAL ਉਦੋਂ ਜਾਣਦੀ ਨਹੀਂ ਜੀ ਇਹ ਤਾਂ ਉਹਦਾ اختیار ਹੈ ਸਾਡੇ ਦਾ ਕੁਝ ਨਹੀਂ ਹਥਿਆਰ ਛੜਤੇ ਸੋਤੀ ਖੜ ਗਏ ਇਹਨਾਂ ਦਾ ਆਪਣਾ ਭੜਾ ਵਰਤੇ ਉਹ ਲੋਕ ਇਹ ਕਹਿੰਦੇ ਨੇ ਕੁਝ ਨਹੀਂ ਹੋ ਸਕਦਾ ਅਵੇਲੇਬਿਲਟੀ ਹੋ ਸਕਦੀ ਜਿਹੜੇ ਇਹਦੇ ਅਰਥੋਂ ਐ ਲੈਂਦੇ ਨੇ ਕਿਹਨਾਂ ਨੇ ਸਧ ਅਰਥ ਕੀਤੇ ਨੇ ਕਾਟ ਟਪ ਕੇ ਕਿਹਨਾਂ ਨੇ ਇਹ ਅਰਥ ਮੰਨ ਲਿਓ ਤਿਵੇਂ ਗਏ ਉੱਤੇ ਬਹਿ ਕੇ ਪੁੱਠੀ ਤਲਵਾਰ ਚੱਲ ਗਈ ਉਹਨਾਂ ਦੇ ਉੱਤੇ ਖੱਡਿਆਂ ਤੇ ਕੀਦੀ ਵਾਲਾਂ ਰਿੱਕੀ ਸੀ ਉੱਤੇ ਜਾੜ ਗਏ ਜਿੱਥੋਂ ਨਿਕਲੇ ਨਹੀਂ ਸਕਦੇ ਉਹ ਜਦ ਨੇਰੇ ਖੂਜੇ ਜਾੜ ਗਏ ਜਿੱਥੋਂ ਨਿਕਲੇ ਨਹੀਂ ਸਕਦੇ ਇਹ ਉਹ ਸਿਰ ਤੇ ਸਿੱਖੇ ਉਹਨਾਂ ਦੇ ਸੌਤਾ ਨੇ ਜਿੱਥੋਂ ਨਿਕਲੇ ਨਹੀਂ ਸਕਦੇ ਅਸੀਂ ਨਾਲ ਆਲੇ ਐ ਅਢੀਕਾ ਘਾੜ ਲੜ ਹੀ ਸੀ ਇਹਨਾਂ ਲੁੱਟਾ ਚਾਹੁੰਦਾ ਈ ਸੀ ਇਹਦ ਨੂੰ ਲਜਾਣਾ ਆਪਣੇ ਮਗਰ ਲਾ ਕੇ ਲੈ ਗਿਆ ਬਸ ਲਿਆ ਕੇ ਰੋ ਤੇ ਸਾਰੇ ਹਾਂਜੀ ਅਤੁੱਲ ਪ੍ਰਤਾਪ ਪ੍ਰਚੰਡ ਅਤੁੱਲ ਪ੍ਰਤਾਪ ਪ੍ਰਚੰਡ ਪ੍ਰਤਾਪ ਕਰਨ ਅਤੁੱਲ ਪ੍ਰਚੰਡਤਾ ਪਰ ਪ੍ਰਤਾਪ ਅਤੁੱਲ ਅਤੁੱਲ ਹੀ ਜਾ ਸਕਦਾ ਜਿਹੇ ਅੰਡ ਤੇ ਬ੍ਰਹਮ ਅੰਡ ਆ ਤੇ ਬ੍ਰਹਮ ਅੰਡ ਅੰਡਰ ਬ੍ਰਹਮ ਦੋ ਚੀਜ਼ਾਂ ਨੇ ਅੰਡ ਤੇ ਬ੍ਰਹਮ ਅੰਡ ਦੋ ਚੀਜ਼ਾਂ ਆ ਗਈਆਂ ਇੱਕ ਨਹੀਂ ਆ ਬ੍ਰਹਮ ਅੰਡ ਇੱਕ ਹੈ ਅੰਡ ਇੱਕ ਹੈ ਜਿਹੜੀ ਦਾ ਚੇਤਨਾ ਰਲੀ ਹੈ ਸਰੀਰ ਜੀ ਨੇ ਬਣਾਇਆ ਉਹ ਤਾਂ ਅੰਡ ਬਣਿਆ ਕੋਈ ਨਹੀਂ ਬਣਦਾ ਜਿਹੜਾ ਬ੍ਰਹਮ ਅੰਡਾ ਹੈ ਉਹ ਲਿਆ ਰਿਹਾ ਥਾ ਤਾਂ ਸ੍ਰਿਸ਼ਟੀ ਪੈਦਾ ਹੋਇਆ ਦੋ ਜਗ੍ਹਾ ਹੋ ਕੇ ਅੰਡਰ ਤੇ ਬ੍ਰਹਮੰਡ ਅੰਡਾ ਬਾਇਆ ਬ੍ਰਹਮੰਡ ਚੇਤਨਿਕ ਲਓ ਜਿੰਨਾ ਜਰ ਅੰਡਾ ਨਹੀਂ ਬਣਦਾ ਅੰਡਾ ਨਹੀਂ ਬਣਦਾ ਉਹਨਾਂ ਜਰ ਸ਼ਰੀਰ ਨਹੀਂ ਬਣਦਾ ਉਹ ਜੋ ਬ੍ਰਹਮ ਅੰਡੇ ਸੋਈ ਪੜਨੇ ਬ੍ਰਹਮ ਰਹਿ ਗਿਆ ਹੋ ਜਣਾ ਸੀ ਨਾ ਨੇਹਰਾ ਬਾਨੂ ਉਹ ਚੱਕ ਕੇ ਅੰਡ ਬਣਾਤਾ ਉਹਨੂੰ ਬਾਨ ਸੀਰੋ ਗੈਲਾ ਉਹ ਜਿਹੜੀ ਬਲੀਬਤਾ ਵਾਲਾ ਪਾਸਾ ਸੀ ਨਾ ਨੇਹਰੇ ਵਾਲਾ ਪਾਸਾ ਉਹ ਮਾਇਆ ਜਿਹ ਦੁਆਨੀ ਚੱਲਣ ਵਾਲਾ ਪਾਸਾ ਉਹ ਲਪਤਾ ਮਾਇਆ ਤੋਂ ਉਹ ਜੇਤਨਾ ਰਲ ਕੇ ਨਾ ਮਾਇਆ ਦੇ ਵਿੱਚ ਤਾਂ ਡਾਵਣ ਅੰਡ ਤਾਂ ਸ਼ਰੀਰ ਜੀਉਦਾ ਸ਼ਰੀਰ ਜਿਹੜੇ ਸੈੱਲ ਨੇ ਕਾਦੇ ਨੇ ਉਹ ਅੰਡਰ ਕੰਪ ਕਰਦੇ ਨੇ ਚੇਤਨਾ ਕੰਮ ਕਰਦੀ ਹੈ ਜਦੋਂ ਚੇਤਨਾ ਨਿਕਲ ਗਈ ਜਦ ਇਹ ਸੜ ਲੱਗ ਜਾਂਦੇ ਨੇ ਸ਼ਰੀਰ ਨੇ ਘੜਨ ਲੱਗ ਜਾਂਦੇ ਜਿੰਨਾ ਜਰ ਉਹ ਜੇਦਨਾ ਨੂੰ ਕੁਛ ਨਹੀਂ ਉਦੋਂ ਕੰਚਿਲ ਦਹੀ ਜਦੋਂ ਚੇਤਨਾ ਗਈ ਸੜਾਉਣਾ ਸ਼ੁਰੂ ਹੋ ਜਾਂਦੀ ਹੈ ਸ਼ਰੀਰ ਦੀ ਸੜਾਉਂਦਾ ਆਪੇ ਸੜ ਲੱਗ ਜਾਂਦੇ ਨੇ ਉਹਨਾਂ ਬ੍ਰਹਮ ਸੀਨਾ ਆਂਡੇ ਦੇ ਵਿੱਚੋਂ ਜੋ ਬ੍ਰਮ ਖੰਡੇ ਸੋਈ ਪਿੰਡੇ ਪਿੰਡੇ ਰਮਲਾ ਪੰਡ ਸਰੀਰ ਦੇ ਵਿੱਚ ਆਉਣਾ ਉਹਦਾ ਕੁਛ ਸਾਰਾ ਹੀ ਆਉਂਦਾ ਪਰ ਅਧਾ ਲਿਪਟਾ ਅਧਾ ਕੁਛ ਇਸਾ ਲਿਪਟਾ ਦੇ ਵਿੱਚ ਕੁਛ ਸਾਚ ਇਤਨਾ ਦਾ ਦੇ ਵਿੱਚ ਲਿਪਟਾ ਉਹਦੀ ਜੋਤ ਹੈ ਆਪ ਲਿਪਤ ਨਹੀਂ ਹੈ ਉਹਦੀ ਇੱਛਾ ਸ਼ਕਤੀ ਇਹਦੇ ਵਿੱਚ ਲਿਪਟਾ ਆਪ ਲਿਪਤ ਨਹੀਂ ਹੈ ਮਨੋ ਦੀ ਇੱਛਾ ਸ਼ਕਤੀ ਹੁੰਦੀ ਹੈ ਉਹਨ ਕੀ ਚੀਜ਼ ਹੈ ਇੱਛਾ ਮਾਨੇ ਛਾਦਾ ਨਾ ਮਾਨਾ ਹੋਰ ਇੱਛਾ ਕੁਝ ਮਨ ਕੁਝ ਨਹੀਂ ਹੁੰਦਾ ਉਹਦੀ ਇੱਛਾ ਸ਼ਕਤੀ ਹੈ ਇੱਛਾ ਸ਼ਕਤੀ ਹੈ ਸਰੀਰ ਚੱਲਦੀ ਹੈ ਉਹਦੇ ਨਾਲ ਚੱਲਦਾ ਉਹਦੇ ਨਾਲ ਅੰਡ ਕੋਸ਼ ਬਣਿਆ ਨੇ ਜੇ ਖੰਡ ਤੇ ਜੇ ਅੰਡ ਤੇ ਬ੍ਰਹਮੰਡ ਦੋ ਹੋ ਗਏ ਅੰਡਾ ਔਰ ਅੰਡ ਤੇ ਇਬਰਾਹਿਮ ਅੰਡ ਬ੍ਰਹਮੰਡਰ ਅੰਡ ਦੋਨ ਤਾਂ ਕੀ ਰਚਨਾ 1914 ਅਖੰਡ 14 ਅਖੰਡ ਬਣਾ ਦਿੱਤੇ ਸਾਰੇ 14 ਅਖੰਡਾਂ ਦੀ ਰਚਨਾ ਐਵੇਂ ਹੋਈ ਹੋਈ ਐ ਇਹ ਗੱਲ ਕੌਣ ਕਹੂਗਾ ਇਹ ਗੱਲ ਕੌਣ ਕਹੂ ਇਹਨਾਂ ਨੂੰ ਕੀ ਪਤਾ ਜਿਹੜੇ ਅਸਲ ਦਾ ਵਿੱਚ ਧਰਮ ਦੀਆਂ ਗੱਲਾਂ ਕਰਦੇ ਨੇ ਉਹਨੂੰ ਧਰਮ ਦਾ ਗਿਆਨ ਨਹੀਂ ਹੈ ਨਹੀਂ ਗੱਲਾਂ ਉਹਨਾਂ ਨੂੰ ਕੀ ਪਤਾ ਅੰਡ ਕੀ ਹੁੰਦਾ ਬ੍ਰਹਮੰਡ ਕੀ ਹੁੰਦਾ ਉਦਾ ਪਰ ਪੜਦਾ ਪਰ ਮੰਡ ਦਾ ਹੀ ਪਤਾ ਹੈ ਨਹੀਂ ਉਹਨੂੰ ਔਰ ਮਾਇਆ ਪਰ ਹੈ ਬ੍ਰਹਿਮੰਡ ਜਿਹੜਾ ਬਣਦਾ ਹੈ ਬਣਦਾ ਅੰਡ ਜਿਹੜਾ ਅੰਡ ਕਹਿੰਦੇ ਜਿਹੜਾ ਅੰਡ ਕੋਸ਼ ਉਹਦੇ ਚੇਤਨ ਹੈ ਜਿਹਦੇ ਨਾਲੇ ਆਣ ਕੇ ਜੀਵ ਆਜਣਾ ਜੀ ਆ ਵਿੱਚ ਜੀਵਨਾ ਦੇ ਵਿੱਚ ਜੀਵ ਚੇਤਨਾ ਦੇ ਵਿੱਚ ਇਹਨਾਂ ਨੂੰ ਕੋਤਾ ਨਹੀਂ ਕੀ ਹੁੰਦਾ ਕੁਝ ਵਿਆਖਿਆ ਕਰਕੇ ਦੱਸਣ ਜਿਹਨਾਂ ਦੀ ਟਿੱਪਣੀ ਆਖ ਧਰਮ ਤੇ ਕੁਝ ਕੋਲੋਂ ਵੀ ਦੇਣ ਤੁਹਾਡੇ ਤੂੰ ਜਾਣਦੇ ਕਿਉਂ ਇਹਦਾ ਦੱਸੋ ਪਹਿਲਾਂ ਧਰਮ ਬਾਰੇ ਤੁਹਾਡੀ ਜਾਣਕਾਰੀ ਕੀ ਹੈ ਜਾਣਕਾਰੀ ਤੁਹਾਡੀ ਕੱਖੋਂ ਨਹੀਂ ਗਲਤ ਉਹਨਾਂ ਨੂੰ ਦੱਸ ਰਹੇ ਹਾਂ ਸਲਾਹਾਂ ਦੇ ਰਹੇ ਹਾਂ ਜਿਨ੍ਹਾਂ ਨੂੰ ਜਾਣਕਾਰੀ ਕੁਛ ਨਾ ਕੁਛ ਤਾਂ ਹੈ ਉਹ ਚਲੋ ਪੂਰੀ ਨਹੀਂ ਕੁਛ ਨਾ ਕੁਛ ਤਾਂ ਹੈ ਤੁਸੀਂ ਕੁਝ ਨਾ ਦੱਸੋ ਤੁਹਾਡੇ ਕੋਲ ਹੈ ਕੀ ਚਲੋ ਅਸੀਂ ਨਿਕਾਏ ਨੇ ਸਾਨੂੰ ਸਾਰੀ ਜਾਣਕਾਰੀ ਹੈ ਪਰ ਕੁਝ ਨਾ ਕੁਝ ਤਾਂ ਹੈ ਉਹਨੂੰ ਜਿੰਨੀ ਕ ਹੈਗੀ ਹੈ ਹੁਰਬੰਦੀ ਰਹੂਗੀ ਥੋੜੇ ਕੋਲ ਨਸੂਗੀ ਤੁਸੀਂ ਰਹਿ ਕਿੰਨੂ ਦਾ ਰਹੇ ਹੋ ਇੱਕ ਕਾਨ ਪੜਾ ਇੱਕ ਮਿਡਲ ਪੜਾ ਇਹਨੂੰ ਵੀ ਰਹਿ ਜਾਵੇ ਬਿਲਕੁਲ ਇਹ ਰੂੜੇ ਆੜੇ ਦੀ ਪਛਾਣ ਨਹੀਂ ਤਬਕੁਰ ਖਰੀਦਾ ਹੋਰ ਕੀ ਹੈ ਇੱਕ ਟੋਟਲ ਆ ਨਾ ਬਿਲਕੁਲ ਇਹ ਇੱਕ ਪੰਜ ਚਾਰ ਜਮਾਤਾਂ ਦਾ ਭੜਿਆ ਹੋਇਆ ਕੋਈ ਪੰਜ ਚਾਰ ਜਮਾਤਾਂ ਨੇ ਉਹ ਰਹਿ ਦਵੇ ਤਾਂ ਮੂਰਖੀ ਦੌਰ ਕੀ ਇਹ ਹੈ ਜ ਮੂਰਖ ਨੇ ਸਾਬਦ ਹੋ ਜਾਣਾ ਮੂਰਖ ਹਾਲ ਤਾਂ ਹੀ ਤਾਂ ਨਹੀਂ ਰਸਾ ਉਤ ਹੋਏ ਵਿਦਵਾਨ ਸਾਡੇ ਕੋਈ ਜੇ ਤੇ ਕੱਲ ਵਿਦਵਾਨਾਂ ਕੋਲ ਸੀ ਹੁਣ ਵਿਦਵਾਨਾਂ ਤੇ ਕਹਾ ਗੱਲ ਚਲੀ ਗਈ ਵਿਦਵਾਨ ਦੋਹਾਂ ਪਾਸਾ ਦੇ ਜੋ ਸ਼ਰਧਾ 바ਸ ਹੁੰਦੇ ਨੇ ਸ਼ਰਧਾ ਰੱਖਣ ਵਾਲੇ ਹੁੰਦੇ ਨੇ ਥੋੜਾ ਬੋਧਾ ਗਿਆਨ ਵੀ ਹੁੰਦਾ ਹੈ ਇੱਕ ਬਿਲਕੁਲ کئی ਵਾਰ ਤਾਂ ਜਾਣ ਕੇ ਹੋਏ ਹੁੰਦੇ ਨੇ ਪਤਾ ਵੀ ਹੋਵੇ ਜਾਣ ਕੇ ਕਿਉਂਕਿ ਇਹ ਵਿਦਵਾਨ ਜਿਹੜਾ ਬਕਾਊ ਮਾਲ ਹੁੰਦਾ ਤੁਸੀਂ ਵਿਦਵਾਨ ਤੇ ਭਰੋਸਾ ਨਹੀਂ ਕਰ ਸਕਦੇ ਬਕਾਊ ਨਹੀਂ ਹੈ ਉਹ ਸਿਰਫ ਗੁਰਮਖਾਈ ਦਾ ਬਕਾਊ ਨਹੀਂ ਹੁੰਦਾ ਵਿਦਵਾਨ ਦਾ ਬਕਾਊ ਮਾਲ ਹੈ ਇਹਨੂੰ ਕੋਈ ਖਰੀਦ ਲਓ ਕੁਛ ਲਖਾ ਲਓ ਇਹਨਾਂ ਤੇ ਇਹ ਤਾਂ ਹਮੇਸ਼ਾ ਹੀ ਵਿਕਦੇ ਰਹੇ ਨੇ ਇਸੇ ਕਰਕੇ ਇਹਨਾਂ ਦੇ ਝਗੜੇ ਰਹਿੰਦੇ ਨੇ ਕੋਈ ਕਿਸੇ ਤੜੇ ਜਾ ਕੋਈ ਕਿਸੇ ਤੜੇ ਦੇ ਬਕਾਊ ਮਾਲ ਹੈ ਭਾਈ ਮਾਇਆ ਮਾਇਆ ਹੱਥ ਬਕਾੜੋ ਇਹਨਾਂ ਦਾ ਬੋਲ ਮਾਇਆ ਹੱਥ ਵਿੱਚ ਆਉਂਦਾ ਕੋਈ ਪਤਾ ਨਹੀਂ ਕਿਹੜੇ ਵਿਦਵਾਨ ਦੇ ਪਿੱਛੇ ਕਿਹੜੀ ਰਿੱਤੀ ਕੰਮ ਕਰਦੀ ਕੋਈ ਪਤਾ ਨਹੀਂ ਗੁਰੂ ਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਗੁਰੂ ਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੋ ਸੱਚ ਦੀ ਉਹ ਪਰਮੇਸ਼ਰ ਦੀ ਸ਼ਕਤੀ ਕੱਪ ਕਰਦੀ ਉਹਨੂੰ ਹੋਰ ਕੋਈ ਮਤਲਬ ਹੀ ਨਹੀਂ ਹੁੰਦਾ ਕਿਸੇ ਚੀਜ਼ ਤੇ ਜਿੰਨਾ ਕਿ ਸੱਜਦਾ ਉਹਨੂੰ ਗਿਆਨ ਉਹਨੇ ਦੱਸ ਦੇਣ ਲਿਆਜ ਕਿਸੇ ਨਾਲ ਨਹੀਂ ਭਿਜਦਾ ਕਿਸੇ ਅਣਭਿਜਾ ਲਿਖਿਆ ਤਾਂ ਹੋਇਆ ਅਣਭਿਜ ਉਹ ਕਿਸੇ ਨਾਲ ਭਿਜਦਾ ਹੀ ਨਹੀਂ ਹੈ ਕਿਸੇ ਦੇ ਪ੍ਰਭਾਵ ਕਿਸੇ ਦਾ ਪ੍ਰਭਾਵ ਖੂਲ ਕਰਦਾ ਹੀ ਨਹੀਂ ਜੇ ਜੇ ਉਹਨੂੰ ਸਮਝ ਆ ਗਈ ਉਹ ਜਿਹੜੀ ਉਹਨੂੰ ਗੱਲ ਕਹ ਦਿੱਤੀ ਕੋਈ ਆਪਣੇ ਪ੍ਰਭਾਵ ਨਾਲ ਬਾਹਰ ਦੇ ਪ੍ਰਭਾਵ ਨਾਲ ਗੱਲ ਕਹਾਲੇ ਹੋਈ ਨਹੀਂ ਸਕਦਾ ਇੱਥੇ ਨਹੀਂ ਹੋਇਆ ਇਨੇ 14 ਹੰਖੰਡ 14 ਹੰਖੰਡ ਬਣਾਤੇ 14 ਹੰਖੰਡ ਰਚੇ ਬੁੰਦੇ ਨੇ ਨਾ ਅਸਲ ਜਿਹੜੂ ਕਹਿਰ ਹੈ ਨਾ 14 ਹੰਖੰਡ ਬੁੰਦੇ ਨੇ ਕਿਤੇ 9 ਹੰਖੰਡ ਵੀ ਕਹਿ 9 ਹੰਖੰਡ ਪ੍ਰਥਵੀ ਫਿਰੇ ਚਦੀ ਵਾ ਮਹਾ ਦਾਤ ਕਿਤੇ 14 ਹੰਖੰਡ ਕਹੇ ਹੋਏ ਨੇ ਕਿਉਂਕਿ ਇਹਨਾਂ ਦੇ ਅੱਡ ਅੱਡ ਜਿਹੜੇ ਆਪਣੇ ਰਿਸ਼ੀਮੁਨਿਆ ਦੇ ਰਿਸ਼ੀਮੁਨਿਆ ਦਾ ਇੱਕ ਤਾਂ ਹੈ ਹੋਣੀ अलग-अलग ਇਹਨਾਂ ਦੇ ਦਬ ਤੋਲਨੇ ਅਲੱਗ-ਅਲੱਗ ਇਹਨਾਂ ਦੇ ਬੱਲੇ ਹੋਏ ਨੇ ਕੋਈ ਕੁਛ ਬੰਦਾ ਕੋਈ ਕੁਛ ਬੰਦਾ ਗੁਰਮਤ ਸਦਾ ਇੱਕੋ ਹੀ ਹੈ ਸਾਰਿਆਂ ਦਾ ਸਭ ਕੀਨ ਜਗਤ ਵਿਸਾਰ ਸਭ ਕੀਨ ਜਗਤ ਵਿਸਾਰ ਚਲ ਇੱਥੇ ਆ ਕੇ ਗੱਲ ਬੁਖਾਤੀ ਉਹਨਾਂ ਨੇ ਕੁਰਬਾਨੀ ਦੀ ਕਰਤੀ ਮੰਨ ਲਓ ਸਾਰੇ ਜਗਤ ਦਾ ਵਿਸਾਰਿਆ ਕਰਤਾ ਇਹ 14 ਖੰਡ ਜੇਵੇਂ ਵਰਗੀ ਬਣਾ ਲੈਣ ਸਾਦਾ ਆਕਾਸ਼ ਬਣਾਉਂਦੇ ਨੇ ਸਤਪਤਾਲ ਜਿ ਬਣਾਉਂਦੇ ਨੇ ਬਣਾਈ ਜਾਣ ਚਾਹੀ 14 ਬਣਾ ਲੈਣ ਚਾਹੀ ਚਾਰ ਬਣਾ ਲੈਣ ਚਾਹੇ 4000 ਬਣਾ ਲੈਣ ਸਾਰੇ ਜਗਤ ਦਾ ਪਸਾਰਾ ਕਰਤਾ ਚਲ ਗੱਲ ਬੁੱਕ ਗਈ ਇਸ ਤਰੀਕੇ ਨਾਲ ਅੱਡ ਤੇ ਬ੍ਰਭੁੱਡ ਬਣਾ ਕੇ ਸਾਰੇ ਜਗਤ ਦਾ ਪਸਾਰਾ ਕੀਤਾ ਜੜਾ ਔਰ ਚੇਤਨ ਦੇ ਸੁਭੇਲ ਨਾਲ ਚੇਤਨਾ ਜੜ ਦੇ ਸੁਭੇਲ ਨਾਲ ਇਹ ਪਸਾਰਾ ਹੋਇਆ ਹੋਇਆ ਜੀਵ ਨਹੀਂ ਪੈਦਾ ਹੋ ਸਕਦਾ ਆ ਜਿਹੜਾ ਵਾਇਆ ਨਾ ਬਿਰਛਵੀ ਪੈਦਾ ਹੁੰਦਾ ਵੱਧਾ ਜਿੰਨਾ ਜਿ ਚੇਤਨ ਨੂੰ ਬੰਦ ਚੇਤਨ ਨਿਕਲ ਗਿਆ ਸੁੱਕ ਜੂਗਾ ਇਹਦੇ ਇਸੇ ਕਰਕੇ ਤੇ ਨੋਂ ਹਰ ਹੈ ਹਰ ਕਦੇ ਹਰਾ ਕਰਦਾ ਤਨ ਵਰ ਹਰਿਆ ਹੋਇਆ ਸਰੀਰ ਵੀ ਸੁੱਕ ਜਾਂਦਾ ਜਿਹੜੇ ਪਿੱਛੇ ਰੱਖਿਆ ਹੋਇਆ ਹੈ ਸਰੀਰ ਦੇ ਨੇ ਹਜ਼ਾਰਾਂ ਸਾਲਾਂ ਦੇ ਸੁੱਕੇ ਪੈ ਨੇ ਉਹ ਪਾਣੀ ਉਹ ਨਾਲ ਜਿਹੜੇ ਰਹੂਗਾ ਜਿਹਨਾਂ ਜਰ ਵਿੱਚ ਹੈ ਕਿਉਂਕਿ ਬਬੀਆ ਜਲ ਚੇ ਰਹਿੰਦਾ ਹੈ ਬਬੀਆ ਜਲ ਵਿੱਚ ਤੇਰਾ ਬਾਸ ਆ ਜਿੰਨੇ ਦਾਣੇ ਹਨ ਕਿਨੇ ਸਾਰੇ ਜਵਾਲੀ ਹੁੰਦੇ ਮਹਜਰ ਹੁੰਦੀ ਹੈ ਜਦੋਂ ਉਹ ਗਰਭ ਕਰਦੀ ਹੈ ਮਹਜਰ ਨਿਕਲ ਜਾਂਦਾ ਜਦੋਂ ਜੀਵ ਨਿਕਲ ਜਾਂਦਾ ਉਹ ਨਹੀਂ ਰਹਿ ਸਕਦਾ ਮਨੂੰ ਮਹਜ ਚਲਦੇ ਹਾਂਜੀ ਅਬ ਯਕਤ ਰੂਪ ਉਦਾਰ ਅਬ ਯਕਤ ਰੂਪ ਉਦਾਰ ਅਬ ਵਿਅਕਤੀ ਕੀ ਹੈ ਵਿਆਨ ਕਰਨਾ ਵਿਆਨ ਕਰ ਰੂਪ ਉਦਾਰ ਤੇਰਾ ਜਿਹੜਾ ਰੂਪ ਹੈ ਨਾ ਬਿਆਨ ਤੇ ਭਰੇ ਆ ਬਿਆਨ ਨਹੀਂ ਕੀਤਾ ਜਾ ਸਕਦਾ ਅਬੇ ਵਿਅਕਤ ਹੁੰਦਾ ਹੈ ਵਿਅਕਤ ਨੂੰ ਬਿਆਨ ਕਰਨਾ ਅਭਿਵਿਅਕਤ ਹੈ ਅਓ ਵਿਅਕਤ ਅਬਿਅਕਤ ਹੈ ਨਹੀਂ ਵਿਅਕਤ ਕੀਤਾ ਬੋਲੇ ਦੱਸਿਆ ਨਹੀਂ ਜਾ ਸਕਦਾ ਤੇਰਾ ਰੂਪ ਰੂਪ ਨਹੀਂ ਦੱਸਿਆ ਜਾ ਸਕਦਾ ਅਰੂਪ ਰੂਪ ਹੈ ਨਾ ਜਿਹੜਾ ਕੋਟ ਇੰਦਰ ਨਿਰਪਾਰ ਕਰੋੜਾ ਹੀ ਇੰਦਰ ਰਾਜੇ ਬਣਾਏ ਨੇ ਤਾਂ ਇਹ ਤਾਂ ਸੇਜਾ ਸਕਦਾ ਉੱਥੇ ਇੱਕ ਇੰਦਨੂ ਬੰਦੇ ਨੇ ਇੱਥੇ ਕਰੋਨਾ ਦੇ ਦਰ ਕਈ ਬ੍ਰਹਮ ਵਿਸ਼ਨ ਵਿਚਾਰ ਬ੍ਰਹਮਾ ਵਿਸ਼ਨੂ ਵੀ ਕਈ ਨੇ ਕਿੰਨੀ ਹੈ ਬ੍ਰਹਮਾ ਇੱਕ ਨੇ ਆ ਨਾ ਵਿਸ਼ਨੂ ਇੱਕ ਹੈ ਬ੍ਰਹਮਾ ਵਿਸ਼ਨੂ ਸ੍ਰੇਤਾ ਅਗਨਤ ਤਿੰਨ ਕੋ ਉਹ ਪਿਆਮਨ ਬਣ ਕਾ ਅਣਗਣ ਤੇ ਬਣਾਏ ਨੇ ਕਈ ਰਾਮ ਕ੍ਰਿਸ਼ਨ ਰਸੂਲ ਰਾਮ ਕ੍ਰਿਸ਼ਨ ਰਸੂਲ ਵੀ ਇੱਕ ਨਹੀਂ ਹੈ ਕਈ ਨੇ ਕਿੰਨੇ ਨੇ ਬਿਨ ਭਗਤ ਕੋਣਾ ਕਬੂਲ ਕੋਣਾ ਕਬੂਲ ਕਬੂਲ ਨਹੀਂ ਕੋਈ ਹੋਇਆ ਕਿਉਂ ਭਗਤੀ ਨਹੀਂ ਸੀ ਕੀਤੀ ਸੱਚ ਨਹੀਂ ਸੀ ਜਾਣਿਆ ਨਾ ਰਾਮ ਕਬੂਲ ਹੈ ਨਾ ਕ੍ਰਿਸ਼ਨ ਕਬੂਲ ਹੈ ਨਾ ਰਸੂਲ ਕਬੂਲ ਹੈ ਤਨੇ ਕਬੂਲ ਨਹੀਂ ਇੱਧਰ ਤਾਂ ਖਬੂਲਣ ਵਾਲੀ ਗੱਲੇ ਨਹੀਂ ਉਹਦਾ ਰਾਜ ਆ ਉਹਦਾ ਨਹੀਂ ਰੌਲਾ ਇਤਨਾ ਨੇ ਧਰਮ ਬਣਾਏ ਨੇ ਤੁਹਾਨੂੰ ਨਹੀਂ ਪਤਾ ਕਿਉਂ ਉਹਦਾ ਰਾਜ ਆ ਉਹਦਾ ਕੀ ਹੈ ਉਹਦਾ ਨਰ ਕੀ ਜੀਵ ਹੈ ਇੱਧਰ ਤਾਂ ਇਹਨਾਂ ਨੇ ਤਾਂ ਧਰਮ ਬਣਾਏ ਨੇ ਇਹਨਾਂ ਦੇ ਨਾਂ ਤੇ ਤਾਂ ਧਰਮ ਚੱਲਦੇ ਨੇ ਰੌਬ ਦੇ ਕ੍ਰਿਸ਼ਨ ਦੇ ਰਸੂਲ ਦੇ ਰੋਤੇ ਕ੍ਰਿਸ਼ਨ ਦੇ ਕ੍ਰਿਸ਼ਨ ਤੇ ਕੀਤਾ ਜਲਦੀ ਹੈ ਲੋਕ ਮੰਨਦੇ ਨੇ ਹੰਦੀਰ ਮੈਂ ਰਾਮਚੰਦ ਨੂੰ ਭਗਵਾਨ ਕਹਿੰਦਾ ਨੇ ਮੈਂ ਤਾਂ ਚਲੋ ਹੋਰ ਕਿਸੇ ਨੇ ਲਿਖੀ ਹੈ ਹੈਗਾ ਉਹ ਜਿਹੜਾ ਹੈਗਾ ਕੈਕਟਰ ਦੇ ਉੱਤੇ ਲੋਕ ਪ੍ਰਭਾਵਿਤ ਉਹਦੇ ਜੀਵਨ ਦੀ ਸ਼ੈਲੀ ਤੇ ਪ੍ਰਭਾਵਿਤ ਉਹਦੇ ਜੀਵਨ ਦੀ ਕਥਾ ਤੋਂ ਹੀ ਪ੍ਰਭਾਵਿਤ ਹੋ ਲੋ ਪਰ ਭਗਤੀ ਤੋਂ ਬਿਨਾ ਕਈ ਹੋਏ ਨੇ ਇਕ ਨਹੀਂ ਹੋਇਆ RAM ਕਿੰਨੇ ਹੋਏ ਨੇ ਕ੍ਰਿਸ਼ਨ ਕਿੰਨੇ ਹੋਣਾ ਰਸੂਲ ਕਿੰਨੇ ਹੋ ਚੁੱਕੇ ਨੇ ਪਰ ਭਗਤੀ ਤੋਂ ਬਿਨਾ ਕੋਈ ਵੀ ਕਬੂਲ ਨਹੀਂ ਹੋਇਆ ਇਹਦਾ ਮਤਲਬ ਹੈ ਉਹ ਭਗਤੀ ਨਹੀਂ ਹੈ ਭਗਤੀ ਤੋਂ ਸਖਣੇ ਰਹਿ ਗਏ ਕਬੂਲ ਦਰਗਾਹ ਕੋਈ ਵੀ ਨਹੀਂ ਹੋਇਆ ਗੁਰਮਤਰਾ ਮਿਲਦੀ ਨਹੀਂ ਉਹਨਾਂ ਦੀ ਗੱਲ ਗੁਰਮਤਾਲੀ ਭਗਤੀ ਨਾਲ ਗੱਲ ਮਿਲਦੀ ਨਹੀਂ ਉਹਨਾਂ ਦੀ ਇਸ ਕਰਕੇ ਕੋਲ ਨਹੀਂ ਉਤੇ ਨਹੀਂ ਕਰੀ ਉਹਨਾਂ ਨੇ ਕਰੇ ਨਹੀਂ ਉਹਨਾਂ ਨੇ ਭਗਤੀ ਦੱਸੀ ਆ ਉਹਨਾਂ ਨੇ ਭਗਤੀ ਕਈ ਗੱਲ ਨਹੀਂ ਹੋਰ ਗੱਲਾਂ ਦੱਸਣੀ ਹੋਰ ਗੱਲ ਅਰ ਉਹਨਾਂ ਨੇ ਇਹ ਵੀ ਕਰਦਾ ਰਾਮ ਨੇ ਕੁਝ ਕਿਹਾ ਹੀ ਹੈ ਨਾ ਮੁਸਲਮਾਨ ਮੁਸਲਮਾਨ ਨਗਿੰਦਰ ਹੁਣ ਉਹਦੇ ਕੋਲ ਕੌਣ ਨੇ ਉਹ ਘਰ ਰਸੂਲ ਨੂੰ ਵਿੱਚ ਕਿਹਦੀ ਬੰਦਾ ਰਸੂਲ ਤੇ ਟਿੱਪਣੀ ਕਰਦੇ ਰਸੂਲ ਤੇ ਟਿੱਪਣੀ ਹੈ ਰਾਏ ਹੋਵੇ ਮੁਸਲਮਾਨਾ ਰਸੂਲ ਤੇ ਹੋ ਜਾ ਟਿੱਪਣੀ ਕੌਣ ਕਰੂਗਾ ਹੈ ਜਿਨ੍ਹਾਂ ਲੋਕਾਂ ਨੂੰ ਇਹ ਨਹੀਂ ਸਮਝਾਈ ਵੀ ਇਹ ਗੱਲ ਕੀ ਹੈ ਕਿਹਨੇ ਕਹਿ ਤੀ ਕਿੱਡੀ ਵੱਡੀ ਕਹਿਤੀ ਉਹ ਕਹਨਾ ਜੀ 10-12 ਸਦਾ ਗਰੰਟੇ ਨਹੀਂ ਗਈ ਬੜੀ ਯੋਨੀ ਐਡੀਆਂ ਬਣੀਆਂ ਟਿੱਪਣੀਆਂ ਆਦ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੋਈ ਹੋਈ ਇੱਥੇ ਹੋਈ ਹੋਈ ਇਹਦੀ ਸਖਤ ਟਿੱਪਣੀ ਨਹੀਂ ਇੱਥੇ ਹੋਈ। ਉੱਥੇ ਵੀ ਹੋਈ ਐ ਦੋਨਾਂ ਤਰ੍ਹਾਂ ਕੋ ਕਹਣਾ ਕਹਿ ਕੇ। ਪਰ ਨਾ ਖਬੂਲ ਇਹ ਗੱਲ ਤੇ ਹਿੰਦੂ ਔਰ ਮੁਸਲਮਾਨ ਦੀ ਗੱਲ ਕੀਤੀ ਹੋਈ ਐ। ਇੱਥੇ ਉਹਨਾਂ ਦੇ ਦੇਵਤੇ ਦੀ ਗੱਲ ਕੀਤੀ। ਰਸੂਲ ਦੀ ਗੱਲ ਸਿੱਧੀ। ਇੱਥੇ ਸਿੱਧੀ ਰਸੂਲ ਦੀ ਗੱਲ ਕੀਤੀ ਗਈ। ਇਹ ਗੱਲ ਹੋ ਰਹਾ ਉਹ ਗੱਲ ਹੋ ਰਹਾ। ਉਹ ਤਾਂ ਕਹਿਦਾਂ ਨੇ ਭਾਈ ਜਿਹੜੇ ਮੁਸਲਮਾਨ ਰਸੂਲ ਦੀ ਗੱਲ ਨਹੀਂ ਮੰਨਦੇ ਸੀ ਤਾਂ ਉਹਨਾਂ ਨੂੰ ਕਿਹਾ। ਉੱਥੇ ਤੇ ਉਹਦਾ ਅਜੀਬੀ ਸਿਕਰੂ ਕਹਿੰਦੇ ਵੇ ਕਿਹੜਾ ਗੁਰੂ ਦੀ ਗੱਲ ਮੰਨਦੇ ਨੇ ਇਸੇ ਖੜੇ ਨਹੀਂ ਉੱਥੇ ਤੇ ਵੀ ਆ ਵੀ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ ਉੱਥੇ ਤੇ ਇਹ ਗੱਲ ਗੁਰੂ ਨਾਨਕ ਦੇਵ ਫਿਰ ਬਾਅਦ ਚ ਕਬੀਰ ਦੀ ਗੱਲ ਸਖਤ ਕਹੀ ਹੋਈ ਸੀ ਨਾ ਕਹਿੰਦੇ ਮੁਸਲਮਾਨ ਨੂੰ ਅਸੀਂ ਨਹੀਂ ਬੁਰਾ ਕਹਾ ਹੋਏ ਤਾਂ ਮੁਸਲਮਾਨ ਕਹਾਏ ਮੁਸਲਮਾਨ ਹੋਵੇ ਤਾਂ ਸਹੀ مسلمان کا ہاور بھی مشکل ہے مسلمانوں بھی ہونا مشکل ہے پر اس دا مطلب ہے نہیں مسلمان قبول ہے اے دا مطلب ہے نہیں مسلمان قبول ہے پر اک اک تھادی ہے کم کم ہو باہاں نال تھادی جڑیا ہے دھیان مسلمان دا نراکار تے ہے ٹارگٹ او دا نراکار ہے ਗਿਆਨ ਨਾ ਕਰਦਾ ਹੈ ਦੀ ਕਿਉਂ ਉਹ ਨੂੰ ਮਿਲਿਆ ਨਹੀਂ ਹੈ ਕੁਰਾਨ ਚ ਗਿਆਨ ਨਹੀਂ ਹੈ ਨਾ ਕਰਦਾ ਧਿਆਨ ਦਾ ਨਾ ਕਰ ਨਾਲ ਵਿਚਾਰੇ ਕੋਲ ਕੀ ਕਰੇ ਕੁਰਾਨ ਦੇ ਵਿੱਚ ਗਿਆਨ ਦਿੱਤਾ ਨਹੀਂ ਹੋਇਆ ਹੈ ਸਿੱਧੂ ਨੂੰ ਮਤਲਬ ਹੈ ਕੋਈ ਨਹੀਂ ਉਹ ਛੱਡ ਬੈਠਾ ਉਹਦੇ ਕੋਲ ਸੀ ਸਭ ਕੁਝ ਬੇਦਸੀ ਉਹਨੇ ਜਾਣਵਜ ਕੇ ਛੱਡਿਆ ਜਾਨਵਰ ਦੇ ਖਮੀਚ ਅਧਰ ਅੱਖਾਂ ਫੁੱਟੀਆਂ ਦੇਖਿਆ ਨਹੀਂ ਆ। ਅੱਖਾਂ ਤਾਂ ਹੈਗੀਆਂ ਨੇ। ਬੇਦਲ ਕੋ ਹੈਗਾ ਪਿਆ ਜਾਨਵਰ ਦੇ ਸ਼ਰਤਾਂ। ਉਹਨਾਂ ਨਾਲ ਕਹੇ ਤਾਂ ਕੀ ਕਹੇ ਉਹਨੂੰ। ਹਾਂ ਠੀਕ ਕੋਈ ਕੀਤਾ ਹੈ। ਸਭ ਕੁਝ ਕੋਲ ਹੈ ਜਾਣਵਤ ਕੇ ਛੱਡਿਆ ਹੈ ਜਾਣਵਤ ਕੇ ਛੱਡ ਦੇਵਰ ਨਾਲ ਹੁੰਦਾ ਉਹ ਹੁੰਦਾ ਹੁੰਦਾ ਤਾਂ ਦੂਰ ਹੁੰਦਾ ਜੇ ਦੁਕਾਦਾਰ ਕਹਿੰਦਾ ਨਹੀਂ ਹੁੰਦਾ ਇਹਨੇ ਉਹਨਾਂ ਨੂੰ ਪਤਾ ਇਹਨਾਂ ਨੇ ਆਪਣੀ ਛੱਡਿਆ ਹੋਇਆ ਸਭ ਕੁਝ ਜੇ ਅਸੀਂ ਵੇਚ ਛੱਡਿਆ ਸੀ ਉਹ ਵੀ ਨੇ ਗੁਰਬਾਣੀ ਛੱਡੀ ਹੋਈ ਜੀ ਉਹ ਸਭ ਇਹਦੇ ਦੇ ਨਾਲ ਨੂੰ ਪਰ ਇਹ ਕਹਿੰਦਾ ਜੋ ਕਰ ਅਸੀਂ ਬੱਥੇ ਡੇਕਦੇ ਆ ਗੁਰਬਾਣੀ ਨੂੰ ਉਜੀ ਬੜੀ ਧੂੜ ਉੜਾਉਂਦੇ ਆ ਬੜੇ ਕੀਰਤਨ ਕਰਦੇ ਆ ਬਲਾ ਹਲਾ ਲਲਾ ਬੋਤ ਕਰਦੇ ਆ ਉਜੀ ਤਾਂ ਦੇਖੋ ਇਦਾਂ ਨਹੀਂ ਸਖੋਂਦੇ ਦੇ ਕੇ ਸਿੱਖਿਆ ਦਾ ਨੂੰ ਤਬਦੀਲੀ ਦਾ ਨੂੰ ਸਿੱਖ ਧੂੜ ੜਾਈ ਦੇ ਸਿੱਖ ਨਹੀਂ ਕਈ ਸਿੰਧ ਬਿੰਦ ਨਗਿੰਦਰ ਕਈ ਸਿੰਧ ਬਿੰਦ ਨਗਿੰਦਰ ਬਿੰਦ ਨਗਿੰਦਰ ਸਿੰਧ ਉਹਦਾ ਸੁਬਦਰ ਬਿੰਦ ਬਿੰਦ ਉਹਦਾ ਟਾਰਗੇਟ ਹੈ ਬਿੰਦ ਤਦੇ ਨਾਲ ਬਿੰਦ ਅੱਛਾ ਸਿੰਧ ਬਿੰਦ ਨਗਿੰਦਰ ਬਿੰਦ ਬਿੰਦੇ ਲਈ ਨਗਿੰਦਰ ਨਗਿੰਦਰ ਜਿਹੜੇ ਇੰਦਰਾ ਨੇ ਵਿੱਚੋਂ ਛੱਟਦੇ ਹੋਏ ਹੁਣ ਨਾ ਕੋੜਾ ਨਾ ਗਿੰਦਰਾ ਇਧਰਾਂ ਦੇ ਵਿੱਚੋਂ ਵੀ ਤਾਂ ਚੰਗੇ ਹੁੰਦੇ ਨੇ ਰਾਜਿਆਂ ਚੋਂ ਚੰਗੇ ਬਾੜੇ ਬੰਦੇ ਹੁੰਦੇ ਨੇ ਜਿਨ੍ਹਾਂ ਤੇ ਉੱਤੇ ਅਸਰ ਹੋ ਜਵੇ ਅਸਰ ਹੋ ਜਵੇ ਗੁਰਬਾਣੀ ਦਾ ਕਈ ਹੁੰਦੇ ਨੇ ਹੈ ਜੇ ਰਾਜੇ ਵਿੱਚ ਚੰਗੇ ਰਾਜੇ ਹੋਏ ਨੇ ਰਾਜਿਆਂ ਚ ਵੀ ਵਧੀਆ ਹੋਏ ਨੇ ਇਹ ਇਧਰ ਰਾਜੇ ਜਾਈ ਰਹੇ ਹੋਏ ਨੇ ਕਈ ਦਸ ਹਵਤਾਰ ਦੀ ਹੋਏ ਔਰ ਕਈ ਰਾਜਾਂ ਦੇ ਐਸੇ-ਐਸੇ ਜ਼ਿਕਰ ਆਏ ਨੇ ਦਸੁਕ ਗ੍ਰੰਥ ਦੇ ਵਿੱਚ ਜਿਹੜਾ ਆਪਣਾ ਇਹਦਾ ਅਜ ਰਾਜ ਹੈ ਅਜ ਰਾਜਾ ਦੇ ਚੈਪਟਰ ਚਾਰ ਨੂੰ ਕਿਹਾ ਵੀ ਜੇ ਉਹ ਸੰਨਿਆਸੀ ਆ ਬੈਠੋ ਜੋਗੀ ਆ ਬੈਠੇ ਕਹਿੰਦੇ ਤਾਂ ਖੋਰਖਾ ਜਾਂ ਗੱਲ ਕਰਦੇ ਸੀ ਹੈ ਚੰਗੇ ਹੋਏ ਇਹਦੀ ਗੱਲ ਸਾਰੇ ਰਾਜ ਬੁਰੇ ਹੁੰਦੇ ਨੇ ਕਈ ਮੱਛ ਕਾਚ ਫਨੰਦਰ ਕਈ ਮੱਛ ਕਾਚ ਉਦਕਾਰ ਨਾਲ ਉਦਾਰਵਾਦ ਨੂੰ ਮੰਨਦੇ ਨੇ ਮੱਛਕੱਟ ਨੂੰ ਉਹਦੇ ਰੂਪ ਦਾ ਉਹੋ ਜਿਹੀ ਹੋ ਜਾਂਦੇ ਨੇ ਮੱਛਕੱਟ ਪੰਜ ਹਰ ਵਾਰ ਤੋਂ ਬੜੇ ਰਹਿਣਾ ਉਹ ਜਿਹੜੇ ਜਲਦਾਰੇ ਕਰਦੇ ਨੇ ਨਾ ਹਰ ਵਕਤ ਪਾਣੀ 'ਚ ਪਾਣੀ ਭਰੇ ਰਹੇ ਉਹ ਮੱਛ ਨੇ ਹੋਰ ਕੀ ਹੈ ਉਹ ਉਦਾਰਾਂ ਨੂੰ ਦੇ ਦੇ ਉਹ ਜੇ ਮੈਂ ਉਹ ਕਹਿੰਦੇ ਨੇ ਵੀ ਹਵਾ 'ਚ ਉੜਦੇ ਨੇ ਕਹਿੰਦੇ ਪਹਿਲਾਂ ਤੂੰ ਉੜਦਾ ਹੀ ਰਿਹਾ ਪੰਛੀ ਸੀਗਾ ਉਹ ਜੇ ਆਉਣਗੇ ਤੇ ਕਈ ਦੇਵ ਆਦ ਕੁਮਾਰ ਕਈ ਦੇਵ ਆਦਤ ਨਾਲ ਕਈ ਦੇਵ ਤੇਰੇ ਦੇਵਤਿਆਂ ਉੱਦਰ ਕਈ ਦੇਵ ਆਦ ਕੁਮਾਰ ਦੇਵ ਆਦ ਦੇ ਦੇਵਗ ਦੇਵਤਾ ਵਰਗੇ ਸੁਭਾਅ ਵਾਲੇ ਨੇ ਕੱਦੇ ਸੁਭਾਅ ਵਾਲੇ ਦੇਵ ਕਈ ਵੇਦ ਆਉ ਮੁਖਚਾਰ ਕਈ ਵੇਦ ਆਰ ਮੁਖਚਾਰ ਕਈ ਆਪਣੇ ਆਪ ਇਹਦੀ ਬ੍ਰਿਮ ਬਣਨਾ ਚਾਹੁੰਦੇ ਨੇ ਵੇਦ ਪੜ੍ਹਦੇ ਦੇ ਚਾਰੇ ਵੇਦਾਂ ਦੇ ਗਿਆਤਾ ਬਣਦੇ ਰਹੇ ਜਿਹੜੇ ਚਾਰੇ ਵੇਦਾਂ ਨੂੰ ਜਵਾਨੀ ਯਾਦ ਕਰਨ ਵਾਲੇ ਚਾਰ ਵੇਦਾਂ ਨੂੰ ਗਿਆਨ ਨੂੰ ਆਪਣੇ ਸ਼ਿਵ ਦਾ ਰੂਪ ਧਾਰਨ ਕਰਦੇ ਨੇ ਰੁਦਰ ਛੁਦਰ ਸਰੂਪ ਛੁਦਰ ਛੁਦਰ ਕਹਿੰਦੇ ਛੁੱਧ ਨੂੰ ਕਹਿੰਦੇ ਆ ਜਿਹੜੇ ਬੰਦਿਆਂ ਤੇ ਰਹਦੇ ਨੇ ਕੱਚਾ ਵਾਂਸ ਖਾ ਜਾਂਦੇ ਨੇ ਖੂਰ ਪੀ ਜਾਂਦੇ ਨੇ ਇਸ ਰੁੱਦਨ ਅਸਲ ਦੇ ਵਿੱਚ ਕੱਚਾਵਾਸ ਹੋਣੀ ਹੈ ਨਗੜੀ ਖਾਈਦਾਂ ਤੁਸੀਂ ਕਈ ਸਾਲ ਇਹ ਪੈਰੋਂ ਇਸ ਸਾਰੇ ਚੀਜੀ ਦੇ ਬਦਤਰ ਰੁੱਦਨ ਦੇ ਰੁੱਦਰ ਵੈਸੇ ਨੂੰ ਵੀ ਕਹਿੰਦੇ ਨੇ ਰੁੱਦਰ ਖੂਨ ਨੂੰ ਕਹਿੰਦੇ ਕਈ ਰਾਮ ਗ੍ਰਿਸ਼ਨ ਅਨੂਪ ਕਈ ਰਾਮ ਗ੍ਰਿਸ਼ਨ ਦੇ ਰੂਪ ਰੂਪ ਬਣ ਕੇ ਚੱਲਦੇ ਨੇ ਉਹਨਾਂ ਦੇ ਚੇਲੇ ਰਾਮਾ ਕ੍ਰਿਸ਼ਨ ਦੇ ਚੇਲੇ ਨੇ ਕਈ ਕੋਕ ਕਾਪ ਅਪਨੰਤ ਕਈ ਕੋਕ ਕਾਪ ਦੇਖੋ ਇਹ ਵੀ ਇਹ ਦਾ ਧਰਮ ਦੇ ਵਿੱਚ ਹੈ ਕੋ ਕਾਵਲੀ ਪੜਾਈ ਵੀ ਇਹ ਧਰਮ ਦੇ ਵਿਚਾਰੀ ਹੈ ਧਰਮ ਦਾ ਹਿੱਸਾ ਹੈ ਜਿਹੜੇ ਲੋਕਾਂ ਨੂੰ ਧਰਮ ਦਾ ਗਿਆਨ ਨਹੀਂ ਉਹਨਾਂ ਨੂੰ ਨਹੀਂ ਪਤਾ ਕਿ ਇਹ ਤਾਂ ਹੁੰਦਾ ਹਿੱਸਾ ਹੈ ਦੇਖੋ ਅੰਦਰ ਤੇ ਬ੍ਰਹਮੰਡ ਯਾਦ ਆ ਗਿਆ ਅੰਦਰ ਤੇ ਬ੍ਰਹਮੰਡ ਕੀ ਆ ਇੱਕੋ ਕਾਬ ਦੇ ਪਿੱਛੇ ਹੁੜ ਰਿਹਾ ਹੈ ਸਾਤ ਅੰਦਗੋਸ਼ ਜੜੇ ਆਂਡਕੋ